ਪੁਰ ਜਿਹੜਾ ਇਹ ਚਾਹੀਦਾ ਜੈਤੀ ਜੈਤੀ ਸੀ ਚੀਜ਼ ਜਿਹੜਾ ਕੁਝ ਲੈਣ ਆਇਆ ਗਿਆਨੇ ਬਗੂ ਜੇ ਮੈਂ ਡੇਣਾ ਖੋਲਦਾ ਕੋਈ ਦੀ ਕਾਲ ਮਿੰਡ ਤਲਾਕ ਪਾਏ ਬਿਰਤ ਕਰਕੇ ਪੈਰ ਫੜ ਕੇ ਲੈ ਲੈਣਾ ਜਰੂਰ ਬਜਟ ਕਢਾਰ ਬਜਟ ਕਢਾਰ ਬਵੇ ਹੈ ਸਭ ਚੀਜ਼ ਘਟ ਦਿੰਦਾ ਦੋਬਾ ਜਦੋਂ ਦੋਬਾ ਪ੍ਰਗਟ ਹੁੰਦਾ ਸਾਰੀਆਂ ਬੱਤਾਂ ਦਾ ਨਾਸ ਹੋ ਜਾਂਦਾ ਸਾਰੀਆਂ ਬੱਤਾਂ ਖੰਡਿਤ ਹੋ ਜਾਂਦੀਆਂ ਨੇ ਖਤਮ ਹੋ ਜਾਂਦੀਆਂ ਨੇ ਬੱਤਾਂ ਵੀ ਕਿਉਂਟ ਸਾਰੀਆਂ ਚ ਝੂਠ ਸਾਬਤ ਹੋ ਜਾਂਦਾ ਝੂਠ ਲੰਗਾ ਕਰ ਦਿੰਦਾ ਬੱਤਾਂ ਦੇ ਲੋਕਾਂ ਦਾ ਵਿਸ਼ਵਾਸ ਛੁੱਟ ਜਾਂਦਾ ਤਾਰੋ ਬਿਸ਼ਵਾਸ ਤੇ ਖੜਾ ਜੇ ਲੋਕ ਵਿਸ਼ਵਾਸ ਕਰਦੇ ਨੇ ਕਿਸੇ ਬਸਤ ਤੇ ਟਕੜੀ ਹੈ ਜਿਹੜੀ ਬੱਦਲ ਲੋਕ ਵਿਸ਼ਵਾਸ ਨਹੀਂ ਕਰਦੇ ਲੱਤ ਹੋ ਜਾਂਦੀ ਹੈ ਸਾਰੀ ਕੁ ਵਿਸ਼ਵਾਸ ਦਾ ਵਿਸ਼ਾ ਯਕੀਨ ਦਾ ਵਿਸ਼ਾ ਭਰੋਸੇ ਦਾ ਵਿਸ਼ਾ ਸ਼ਰਧਾ ਦਾ ਵਿਸ਼ਾ ਹੀ ਨਹੀਂ ਹੈ ਜਿਹੜੇ ਵਿਸ਼ਵਾਸ ਦੇਈ ਦਵਾ ਸਕਦੇ ਆਪਣੀ ਬਤ ਉਹਨਾਂ ਨੇ ਸ਼ਰਦਾ ਲਈ ਹੈ ਸ਼ਰਦਾ ਬਲੈਕਮੇਲ ਇਹਨਾਂ ਦਾ ਹੋਰ ਕੁਝ ਨਹੀਂ ਉਹਨਾਂ ਨੇ ਬਲੈਕਮੇਲ ਕੀਤਾ ਲੋਕਾਂ ਨੂੰ ਸ਼ਰਦਾ ਨਾਲ ਝੂਠ ਬੋਲ ਕੇ ਸਿਰਫ ਬਲੈਕਮੇਲ ਇਹ ਜਿਹੜੀ ਤੁਹਾਨੂੰ ਦੀ ਉਹਦਾ ਨਾਮ ਸ਼ਰਦਾ ਸਿੱਖਾਂ ਜਿਵੇਂ ਬਲੈਕਮੇਲ ਹੋ ਗਏ ਜਿਹੜੇ ਲੋਕ ਸ਼ਰਦਾ ਦੀ ਗੱਲ ਕਰਦੇ تھے ਟੌੜਾ ਕਰ ਦਰ ਵੜਾ ਬਲੈਕ ਬਿਲਰ ਸਿਡੋੜਾ ਸਭ ਤੋਂ ਵੱਡਾ ਬਲੈਕ ਬਿਲਰ ਟੌੜਾ ਸੀ ਧਰਮ ਦੇ ਘਰ ਸਭ ਪਤਾ ਸੀ ਉਹਨੂੰ ਵੈਸੇ ਧਰਮ ਦੀ ਗੱਲ ਕਰਦੇ ਆ ਘਰ ਵਾਲੇ ਲੋਕ ਸੀ ਜੇ ਗੁਰਸ਼ੰਟਜੀਤ ਕਹਿੰਦਾ ਸੀ ਵੈਸੇ ਕਰਨਾ ਹੈ ਕਹਿੰਦਾ ਤੁਸੀਂ ਗਲਤ ਜਗ੍ਹਾ ਇਹ ਧਰਮ ਦਾ ਕੁਝ ਕਰਨਾ ਹੈ ਕਮੇਟੀ ਤੇ ਬਰਡ ਕਲਕ ਕਰੋ ਟੌੜਾ ਤਦੋਂ ਤੋਂ ਪਤਾ ਸੀ ਇਸ ਗੱਲ ਤੂੰ ਜਿਹੜੇ ਲੋਕ ਸ਼ਰਦਾ ਦੀ ਗੱਲ ਕਰਦੇ ਨੇ ਬਲੈਕਬੇਲ ਕਰ ਰਹੇ ਨੇ ਲੋਕਾਂ ਨੂੰ ਸ਼ਰਦਾ ਦਾ ਵਿਸ਼ਾ ਹੀ ਨਹੀਂ ਹੈ ਤੁਹਾਨੂੰ ਹਾਂ ਝੂਠੇ ਦਰਬਸ਼ੰਦਾ ਦਾ ਸ਼ਰਦਾ ਬਿਰੋ ਫੜੇ ਨਹੀਂ ਲੈ ਸਕਦੇ ਲੋਕਾਂ ਨੂੰ ਵਿਸ਼ਵਾਸ ਕਰਨਾ ਥਾਗਾ ਬਣਦੇ ਵਿਸ਼ਵਾਸ ਕਿਵੇਂ ਕਰਾਉਂਦਾ ਝੂਠ ਬੋਲ ਕੇ ਤੇ ਜ਼ੋਰ ਨਾਲ ਕਰ ਦਿੰਦਾ ਉਹ ਉਹ ਵੀ ਲੈ ਜਾਂਦਾ ਜਿਹੜਾ ਹੁੰਦਾ ਜਮਣਾ ਹੁਕਮ ਸਪੱਤੇ ਨਾ ਇਹ ਹੁਕਮ ਸਾਡੇ ਸੈਂਕੜੇ ਕਾਂਗੜੀ ਹਰੇ ਜਿੱਤੇ ਹੁਕਮ ਨੂੰ ਰੱਦ ਕਰਤਾ ਜਮਣ ਮਰਨ ਹੈ ਜੀ ਵਰ ਬਾਣੀ ਕੁਝ ਹੋਰ ਕਹਿੰਦੀ ਐ ਸੀ ਕੁਝ ਹੋਰ ਕਹ ਰਹੇ ਕਿਉਂ ਕਹ ਰਹੇ ਉਹ ਕਹੇਗਾ ਲੋਕ ਫਸਦੇ ਨਹੀਂ ਕਾਵਾ ਡਰਗ ਦੀ ਜੇ ਬਾਬੇ ਬੁੱਢੇ ਦਾ ਨੋ ਨਹੀਂ ਲੈਂਦੇ ਗੁਰਬਾਣੀ ਦਾ ਰੰਦ ਹੋਗੀ ਗੁਰਬਾਣੀ ਦਾ ਜੋ ਵਿਚਾਰਤਾ ਰਸੀ ਉਹਦੇ ਤਾਂ ਉਹਦੇ ਤੇ ਤਾਂ ਉਠਾਰ ਖਾਤ ਕਰਤਾ ਸਰਦਾ ਬਾਬੇ ਬੁੱਢੇ ਉਹਦਾ ਖੋੜਾ ਮਾਰਤਾ ਜਨਮ ਹੋਇਆ ਇਹ ਕਹਿ ਕੇ ਬਾਬੇ ਬੁੱਢੇ ਦੇ ਬਲ ਰਜੂ ਹੋਇਆ ਇਹ ਗਲਤੀ ਸੀ ਰੱਦ ਕਰਤੀ ਵੀ ਜਮਣ ਕਰਨ ਹੋਗੋ ਨਹੀਂ ਪਰ ਲੋਕ ਬਸਾਦੇ ਆਪਣੇ ਦਰਬੁਦਾ ਬਲੀਦਾਨ ਦੇ ਦਿੱਤਾ ਸੱਚ ਦਾ ਬਲੀਦਾਨ ਦੇ ਦਿੱਤਾ ਕਾਦੇ ਖਾਤਰ ਵਾਹ ਵਾਸਤੇ ਭੀੜ ਇਕੱਠੀ ਕਰਨ ਵਾਸਤੇ ਲੋਕਾਂ ਨੂੰ ਨੇ ਬਣਾਉਣ ਵਾਸਤੇ ਅੱਖਾਂ ਖੋਲਣ ਵਾਸਤੇ ਨਹੀਂ ਨੇ ਬਣਾਉਣ ਵਾਸਤੇ ਤੇ ਹੁਣ ਕਹਿੰਦੇ ਨੇ ਤਾਂ ਕਬਰਾਂ ਤੇ ਜਾਣ ਲੱਗੇ ਜਾਣ ਗਈ ਤੂੰ ਸ਼ਰਦਾਬਾਨ ਬਣਾਏ ਨੇ ਯਾ ਇਥੋਨੇ ਬੁਰੀ ਗੰਦੀ ਕੁ ਸ਼ਰਦਾ ਧੂਕਾ ਤੇ ਚਲੇ ਜਾਂਦੇ ਨੇ ਸ਼ਰਦਾਬਾਨ ਲੋਭੀ ਹੁੰਦਾ ਸ਼ਰਦਾਵਾਲ ਨਾਲ ਲੋਬੀ 'ਚ ਦੱਸੋ ਕੀ ਫਰਕ ਹੈ ਜਰਾ ਕੋਪਰੇਸ਼ਨ ਕਰਕੇ ਦੇਖੋ ਇਹਦਾ ਖੋਲ ਕੇ ਦੇਖੋ ਖਿੜਕੀ ਦਵਾਵਾਲ ਸ਼ਰਦਾਵਾਲ ਹੈ ਲੋਬੀ ਸ਼ਰਦਾ ਪੂਰੀ ਕਰਨ ਵਾਲਾ ਉਹਦਾ ਲੋਬੀ ਦਾ ਗੁਰੂ ਯੂਪੀ 'ਚ ਕਹਿੰਦੇ ਹੁੰਦੇ ਨੇ ਇੱਕ ਕਹਾਣੀ ਹੈ ਕਹਾਣੀ ਨਹੀਂ ਮੁਹਾਵਰਾ ਹੈ ਗੁਰੂ ਚੇਲਾ ਲਾਲਚੀ ਦੋ ਲੋ ਖੇਲਨ ਦੋ ਦੋ ਖੇਲਨ ਤੁਰਦੇ ਦਾ ਉਹ ਖੈਰ ਦੇ ਨੇ ਗੁਰੂ ਤਾਂ ਕਹਿੰਦਾ ਵੀ ਤੂੰ ਮੱਥਾ ਟੇਕ ਜਾ ਨਗਰ ਦੇ ਜਾ ਜੋ ਹੈ ਤੇਰੇ ਚ ਤੂੰ ਨੂੰ ਪਤਾ ਪੁੱਤ ਲੈਂਦਾ ਨਾ ਗੁਰੂ ਜੋ ਹੈ ਚੇਲੇ ਨੂੰ ਕੁਛ ਨਹੀਂ ਤੇ ਉਹ ਅਰਦਾਸ ਕਰਦਾ ਤਾਂ ਮੈਂ ਅਰਦਾਸੇ ਕਰਦਾ ਤਾਂ ਹੱਥ ਦਾ ਭਗਵਾਨ ਤੇ ਚੇਲਾ ਆਪੇ ਕਰ ਲਵੇ ਤਦੋਂ ਬਾਸ਼ਾ ਨੇ ਕਹਾਂ ਕੋਈ ਸਪਾਰਸ਼ ਨਹੀਂ ਚਲਦੀ ਉਹਦੇ ਨਾਲ ਜਿਸ ਬਾਰਸ਼ ਨਹੀਂ ਚਲਦੀ ਅਸੀਂ ਕਿਸ ਤੇ ਅਰਦਾਸ ਕਿਉਂ ਕਰਾਉਣੀ ਹੈ ਜਿਸ ਬਾਰਸ਼ ਚਲਦੀ ਨਹੀਂ ਉਹਨਾਂ ਦੇ ਬਲੋਕ ਆ ਕਹਤਾ ਜਿਕੇ ਇਸ ਬਾਰਸ਼ ਨਹੀਂ ਚਲਦੀ ਉਹਦੇ ਕਰ ਗਹੋ ਸਭ ਗਿਆ ਵੀ ਕਿਹਾ ਕੋਟ ਨਾ ਛੋਟ ਨਾ ਕੋਟ ਨਾ ਤੋਸ਼ਾ ਤੋਸ਼ਾ ਤੋਸ਼ਾ ਜੇ ਸੁਧਰੀ ਕੋਈ ਕਿਰਾਨੀ ਆ ਸਾਹ ਮੁਸ਼ਕਿਲ ਆ ਸਾਡੀ ਜੇ ਸੇ ਬਚਾਓ ਕੋਈ ਯਾਨਾ ਨਹੀਂ ਕਮੋੜੋ ਇਸੋ ਦੇਖੇ ਛੋੜ ਕੇ ਜਨੂਣੀ ਵੀ ਵੱਡਾ ਆਦਮੀ ਹੈ ਚੱਲ ਬੇਰੂ ਛੋੜ ਦੇ ਦੀਏ ਇਸ ਭਾਰਸ਼ਾ ਦੀ ਕੋਈ ਘਰ ਤੋਂ ਵਿਕਾਰ ਦਉ ਹੱਥ ਛਾੜੋ ਦੋ ਹੱਥ ਛਾੜ ਕੇ ਵਿਕਾਰ ਕਰਨ ਲੱਗਿਆ ਹੈ ਦੇਖ ਲਾ ਕੇ ਕਿਸੇ ਨੂੰ ਕੋਈ ਛੋਟ ਨਹੀਂ ਹੈ ਚੈ ਲੋਕ ਡੈਗੁਰੂ ਹ ਕਿੰਨੇ ਲੋਕ ਤੈਨੂੰ ਮੰਦਰ ਦੇ ਇੱਥੇ ਇੱਥੇ ਛੋਟ ਹੋ ਜਾਂਦੀ ਹੈ ਤੇ ਹੋ ਜਾਂਦੀ ਤੇ ਤੇ ਨਾਲ ਜਿਹੜਾ ਸਾਡੀ ਨੁਖਾਂਸੀ ਦੇਤੀ ਮੁਲਕ ਦੇ ਹਾਲਾਤ ਖਰਾਬ ਹੋ ਗਏ। ਟਰੂਲ ਬੰਦ ਹੀ ਦੇਸ ਜਿਹਦੇ ਕਰਕੇ ਖਾਣਾ ਖਰਾਬ ਰਹੀ ਹੁੰਦੇ ਹਾਲਾਤ ਉਹਨੂੰ ਚਾਹ ਨਜਾਇਜ਼ ਵੀ ਆ ਜਵੇ ਕੋਈ ਗੱਲ ਨਹੀਂ। ਮੁਲਕ ਦੇ ਹਾਲਾਤ ਨਹੀਂ ਖਰਾਬ। ਦੇਸ਼ ਦੇ ਵਿੱਚ ਨਹੀਂ ਹੈ ਇਹਨੂੰ ਅਸੀਂ ਦੇਣਾ। ਇਹਦੀ ਫਸਲ ਨੂੰ ਦੇਸ਼ ਨੂੰ ਕੋਈ ਫਰਕ ਪੈਂਦਾ ਚਾਹ ਨਜਾਇਜ਼ ਦਿੱਤੀ ਗਈ ਦਿੱਤੀ। ਇਹ ਇੱਥੇ ਦਾ ਨਹੀਂ ਉਹ ਐਸ ਲੋਕ ਦਾ ਹਈ ਆਵਤ ਹੁਕਮ ਬਿਨਾਵਤ ਹੁਕਮ ਬਿਨਾਸ ਹੁਕਮ ਬਿਨਾਸ ਹੁਕਮ ਜੰਮਣਾ ਔਰ ਮਰਨਾ ਆਗਿਆ ਪਿੰਨਣਾ ਕੋਈ ਆਗਿਆ ਆਗਿਆ ਤਾਂ ਬਾਹਰ ਕੋਈ ਕੀ ਇਸ ਗੱਲ ਦਾ ਅਸੀਂ ਪ੍ਰਚਾਰ ਕਰਦੇ ਆ ਇਮਾਨਦਾਰੀ ਨਾਲ ਜੇ ਜੀ ਇਸ ਗੱਲ ਦਾ ਇਮਾਨਦਾਰੀ ਨਾਲ ਪ੍ਰਚਾਰ ਕਰੀਏ ਸਭ ਤੋਂ ਘੜ ਜੂਗੇ ਸਾਡੇ ਸ਼ਰਦਾ ਕਮ ਸਰਦੋ तो ਨਹੀਂ ਇਹ ਸਰੂ ਉਹ ਜਾਂ ਹੁਕਮ ਨਾਲੇ ਵੇ ਗੁਰਦੁਆਰੇ ਜਾ ਕੀ ਕਰਨ ਵਾਂ ਦਾ ਜਾਈਏ ਜਾਂ ਯਹਾਂ ਨਾ ਹੋਏ ਜੇ ਕੈਰੀਏ ਸਰਬ ਵਿਆਪੀ ਹੈ ਹੋ पका ਅੰਦਰ ਇੱਕ ਪੁਕਾਦੀ की ਗੁਰਦੁਆਰੇ ਕੀ ਕਰਜੋਗੇ ਕੀ ਕਰਜੋਗੇ ਇਸ ਕਰਕੇ ਪ੍ਰਭਗਿਆਨੀਆਂ ਨੇ ਮੰਦਿਰ ਨਹੀਂ ਬਣਾਏ ਹੁਣ ਮੰਨੇ ਨੇ ਗੁਰਦੁਆਰੇ ਸਾਡੇ ਪ੍ਰਭਗਿਆਨੀਆਂ ਜੇ ਨੇ ਫਿਰ ਤਾਂ ਸਰਬਆਪੀ ਬੰਦੇ ਹੀ ਨਹੀਂ ਉਧਰ ਬਣਾ ਕੇ ਦੂਜੀਆਂ ਬੱਤਾਂ ਸਾਰੀਆਂ ਦੇ ਮੰਦਰ ਨੇ ਕੋਈ ਜਿਹਨੇ ਨਹੀਂ ਮੰਦਰ ਬਣਾਇਆ ਕੋਈ ਜੇ ਬਣਾ ਦਿੱਤੇ ਨੇ ਤਾਂ ਫਿਰ ਤਾਂ ਸਰਬਆਪੀ ਬੰਦਾ ਹੀ ਨਹੀਂ ਹੋ ਰੱਖਣ ਦੇ ਸਰੀਕਾ ਬਸ ਦਖਨ ਦੇ ਵਿਚਲੇ ਅਨੰਕਾਰ ਦਾ ਬੰਦਰ ਰਿਹਾ ਹੂੰ ਇਹ ਦੁਆਰੇ ਉਹਨਾਂ ਦਾ ਪਛਮੇ ਦੇ ਵਿੱਚ ਲੁਕਾ ਅਸੀਂ ਤਾਂ ਟਿਪੜੀ ਕਿੱਤੀ ਸੀ ਉਹ ਰੋਤੀ ਵਾ ਅਸੀਂ ਟਿਪੜੀ ਆ ਕੀਤੀ ਅਸੀਂ ਸਾਚੇ ਬਣਾ ਲਿਆ ਡੱਕਲ ਉਹਨਾਂ ਦੀ ਕਰੇਗੇ ਉਹਨਾਂ ਦੀ ਗੱਲ ਕਰਦੇ ਲੋਕ ਉਹ ਡੁੱਬ ਗਿਆ ਹੋਇਆ ਮੱਤਾ ਤੁਸੀਂ ਡੁੱਬਣਾ ਉਹ ਡੁੱਬਿਆ ਨੂੰ ਤਾਰਨ ਵਾਲੀ ਮੱਤਾ ਹੈ ਕੋਈ ਸਿਰਫ ਸਾਰੀਆਂ ਬੱਤਾਂ ਡਬੋਣ ਵਾਲੀਆਂ ਨੇ ਇੱਕੋ ਮੱਤਾ ਸਾਰੀਆਂ ਬੱਤਾਂ ਨੂੰ ਤਾਰਾਂ ਵਾਲੀ ਉਹਨਾਂ ਬੱਤਾਂ ਦੇ ਬੰਦੇ ਨੂੰ ਤਾਰਨ ਵਾਲੀ ਆਪਣੇ ਦਾ ਤਾਰ ਨਹੀਂ ਇਹ ਤਾਂ ਡੁੱਬਦੀਆਂ ਕਿਸ਼ਤੀਆਂ ਦੇ ਬੰਦੇ ਵੀ ਕਹਿੰਦੇ ਨੇ ਵੀ ਜਹਾਜ਼ ਚਾੜ੍ਹੋ ਭਾਈ ਉਹ ਕਿਸ਼ਤੀਆਂ ਨੇ ਨਾ ਲਹਿਰਾਂ 'ਚ ਫਸੇ ਹੋਏ ਇਹ ਤਾਂ ਉਹਨਾਂ ਕੋਲ ਵੀ ਜਾ ਕੇ ਜਹਾਜ਼ ਲਾਤਾ ਵੀ ਆਜਵਾਜ ਭੇਜੋ ਕਿਸ਼ਤੀ ਨਹੀਂ ਪਾਰ ਲਾਉਣ ਦੇਣੇ ਸੁਰੂ ਇੱਥੋਂ ਤੇ ਇਹਨਾਂ ਨੇ ਉਹ ਵੀ ਛੋਟੀ ਭੈੜੀ ਕਿਸ਼ਤੀ ਬਣਾ ਕੇ ਰੱਖਤਾ ਇਹਨੂੰ ਤਰ ਕਿਰਨ ਦੇ ਲੋਭੀਆਂ ਨੇ ਸਵਾਰਥੀਆਂ ਨੇ ਸਵਾਰਥੀਆਂ ਦੇ ਲੋਭੀਆਂ ਦੇ ਹੱਥ ਚ ਆ ਗਿਆ ਪ੍ਰਚਾਰ ਇਹ ਪ੍ਰਚਾਰ ਦੇ ਵਿੱਚ ਸਵਾਰਥਾਂ ਆ ਜਾਊਗਾ ਇਹ ਪ੍ਰਚਾਰ ਨਹੀਂ ਜਿੱਥੇ ਸਵਾਰਥਾਂ ਲੋਭ ਆ ਗਿਆ ਲੋਭੀਆ ਸਵਾਰਥੀ ਦੀ ਨਿੰਦਿਆ ਕੀਤੀ ਹੋਈ ਬੜੀ ਸਵਾਰਥੀਆ ਕਹਾਂ ਲੋਭੀਆ ਤਾਂ ਬਾਈ ਨਹੀਂ ਰਹੇ ਕਾਰਤੀ ਸਵੈਮਤਾ ਜੇ ਦੇਤਾ ਹੈ ਸਵੈਮ ਪਰਸਨਲ ਹਿੱਤ ਇਹ ਤੇ ਪਰਚਲ ਪਰਸਨਲ ਹਿੱਤ ਦੀ ਕੁਰਬਾਨੀ ਹੈ ਸਾਡੀ ਇਹਦੇ ਵਿੱਚ ਇਹ ਰਸਤਾ ਪਰਸਨਲ ਹਿੱਤਾਂ ਦੀ ਕੁਰਬਾਨੀ ਦੇਣ ਵਾਲਾ ਹੀ ਹੈ ਪਹਿਲਾਂ ਇਹਨਾਂ ਦੀ ਕੁਰਬਾਨੀ ਦੇਖ ਕੇ ਫਿਰੇ ਮਾਰਗ ਤੇ ਚੱਲੂਗਾ ਤਨ ਮਨ ਤਨ ਸਭ ਸੌਪ ਪਰਸਨਲ ਤਾਂ ਸਾਰੇ ਕਰਵਾਉਂ ਕਰਦੇ ਉਹ ਤਾਂ ਬਾਹਰ ਗਏ ਤਰੋ ਪਰਸਨਲ ਪਰਸਨਲ ਇਹ ਤਾਂ ਹੁੰਦਾ ਨੇ ਸੰਸਾਰੀ ਜ਼ਿੰਦਗੀ ਵਾਸਤੇ ਕਹਿੰਦੇ ਨੇ ਪਹਿਲਾਂ ਮਰਨ ਕਬੂਲ ਜਿਹਦੇ ਮਰਨ ਲਈ ਕਬੂਲ ਲਿਆ ਜਿਹਨੇ ਸਦੀ ਹੋਣ ਜਾਣਾ ਉਹ ਭਾਂਡੇ ਫਿਰ ਕਿੱਠੇ ਕਰੂ ਭਾਂਡੇ ਛਣ ਕੇ ਰੱਖੂ ਗਿਹੜੇ ਚ ਕੌਣ ਆਹ ਰੋਟੀ ਖਰਾਉਣੀ ਉਹਨੂੰ हकबीर कहंदा सती की संचय पणड पणड सूर की सन्मुख रण ते डर पर पूरी जिंदगी आई लड़ाई आई मौका आया तो कुभी, कबीर कहंदा गगन दा मामा बाज्या पड्या निशानी खाओ खेत जो मांडो सूर वो फ्यूचर को तो उने चचौ जड़े, उने जड़े ਬੇਹੌੜਾ ਬਾਈ ਟਾਈਮ ਆ ਗਿਆ ਹੱਥ ਦਿਖਾਉਣ ਦਾ ਜੋ ਸਿੱਖਿਆ ਉਹਦਾ ਟਾਈਮ ਆਇਆ ਹੁਣ ਸਾਬਤ ਕਰਨ ਦਾ ਆਪਣੀ ਵਿਦਿਆ ਨੂੰ ਦਿਖਾਉਣ ਦਾ ਕਲਾ ਦਿਖਾਉਣ ਦਾ ਸਮਾਂ ਹੈ ਉਧਰੇ ਸੂਰ ਕੀ ਸਨ ਮੁਖਰ ਤਾਂ ਗਿਆ ਸਰ ਸੂਰਜ ਦਿਲੇ ਸੁਬਿਚ ਕਿ ਬਣਿਆ ਸੀ ਸਰਵੋਕਰਣ ਗਿਆ ਜੰਮੂ ਰਿਆ ਡਰ ਪੈ ਡਰ ਜੂ ਸਦੀ ਜੀ ਸੰਚੇ ਪੰਡਿਤ ਫਿਰ ਭੜਲੇ ਇਕੱਠੇ ਕਰੋ ਸਾਰੇ ਭਾਂਡੇ ਇਕੱਠੇ ਕਰਨ ਵਾਲੇ ਸੰਤਲ ਤੂੰ ਪੰਡਰ ਸਾਂਭਣ ਵਾਲੇ ਜਿਹੜੇ ਰੂਹ ਲੇਟਰ ਨਹੀਂ ਸੀ ਉਹ ਪਿੰਡਾਂ ਘਾਹਾਂ ਪੁੱਤਾਂ ਪਿਛਾ ਦੋ ਤੇ ਲੋਕਾਂ ਦੇ ਮੁੰਡੇ ਆਉਂਦਾਰੇ ਬਟ ਆਪਣੇ ਮੁੰਡੇ ਵਰਗੇ ਆ ਘਾਰੇ ਬਜੇ ਬੈਠੇ ये तोले लासल डेट है लाके उस पे कुर्सी ढोल वाले रे सारे स्वार्थ है राजकीय स्वार्थ है रास्ता ही परमार्थ का है स्वार्थ रास्ता ही नहीं है परवेशर का रस प्रवेशण स्वार्थी है प्रवेशर स्वार्थी है परमार्थी है ਉਥੇ ਸਵਾਰਥੀ ਕਿਵੇਂ ਬੋਝੂ ਆ। ਉਹਦੀ ਸੀਟ ਤੇ ਸਵਾਰਥੀ ਆਪਣੀ ਸੀਟ ਤੇ ਸਵਾਰਥੀ ਕਿਵੇਂ ਬੈਠਣ ਦੇ ਦੂ। ਆਹੋ ਉਹਦੀ ਸੀਟ ਐ। ਸਵਾਰਥੀ ਨੂੰ ਕਿਵੇਂ ਆਪਣੇ ਘਰ ਬਣ ਦੇ ਦੂ ਪਰਿਵਾਰਥੀ। ਸਵਾਰਥੀ ਉਹ ਸੰਸਾਰ ਬਣਾਇਆ ਅੱਡ ਇੱਥੇ ਹੀ ਰਹਿਣਗੇ। ਲਾੜ ਲਪੇੜ ਨੂੰ ਮਰਨ ਖਪੜ ਜੋ ਕਰਦੇ ਨੇ। ਕਦੇ ਰਾਖਾ ਦਾ ਰਾਜ ਹੋ ਗਿਆ ਕਦੇ ਦੇਵਤਾ ਦਾ ਹੋ ਗਿਆ। ਉਰੇ ਗਿਲਣ ਜੇ ਸਕਤਾ ਸੱਤੇ ਕੋ ਬਾਹਰ ਤਾਂਨ ਰੋਸ ਲੁ ਕੋਈ ਉਲੂ ਵੀ ਪਰ ਕੋਈ ਕਦੇ ਜਾਂਦੇ ਨੇ ਉਹਨੂੰ ਘਟ ਪੈਂਦਾ ਉਹਨੂੰ ਹੀ ਘਟ ਪੈਂਦਾ ਪਾਵੜਮ ਬੱਕ ਬੈਠਾ ਵੱਖ ਅਗੇ ਲਾ ਇਸ ਸੰਸਾਰ ਨੂੰ ਦੇਖ ਕੇ ਤਾਂ ਡਰ ਗਿਆ। ਕਿਹੜੇ ਦੇਵਤੇ ਬਲੋ ਜਿਹਨੇ ਬਣਾਇਆ ਇਹ ਸੰਸਾਰੀ? ਬੰਦੇ ਬਣਾਏ ਨੇ। ਇਹ ਕਾਜ ਨਹੀਂ ਹੈ। ਉਹ ਦੇਖੋ ਵੱਡਦਾ, ਵੱਡ ਤੇ ਚੜਦਾ ਹੈ ਜਿਹਾ ਠਾਰਾ ਨੇ। ਹੈਨਾ? ਉਹਨੂੰ ਕਹਿੰਦੇ ਨੇ ਸ਼ਿਵ ਹੈ। ਸ਼ਿਵ ਨਹੀਂ ਹੈ। ਸ਼ਿਵ ਸ਼ਿਵ ਕਰਕੇ ਧੌਲ ਵਾਲਾ ਬੰਦਾ ਹੈ ਕੋਈ ਉਹ। छम छम करके अंतए जोनर ते आवे बड़ जड़ा डौरुड़ो कावे नारा है फिर ना नहीं असल जखबीर कुछ और कह गया थे थप्पड़ मार गया पता नहीं लग, पता नहीं लग की मार गया बोलो नार कह गया शिवरुड़ो देन मार गया वहां अपना देखो वो अपनी आर मार गया पता लग गया नहीं असल की कह गया ਉਹਨੂੰ ਨਾਰ ਕਰ ਗਿਆ ਉਹ Shiv Shiv ਕਰਕੇ ਜੋ ਨਰ ਤੇ ਆਵੈ ਜੋ ਆਦਮੀ Shiv Shiv ਕਰਕੇ ਤੇ ਆਉਂਦਾ ਅਰੇ ਜਪਣਾ ਨਹੀਂ ਹੁੰਦਾ ਬੋਕੋ ਇੱਕ ਚੀਜ਼ ਉਚਾਰਨ ਕਰਨੀ ਜਿਹੜੀ ਰਾਮ ਰਾਮ ਹੈ ਜਪਣਾ ਨਹੀਂ ਹੈ ਤੇ ਆਉਂਦਾ ਉਹ ਤੇ ਆਉਣਾ ਕਰੀ ਨੂੰ ਜਪਣਾ ਦੇ ਦੇਣੀ ਕੋ ਲੋ ਧਿਆਨ ਕਰਦਾ ਕਿਸਾ ਉਹਦਾ ਲੋ ਲੈ ਕੇ ਜਪਣਾ ਨੂੰ ਸਮਝਣਾ ਹੁੰਦਾ ਬਿਰੋਏ ਆਉਂਦਾ ਉਹਦਾ ਨੋ ਲੈ ਕੇ ਯਾਦ ਕਰੀਏ ਯਾਦ ਲੋ ਲੈ ਕੇ ਕਰੀਏ ਜੇ ਪਰ ਜਾਣਦੇ ਹੋਈਏ ਪਹਿਲਾਂ ਤਾਂ ਹੀ ਆਉਂਦਾ ਯਾ ਜਿਹਨੂੰ ਜਾਣਦੇ ਹੋਈਏ ਜਿਹਨੂੰ ਜਾਣਦੇ ਨਹੀਂ ਉਹਦਾ ਯਾਦ ਕੀ ਹੋਣੀ ਸ਼ਿਵ ਸ਼ਿਵ ਕਰਕੇ ਜੋਰ ਨਾਲ ਧਿਆਵਾਂ ਵੜਦ ਜਾਂਦੇ ਫਿਰ ਵੜਦੇ ਚੜਦੇ ਡੌਰ ਬੰਦੇ ਕੋਲ ਨੇ ਉਹਨੂੰ ਡਰ ਘੈ ਤਾ ਸ਼ਿਵ ਨਹੀਂ ਹੈ ਉਹ ਹੈ ਕੌਣ ਮਹਾਦੇਵ ਅਤੇ ਉਹਦਾ ਸਾਰੇ ਹੀ ਨੇ ਉਹ ਇਹਨਾਂ ਜਿਹੜੀ ਵੱਡਾ ਇਹਨਾਂ ਦਾ ਆਗੂ ਹੈ। ਵਾਹ ਦੇਵ ਕੋ ਕਹਤ ਸਦਾ ਸ਼ਿਵ। ਇਹਦਾ ਮਾਨ ਹੈ ਬ੍ਰੂ ਸਦਾ ਸ਼ਿਵ ਕਹਿਣ ਲੱਗੇ ਬੰਦੇ ਨੂੰ। ਇਸ ਕਰਕੇ ਨਿਰੰਕਾਰ ਦਾ ਚਿਤ ਇਸ ਕਰਕੇ ਇਹਨਾਂ ਨੇ ਅਰਖਾਰ ਦੀ ਖੋਜੇ ਬੰਦ ਕਰਤੀ। ਚੀਨਲੇ ਬੰਦ ਕਰਤਾ ਇਹਨਾਂ ਨੂੰ। ਦੇਹਤਾਰੀ ਨੂੰ ਇਹਨਾਂ ਨੇ ਮੰਨ ਲਿਆ। ਜਦੋਂ ਦੇ ਤਾਰੇ ਨੂੰ ਅਸੀਂ ਨਾਮਕਾਰ ਮੰਨ ਲਿਆ ਨਾਲ ਨੂੰ ਨਾਮਕਾਰ ਬਣ ਲਿਆ ਗੁਰੂ ਗ੍ਰੰਥ ਨੂੰ ਨਾਮਕਾਰ ਮੰਨ ਲਿਆ ਪਰ ਗਾਂਧੀ ਦੀ ਖੋਜ ਆਪੇ ਬੰਦਾ ਹੋ ਗਈ ਸਾਡੀ ਗਾਂਧੀ ਖੋਜੀ ਕਿਰੇ ਕਿ ਫਿਰ ਹੋਰ ਕੀ ਕਰਨਾ ਜਦ ਪਾਉਣ ਨੂੰ ਅਮਰਤ ਮੰਨ ਲਿਆ ਅਮਰਤ ਪੀਵੇ ਅਮਰਤ ਹੋਏ ਫਿਰ ਗੁਰਬਾਣੀ ਨੂੰ ਮੰਨ ਕੇ ਕਰਨਾ ਵੀ ਕੀ ਰਹਿਤ ਰੱਖ ਕੇ ਲੋੜ ਵੀ ਕੀ ਅਮਰਤ ਪੀ ਲਿਆ ਅਬਰ ਹੋ ਗਏ पर होरे तो कहां बड़ी की बात है सब कुछ असली अपना ही आप है रद्द करता hmm. दो चार गल्ला सब कुछ आप अपना सारा ही नाश करता लोड़े नहीं है जी जे मुक्ति हो जाती है 84 पौड़ियों पे पाठ करे थे, गोलवार सब hmm. जी मुक्ति हो जाती है वो जेड़ा हैगा सन निकले थे ਫੇਰ ਹੰਬਰਦ ਕਿ ਹੋਇਆ ਕਿ ਬਾਣੀ ਕਿਉਂ ਬੜੀ ਹੈ ਸਿੱਖ ਕਿਉਂ ਬੜੀ ਮੋਤੀ ਕਰਾਉਣੀਆਂ ਤੁਹਾਨੂੰ ਕੋਈ ਹੋ ਜਵੇ ਉੱਥੇ ਨਿਕਲੀ ਬੇਬੀ ਦੀ ਗੱਲ ਖਤੋਈ ਸਾਰੇ ਧਰਮ ਆਦਮੀ ਆਦਮੀ ਨੂੰ ਕੁਛ ਕਰ ਨਾ ਰਬੇ ਬੇਟਾ ਉਹਨੇ ਕਿਹਾ ਕਰਨਾ ਹੈ ਆ ਆਦਾ ਮੈਂ ਕਰ ਲੂੰਗਾ ਅਗਰ ਮਿਲ ਜਵੇ ਤਦੋਂ ਕਰ ਲੂ ਤਾਂ ਸੁੱਖੇ ਹੀ ਕਬ ਜਾਂੜ ਨੂੰ ਬੀਜਿਓ ਘੜਦਣੇ ਇਹ ਆਪਰੇ ਕੜ ਜਾਣੇ ਨਿਵੇਦੋਂ ਦਾ ਜਾਂਦਾ ਹੈ ਸੁੱਖੇ ਕਬ ਨੂੰ ਤੋ ਅਸੀਂ ਸਾਰੀ ਉਹ ਫੱਟੀ ਪੋਛ ਲਈਓ ਸਰਾਂ ਧਰਵੇ ਖਤਮ ਕਰ ਲਿਆ ਸ਼ਾਇਦ ਪਤਾ ਨਹੀਂ ਕੰਨ ਲਿਆ ਸ਼ਾਇਦ ਪਤਾ ਵੀ ਹੈ ਫਿਰ ਉਹ ਕਹਿੰਦੇ ਵੀ ਫਿਰ ਗੋਲ ਘੜਜੂ ਉਹ ਕਿਹੜੇ ਹੂਲ ਅਗਈਏ ਕਹਿੰਦੇ ਕਿਵੇਂ ਗਈਏ ਹੁਣ ਹੇ ਆਬਦ ਹੁਕਮ ਬినాਸ਼ ਹੁਕਮ ਆਗਿਆ ਭਿੰਨਾ ਕੋਏ ਆਵਣ ਜਾਣਾ ਤੇ ਮਿਟੇ ਨਾਨਕ ਜੇ ਮਨ ਸੋਏ ਆਵਣ ਜਾਣਾ ਤੇ ਮਿਟੇ ਫੇਰ ਆਵਣ ਜਾਣਾ ਮਿਟ ਸਕਦਾ ਜੇ ਮਨ ਨਾਨਕ ਜੇ ਮਨ ਸੋਏ ਆਉਣ ਜਾਣ ਦੇ ਬਿਖੇ ਨਾ ਨਾਨਕ ਪ੍ਰਗਟ ਹੋ ਜਵੇ ਸੋਇ ਦਾ ਮਤਲਬ ਹੁਕਮ ਹੈ ਸੋਇ ਹੁਕਮੇ ਜੀ ਦੇ ਵਿੱਚ ਪ੍ਰਗਟ ਹੋ ਜਵੇ ਜੀ ਦੇ ਬੰਦ ਚ ਨਾ ਪ੍ਰਗਟ ਨਾ ਹੁਕਮੇ ਜੀ ਦੀ ਵਜਾ ਨਾਲ ਜਪਣਾ ਪਰਨਾ ਜੇ ਉਹੀ ਵਿੱਚ ਆਪ ਖਲੋਆ ਖਲੋ ਜਵੇ ਆਕੇ ਉਹ ਆਬ ਜੰਬਣਾ ਮੰਨ ਲੋ ਕੱਟ ਸਕਦਾ ਉਸੇ ਹੁਕਮ ਨਾਲ ਜੰਬਣਾ ਮੰਨ ਲੋ ਕਟਿਆ ਜਾਊ ਜਿਹੜਾ ਹੁਕਮ ਜੰਬਲ ਬਨ ਦਾ ਕਾਰਨ ਹੈ ਕਾਰਨ ਹੁਕਮ ਆਇਆ ਹੁਕਮੇ ਜਾਏ ਉਹ ਰਸਮੀ ਹਾਂ ਜੇ ਹੁਕਮ ਨੇ ਜੇ ਹੁਕਮ ਹਰਦਾਇ ਪਰ ਗੜੋ ਮੈਂ ਤੁ ਬਾਜੂ ਸਮਾ ਵੀ ਹੁਕਮ ਚ ਰਹਿੰਦਾ ਹੈ ਜੰਬਲ ਬਨ ਵੀ ਜੋ ਕੁਝ ਸਮਾਜ ਵਿੱਚ ਜਗਲਬਲ ਰੱਖੇ। ਕੋਈ ਕੁਝ ਸਵਾਦ ਮਿਟਾ। ਕੋ ਕਮ ਦਿੱਤ ਨੂੰ ਲੈ ਜਾਂਦਾ ਉਧਰੋਂ ਚੱਲੇ ਹੁਸ਼ੀਰੋ ਦਰਿਆ ਜਦੋਂ ਲਿਆਦਾ ਉਧਰੋਂ ਚੱਲੇ। ਰੁਕਬਲਾ ਅਨੁਸਾਰੀ ਹੋਈ ਵੇ ਅਨੁਸਾਰੀ। ਹੋਰੇ ਬਿਸਰੀ ਦੀ ਡਾਲੀ ਨਹੀਂ ਆ ਵੀ ਪਾਣੀ ਚ ਘੁੱਲ ਜਵੇ। ਜਿਵੇਂ ਹੁਕਮ ਚਲਾਉਂਦਾ ਉਧਰ ਵੀ ਚੱਲੇ ਖੁਸ਼ੀ ਨਾਲ ਸਭਾਈਆ ਦਰਿਆ ਛਾਲ ਵਰਤੀ ਜਿੱਦ ਨੂੰ ਦਰਿਆ ਜਾਂਦਾ ਠੀਕ ਹੈ ਆਪਣੀ ਵੀ ਤਾਂ ਅਗਰ ਉਹ ਨੂੰ ਲਾਵੇ ਦਰਿਆ ਵੀ ਲੈ ਜਾਂਦਾ ਇਹ ਦਰਿਆ ਦਾ ਵਿਰੋਧ ਕਰਦਾ ਦਰਿਆ ਇਧਰ ਨੂੰ ਲੈ ਜਾਂਦਾ ਇਧਰ ਵੀ ਜਾਂਦਾ ਜਾਂਦਾ ਤਾਂ ਫਿਰ ਵੀ ਉਧਰ ਮੈਨੂੰ ਦਰਿਆ ਲੈ ਕੇ ਜਾਂਦਾ ਜਿੱਦੋਂ ਮਰਜੀ ਜੋਰ ਲਾਈ ਜਾਵੇ ਤੈਰਿਓ ਉੱਥੇ ਪਾਸੇ ਨੂੰ ਤੁਹੇ ਦੇਰ ਘਾਲ ਮਾਰ ਕੇ ਜਿੱਦੋਂ ਪਾਣੀ ਉਹਦੋਂ ਉਤਰ ਕੇ ਖੋ ਜਿੰਨਾ ਮਰਜੀ ਜੋਰ ਲਾਈ ਜਾਓ ਇਹਦੇ ਨੂੰ ਉਤਾਰਨਾ ਰਿਜ਼ਲਟ ਇਹੋ ਜਾਊਗਾ ਬਸ ਇਹ ਤਰੀਕਾ ਕਰੋ ਉਹ ਤਾਂ ਲਾਉਂਦੇ ਆਂ ਅਸੀਂ ਵੀ ਪੁੱਠੇ ਪਾਸੇ ਮੁਝਾਈਏ ਕਿਉਂਕਿ ਤਾਂ ਬਾਹਰ ਜਾ ਨਹੀਂ ਸਕਦਾ ਸਭ ਨੇ ਸ਼ਾਵਾਂ ਵਾਰੀਆਂ ਕਰਤਾ ਜੋ ਮਰਜੀ ਕਰੀ ਜਾਓ ਜਿੰਨਾ ਮਰਜੀ ਕੋਸ਼ਿਸ਼ ਕਰੀ ਜਾਓ ਇਹਦੇ ਨੂੰ ਜਾਣ ਦੀ ਜਿੱਦੋਂ ਪਾਣੀ ਉਹਦਾ ਪਾਣੀ ਇਹਦੇ ਨੂੰ ਲੈ ਕੇ ਜਾਣਾ ਉਧਰੇ ਹਾਂ ਇਹੋ ਜੀ ਬਹੁਤ ਗਰਭ ਵਾਸੇ ਹਾਂ ਉਹ ਮਗਨ ਮੀਠ ਜੋਰ ਜਿਹੜੇ ਜੀ ਹੈ ਇਹ ਜਿਹੜੇ ਜੀਵ ਹੈ ਇਹ ਬਹੁਤ ਸਾਰੇ ਜੋੜਰਾਂ ਦੇ ਵਿੱਚ ਇਹ ਜੀਵ ਐਉਂ ਜੀ ਬਹੁਤ ਗਰਭ ਵਾਸੇ ਬਹੁਤ ਹੰਕਾਰ ਦੇ ਬਹੁਤ ਸਾਰੇ ਦਰਬਾ ਦੇ ਵਿੱਚ ਬਹੁਤ ਸਾਰੀਆਂ ਜੋੜਰਾਂ ਦੇ ਵਿੱਚ ਗਰਭ ਚੋ ਉਜਬ ਵਸਿਆ ਬਹੁਤ ਸਾਰਿਆਂ ਨੇ ਬਰਦਾ ਦੇ ਵੀ ਉਹ ਮਗਰ ਮੀਟ ਜ਼ੋਨ ਫਸੇ ਹਰ ਜ਼ੋਨ ਦੇ ਵਿੱਚ ਇਹਨੂੰ ਜ਼ੋਨ ਫਸੇ ਹਰ ਜਗ੍ਹਾ ਇਹ ਉਹ ਮਿੱਠਾ ਲਾ ਕੇ ਐ ਕਹਿੰਦਾ ਉਹ ਇਹ ਜ਼ੋਨ ਦੇ ਵਿੱਚ ਉਹ ਐਸੇ ਦੀ ਜ਼ੋਨ ਜੇ ਆਗੇ ਉਹ ਕਹਿੰਦਾ ਅਰੇ ਜੀ ਹਰ ਵਾਰੇ ਵੀ ਰਿਹਾ ਅਰੇ ਜੂਨਾਂ ਬਿੱਠੀ ਲੱਗਦੀ ਰਹੀ ਹਾਂ ਹਾਂ ਹਾਂ ਸਰਬ ਨੂੰ ਸੰਸਾਰ ਦੇਖਣਾ ਉਹਦੇ ਵਿੱਚ ਹੈਗਾ ਵੀ ਸੰਸਾਰ ਮੈਨੂੰ ਦਿਖਦਾ ਰਿਹਾ ਜੂ ਕੋਈ ਵੀ ਹੋ ਜਿਹੜਾ ਬਿਠਾ ਐਸਾ ਲੱਗਿਆ ਹੈ ਹਰ ਜੂਨ ਦੇ ਹਰ ਸ਼ਰੀਰ ਦੇ ਐਸਾ ਫਸਿਆ ਹੈ ਉਹ ਦੇ ਵਿੱਚ ਹਰ ਜੂਨ ਚੜਲੋ ਰਿਸੀਓ ਚੈੱਕ ਕਿ ਜੂ ਲੱਗਦੀ ਐ ਅੱਜ ਸਾਨੂੰ ਵੀ ਨਹੀਂ ਆਦਮੀ ਨੂੰ ਅੱਜ ਜਿਹੜੀ ਉਹ ਭੜੀ ਜੂ ਲੱਗਦੀ ਐ ਸਾਡਾ ਵੀ ਉਹੀ ਹਾਲ ਸੀ ਉਹ ਚੰਗੇ ਲੱਗਦੀਆਂ ਸਨ ਹਾਂ ਸੀ ਹੂੰ ਸਸਾਰ ਦਾ ਦੇਖਦਾ ਰਹਿੰਦਾ ਜੋ ਜਨਾਬੀ ਹੋਵੇ ਬੇਨ ਗੱਲ ਸੰਸਾਰ ਦੇਖਣ ਦੀ ਸੰਸਾਰ ਦੇਖਣ ਦੀ ਸੰਸਾਰ ਦਾ ਬੇਵਿਦਿਦੂਗਾ ਇਹਨਾਂ ਮਾਇਆ ਤ੍ਰੈ ਗੁਣ ਵਸ ਕੀਨੇ ਇਹਨਾਂ ਮਾਇਆ ਇਸ ਮਾਇਆ ਨੇ ਤ੍ਰੈ ਗੁਣਾਂ ਦੇ ਵਿੱਚ ਹੋ ਕੇ ਤੇਨ ਪੱਖ ਕਰਕੇ ਸਾਰੇ ਲੋਕ ਬਾਤ ਕਰਦੇ ਦੋ ਦਿਵਾਰਾਂ ਵਾਲਾ ਕਦੇ ਵਕਾਰ ਨਹੀਂ ਜਿੰਨਾ ਚਿਰ ਤਿੰਨ ਕੰਦਾ ਨਹੀਂ ਬਣਦੀ ਉਹ ਤੇ ਚਾਰ ਤੇ ਚਾਰ ਦੁਆਰੀ ਅਸੀਂ ਕਹਿੰਦੇ ਪਰ ਤਿੰਨ ਕੰਦਾ ਨਾਲ ਵੀ ਟ੍ਰਾਇੰਗਲ ਬਣ ਜਾਂਦੀ ਹੈ ਬੁਖਾਰ ਬਣ ਜਾਂਦਾ ਹੂੰ ਤੋੜ ਲਈ ਜੇ ਤਿੰਨ ਹੋ ਜਾਣ ਤੱਕਵੂ ਆ ਜਾਂਦਾ ਬੰਦਾ ਸਮਝੇਂ? ਹਾਂ ਜਾਂਦਾ ਤਿੰਨ ਕੰਦਾ ਨਾਲ ਕਰਕੇ ਇਹ ਤਿੰਨ ਲੋਕ ਨੇ ਤਿੰਨ ਲੋਕਾਂ ਦੀ ਬਸ ਕੈਦ ਕਰ ਲੈ ਤੇਨੂੰ ਕੰਨ ਘਰਦੀਆਂ ਕਾਬੂ ਆ ਗਏ ਸਾਰੇ ਤੇਨਾ ਲੋਕ ਇਹ ਤਿੰਨ ਲੋਕ ਤੇਨਾਂ ਗੱਲਾਂ ਦੇ ਵਿਚ ਹੀ ਨੇ ਚੌਥੀ ਗੱਲ ਨਹੀਂ ਰਹੇ ਇਹਨ ਮਾਇਆ ਤ੍ਰੈ ਗੁਣ ਬਸ ਕਿੰਨੇ ਤਿੰਨ ਗੁਣਾ ਦੇ ਵਿੱਚ ਕੀ ਹੈ ਸਾਰੇ ਲੋਕ ਤਿੰਨੇ ਦਿਵਾਰਾਂ ਦੇ ਵਿੱਚ ਤਿੰਨੇ ਗੁਣ ਤਿੰਨ ਦਿਵਾਰਾਂ ਨੇ ਬਸ ਕਿੰਨੇ ਇਹ ਤ੍ਰੈ ਗੁਣੀ ਮਾਇਆ ਕਿਹਾ ਜਾਂਦੀ ਜੀ ਮਾਇਆ ਜਿਹੜਿਆ ਹੋਇਆ ਆਪਰ ਮੋਕਟੇ ਕਟਦੇ ਨੇ ਜਦੋਂ ਤੁਮ ਸੋਚੀ ਮਾਇਆ ਦਾ ਮਾਇਆ ਦੇ ਮਾਇਆ ਦੇ ਜਿਹੜੇ ਗੁਣ ਨੇ ਜ਼ਹਿਰ ਦੇ ਗੋਲ ਜਾਜਿਬੀ ਗੋਲ ਹੁੰਦੇ ਅਮਰ ਜਿਬੀ ਗੋਲ ਹੁੰਦੇ ਅਮਰਤ ਤੇ ਗੋਲ ਜ਼ਹਿਰ ਦੇ ਗੋਲ ਨਾਲ ਮੇਲੇ ਲਿਫਤ ਅਬਰਤ ਵਿੱਚ ਅਡ ਗੋਲ ਨੇ ਜ਼ਹਿਰ ਦੇ ਅਡ ਗੋਲ ਜ਼ਹਿਰ ਦੇ ਗੋਲ ਉਮਰਤ ਦੇ ਜਿਹੜੇ ਅੰਮ੍ਰਿਤ ਦੇ ਵਿੱਚ ਜ਼ਹਿਰ ਦੇ ਅੰਦਰ ਅੰਦਰ ਗੁਲਦੇ ਉਹ ਜ਼ਹਿਰੀਲੇ ਸਭ ਪੰਜ ਕੋ ਜਿਆਦਾ ਜ਼ਹਿਰੀਲੇ ਨੇ ਕੋ ਥੋੜੇ ਜ਼ਹਿਰੀਲੇ ਨੇ ਇਹਨਾਂ ਦੇ ਵਿੱਚ ਆਪਸ ਵਿੱਚ ਇਹਨਾਂ ਦਾ ਅਪਸੂਚੀਤਾ ਹੈ ਮੇਲ ਸੰਸਾਰ 'ਚ ਕੋਈ ਵੱਡਾ ਕੋਈ ਛੋਟਾ ਕੋਈ ਵੱਡਾ ਕੋਈ ਛੋਟਾ ਕੋਈ ਦੋ ਵੱਡੇ ਕੋ ਦੋ ਵੱਡੇ ਪਰ ਉਹਦੀ ਭਗਤਾਨਾ ਦਾ ਕੋ ਮੇਲ ਨਹੀਂ ਖੜਾ ਤਦ ਨਾਲ ਤਾਂ ਬੋਲਿਆ ਉਹ ਛੋਟੇ ਵੱਡੇ ਇਹਦੀ ਗੱਲ ਨਹੀਂ ਹੈ ਇੱਥੇ ਛੋਟੇ ਵੱਡੇ ਹੈਗੇ ਨੇ ਤਬੋਗੜਾ ਵਾਲੇ ਅਨੁਢੀ ਸੋ ਜਿਆ ਜਾਂਦੇ ਕਿੰਨਾ ਨਹੀਂ ਜਮਾ ਨਹੀਂ ਤਬੋਗੜਾ ਵਾਲੇ ਨੇ ਬੰਦ ਕਰਮ ਨੇ ਨੀਚਾਦਰ ਨੀਚ ਜਾਤ ਨੀਚੀ ਹੋ ਉਤਨੀਚ ਤਬੋਗੜਾ ਵਾਲੇ ਦੇ ਸਾਰੇ ਸਵਾਰਥ ਦੀ ਹੱਦ ਜਿਹੜੀ ਹੈ ਤਬੋਗੜਾ स्वार्थी सबसे तलो गुण स्वार्थी विच स्वार्थ के बड़े तो बड़े पेड़े काम करोगे स्वार्थ में आके यार तू hmm. बहुत पाप तो बड़े पाप कर्म कर दंदा स्वार्थ करा दंदा hmm. जेड़ा स्वार्थ है ਲੋਵ ਦੇ ਵਿੱਚ ਆ ਜਾਂਦਾ ਸਵਾਰਥ ਦੇ ਬੁਟੇ ਨੂੰ ਲੋਗ ਦਾ ਫੜ ਲੰਦਾ ਤਮਾਂ ਲੋਗੇ ਆ ਤਮਾਂ ਸੁਆਹਣ ਦਾ ਬੁਟੇ ਸਵਾਰਥ ਦੇ ਪੈੜੂ ਨੂੰ ਲੋਗ ਫੜ ਲੰਦਾ ਜੇ ਸਵਾਰਥ ਹੀ ਤਾਂ ਲੋਭ ਸਵਾਰਥ ਦਾ ਬਹੁਤ ਬੀਜ ਰੂਪ ਹੈ ਸਵਾਰਥ ਵਿੱਚ ਬਹੁਤ ਸਾਰੇ ਉਗਲ ਲੱਗਦੇ ਨੇ ਬਸ ਸਾਰੇ ਉਗਲ ਦੀਆਂ ਕਿਉਂਕਿ ਸਵਾਰਥ ਪਰਮਾਰਥ ਹੈ ਨਦੂਰ ਪਾਸੇ ਘਰ ਤੋਂ ਬਿਲੋਂ ਹੋਣੀ ਵੱਡੀ ਉਹਨੂੰ ਪੱਠੇ ਕਿੱਥੋਂ ਬਣਦੀ ਸਾਰਥ ਸਾਰੇ ਸਾਸਰਦਾਲ ਸੋਰਥੀ ਸ਼ਿਆਦ ਨੂੰ ਸਵਾਰਸ ਤੁਹ ਰਹਦੀ ਹੈ ਗੁਰਮਤ ਪਰਮਾਰਸ ਤੁਹਦੀ ਹੈ। ਦੋਹਾਂ ਦਾ ਮੇਲ ਤੇ ਨੇ ਅਸੀਂ। ਇਹ ਗੱਲ ਮੈਂ ਨੂੰ ਕਹੀ ਸੀ। ਸ਼ਿਆਦ ਤੁ ਹੈ। ਸਿੱਖੀ ਪਰਿਵਾਰਤ ਹੈ। ਤੁਸੀਂ ਇਹਨਾਂ ਨੂੰ ਵੈਲਕਮ ਕਰ ਦੋਗੇ ਨਾ। ਦੋ ਬੇੜੀਆਂ ਤੇ ਬਹਿ ਰਹੇ ਹੋ ਤੁਸੀਂ। ਦੋ ਬੇੜੀਆਂ ਅਟੜਨ ਦੋ ਬੇੜੀਆਂ ਦੇ ਪੈਰ ਰੱਖਣ ਵਾਲੇ ਜਿਹਹ ਜਵਨ ਦਾ ਹਾਲ ਹੁੰਦਾ ਉਹ ਜਹ ਹੋਊਗਾ ਹੀ ਸਮਝਣ ਦਾ ਦੋ ਬੇੜੀਆਂ ਦੇ ਪੈਰ ਰੱਖਣ ਵਾਲਿਆਂ ਦਾ ਜੀਹਨ ਉਹ ਤੇ ਬੇੜੀਆਂ ਨੇ ਬਰੇ ਬਰੇ ਹੋ ਜਾਣ ਬਦਲ ਰੂ ਬਣ ਸਿੱਖੀ ਪਰਮਾਰਥ ਹੈ ਪਰਮੇਸ਼ਰ ਪਰਮਾਰਥੀ ਹੈ सब तो ਵੱਡਾ ਪਰਮਾਰਥੀ ਪਰਮੇਸ਼ਰ ਜਿਹੜਾ ਸਭ ਕੁਝ ਦੂਜੇ ਵਾਸਤੇ ਕਰਦਾ ਆਪਣੇ ਵਾਸਤੇ ਨਹੀਂ ਕਰਦਾ ਕੁਝ ਵੀ ਸੂਰਜ ਚੜਦਾ ਸਾਡੇ ਵਾਸਤੇ ਚੜਦਾ 20 ਪੈਦਾ ਸਾਡੇ ਵਾਸਤੇ ਪੈਦਾ ਹਵਾ ਬਣਾਈਏ ਸਾਡੇ ਵਾਸਤੇ ਬਣਾਈਏ ਐਨੀ ਬਨਸਪਤੀ ਬਣਾਈਏ ਸਾਡੇ ਵਾਸਤੇ ਬਣਾਈਏ ਫੁੱਲ ਫਲ ਜੋ ਕੁਝ ਬਣਾਇਆ ਸਾਡੇ ਉਦੋਂ ਵੱਡਾ ਪਰਮਾਰਥੀ ਕੌਣ ਸਾਰਿਆਂ ਦੀ ਚਿੰਤਾ ਉਹਨੇ ਆਪਣੇ ਮਨ ਚ ਰੱਖੀ ਹੈ ਸਭ ਤੋਂ ਵੱਡਾ ਪਰਮਾਰਥੀ ਹੈ ਜਿਹਨੂੰ ਉਹ ਆਪਣਾ ਸੁੱਤਨ ਬਾਜੂਗਾ ਪੁੱਤਰ ਨੂੰ ਬਾਜੂਗਾ ਕਿ ਸਵਾਰਥੀ ਨੂੰ ਉਲਵਾਏਗਾ ਸਵਾਰਥੀ ਨੂੰ ਤਾਂ ਖਬੂਤ ਜਿਹੜੇ ਪੁੱਤ ਦਾ ਪਿਓ ਵਰਗਾ ਸੁਭਾਅ ਨਾ ਹੋਵੇ ਉਹ ਕਪੂਤ ਹੁੰਦਾ ਜਿਹੜਾ ਬਾਪ ਨਾਲ ਝਗੜਾ ਕਰੇ ਝਗੜਾ ਕਰਦਾ ਉਹ ਕਹੂ ਐ ਕਰਨਾ ਉਹ ਕਹੂ ਐ ਨਹੀਂ ਕਰਨਾ ਝਗੜਾ ਤਾਹੀਓ ਹੁੰਦਾ ਜੇ ਵਿਚਾਰਤਾ ਨਹੀਂ ਮਿਲੂਗੀ ਗੁਰਮਤ ਸਵਾਰਥੀ ਨਹੀਂ ਬਣਾਉਦੀ ਪਰਮਾਰਥੀ ਬਣਾਉਦੀ ਹਮ ਪਰਮਾਰਥ ਦਾ ਸਿਆਸਤ ਲੋਇ ਸਵਾਰਥ ਦਾ ਸਿਆਸਤ ਪਾਠੇ ਜ਼ੋਰ ਜ਼ਰਾ ਪੜਾਉਦੀ ਪਰਸਨਲ ਹਿੱਤ ਆਪੜੇ ਵਾਸਤੇ ਕਦੇ ਵੀ ਸਿੱਖੀ আর ਸਿਆਸਤ ਇਕੱਠੀਆਂ ਨਹੀਂ ਕਰ ਸਕਦੀਆਂ ਲੋਕਾਂ ਨੂੰ ਬੇਫੂਜੇ ਮਰਜ਼ੀ ਬਣਾਈ ਜਾਂਦੇ ਜਿਹੜੇ ਆਦਮੀ ਸਿੱਖੀ ਨੂੰ ਸਮਝਦੇ ਨੇ ਹਾਂ ਸਿੱਖੀ ਨੂੰ ਜਿਹੜੇ ਨਹੀਂ ਸਮਝਦੇ ਉਹ ਜੋ ਮਰਜ਼ੀ ਕਰੀ ਜਾਂਦੇ ਉਹਨਾਂ ਨੂੰ ਜੇ ਮਰਜੀ ਬੇਕੂ ਬਣਾਇਆ ਜਾ ਸਕਦਾ ਜਿਨ੍ਹਾਂ ਨੂੰ ਗੁਰਮਤਿ ਸੁੱਝੀ ਸਮਝ ਨੇ ਜਦ ਬੇਸਲਾ ਵਾਲਿਆਂ ਨੇ ਕਿਹਾ ਉਹ ਬੇਸਲਾ ਦੇ ਕਬਜ਼ਾ ਕਰ ਲਈਏ ਉਹ ਕਹਿੰਦੇ ਗੁਰੂ ਦਾ ਹੁਕਮ ਨਹੀਂ ਬਾਣਾ ਲਾ ਦਿਓ ਪਹਿਲਾਂ ਜਿਹੜਾ ਮਿਸਲਦਾਰ ਬਣਦਾ ਸੀ ਨਿਹੰਗ ਸਿੰਘ ਹੁੰਦੇ ਸੀ ਜਿਹੜੇਦਾਰ ਵੈਸੇ ਸਾਰੇ ਉਹਨਾਂ ਕਹਾਂ ਬਾਣਾ ਲਾ ਦਿਓ ਗੁਰੂ ਦਾ ਕਰ ਲੋ ਕਬਜ਼ਾ ਸਿੱਖੀ ਲਾਦੇ ਹੋ ਸਿੱਖੀ ਛੱਡਦੇ ਹੋ ਬਾਹਲਾ ਲੋੜ ਦਾ ਮਤਲਬ ਸੀ ਗੁਰੂ ਦੇ ਸਿੱਖੀ ਛੱਡਦੇ ਸਿੱਖੀ ਦੇ ਉਹਦੇ ਅੰਦਰੋਂ ਛੱਡਤੀ ਜਦੋਂ ਸਵਾਰਥ ਪੈਦਾ ਹੋ ਗਿਆ ਰਾਜ ਦੀ ਭੁੱਖ ਪੈਦਾ ਹੋ ਗਈ ਕਹਿੰਦੇ ਅੰਦਰੋਂ ਤਾਂ ਪਹਿਲਾਂ ਹੀ ਛੱਡਤੀ ਤੁਸੀਂ ਭੁੱਖ ਪੈਦਾ ਹੋ ਗਈ ਬਾਹਰ ਵੀ ਛੱਡਦੇ ਹੋ ਲੋਕਾਂ ਨੂੰ ਪਤਾ ਲੱਗ ਜयोਈ ਤੁਸੀਂ ਛੱਡਦੇ ਲੋਕਾਂ ਤੋਂ ਖਾਲੇ ਨੇ ਉਹ ਕੀ ਪਤਾ ਲੱਗੂ ਕਿਨੇ ਛੱਡੀ ਐ ਅਕਾਲੀ ਭੁਲਾ ਜਦ ਤੀ ਕਮਾੜ ਜਿਹੜਾ ਖਾਲਸਾ ਸੀ ਨਾ ਤਨਖਾਹ ਲੈਂਦਾ ਉਹਦੀ ਹਾਜ਼ਰੀ ਲੱਗਦੀ ਸੀ ਨਾ ਕਿਸੇ ਨੇ ਅੜੀ ਜੀਸੂ ਦਾ ਕਿਸੇ ਮਸੁਲਦਾਰ ਦੇ ਹੁਕਮ ਮੰਨਿਆ ਰਾਜਾ ਮੰਨਦੇ ਹੀ ਨਹੀਂ ਸੀ ਕੋਈ ਹਰਸਮਾਨ ਨਹੀਂ ਔਰ ਉਹ ਰਣੂ ਬਰੋ ਦੇ ਬੀ ਸੀ ਰਾਜਾ ਬੀ ਸੀ ਰਾਜੇ ਬਲੋ ਦੇ ਬੀ ਸੀ ਇਹ ਕਾਂਝਿਰਨ ਜੀ ਜਿਸ ਨੇ ਆਪਣੇ ਆਪ ਨੂੰ ਰਾਜਾ ਨਹੀਂ ਕਹਾਇਆ ਛੇਤਰ ਦੀ ਬਹੁਤ ਲੰਬਾ ਖਾਲਸੇ ਦਾ ਤਕੜਾ ਐਵੇਂ ਕਿਹਾ ਜਾਣ ਬੁੱਝ ਕੇ ਡਰਦਾ ਸੀ ਉਹ ਸਾਰੀ ਗੱਲ ਦਾ ਨੇੜੇ ਸੀ ਉਦੋਂ ਪਰ ਤਾਂ ਸਿੱਖ ਨੂੰ ਸਿੱਖੀ ਵਾਰੀ ਬਤਾਲੀਏ ਉਧ ਹਾਜ਼ਰ ਬਹੁਤ ਕੁਝ ਲੱਗਦਾ ਨਾ ਉਹਨਾਂ ਨੇ ਇਹ ਸਭ ਕੁਝ ਕਰਵਾਇਆ ਤਾਂ ਤੇ ਜੋ ਉਹ ਤਾਂ ਲਿਖ ਰਿਹਾ ਉਹਦੇ ਵਿੱਚ ਦਸਨ ਪਾਸ਼ਾ ਕਹਿ ਰਿਹਾ ਮੈਂ ਪਾਸ਼ਾ ਹੀ ਨਿਕਾਰਤੀ ਪਿੰਡ ਨਹੀਂ ਦਿੱਤੇ ਉਹਨਾਂ ਨੇ ਨਹੀਂ ਰਾਜ ਛੱਡਿਆ ਛੱਡਿਆ ਵੀ ਜਿਹੜੇ ਗੁਰੂ ਘਰ ਦੀ ਜਿੱਥੇ ਮੈਂ ਬੈਠਾ ਵੀ ਪਾਸ਼ਾ ਹੀ ਉੱਥੇ ਆ ਕੇ ਚਰਨੀ ਪੈਂਦੀ ਨੇ ਮੈਂ ਬਸ ਗਈ ਕਰਨੀ ਆ ਲਿਖ ਰਿਹਾ ਸੋ ਉਹ ਨਹੀਂ ਹੋਰ ਵੀ ਕੁਝ ਲਿਖ ਰਿਹਾ ਹੈ ਨਾ ਤੁਮਹੇ ਉਹ ਜਦੋਂ मरी ਕਪਤਾਨ ਕਹਿੰਦਾ ਤੁਹਾਨੂੰ ਕਿਥੋਂ ਮਿਲੇ ਆ ਪਾਸ਼ਾ ਹੀ ਬਿੜੀਏ ਤਾਂ ਸਾਤਖੜ ਵੀ ਲੈ ਜਾਂਦਾ ਪਹਿਲੀ ਅਡੀਸ਼ਨ ਵਿੱਚ ਹੁਣ ਅੱਕਤੀਆਂ ਅਡੀਸ਼ਨ ਉਹ ਮਰੀ ਕਿ ਨੂੰ ਕਹਤਾਂ ਉਹ ਆ ਕਪਤਾਨ ਸੀਗਾ ਅੰਗਰੇਜ਼ਾਂ ਦਾ ਜਿਹਨੇ ਸਾਈਨ ਕੀਤੇ ਸੀ ਰਜੀਤ ਸਿੰਘ ਉਹਨੇ ਪੁੱਛਿਆ ਸੀ ਰਤਨ ਸਿੰਘ ਬਾਬੂ ਨੂੰ ਵੀ ਸਖਾ ਨੂੰ ਕਿੱਥੋਂ ਮਿਲੀ ਐ ਪਾਤਸ਼ਾਹੀ ਬੜੀ ਦੁਕਾਨ ਕੋਲ ਲਿਆਇਆ ਸੀ ਪਾਤਸ਼ਾਹੀ ਕਿੱਥੋਂ ਮਿਲੀ ਐ ਬੈਠੇ ਸੀ ਦਿੱਲੀ ਦੇ ਪੱਲੇ ਪਾਸੇ ਕਿਤੇ ਬਹੁਤ ਦੇਰ ਦੀ ਗੱਲ ਸੀ ਪੁਰਾਣੀ ਝਾਂਸੀ ਵਾਲੀ ਰਾਣੀ ਦੀ ਕੱਲ ਲਾਈ ਹੋਈ ਐ ਸਾਰਾ ਦੱਸੋ ਠਾਰਨ ਸੋ ਸੋਨਜਾ ਜੋਗੇ ਉਹ ਯਲ ਹੋਈ ਹੈ ਹੂੰ ਹੂੰ ਤੋਂ ਪਹਿਲਾਂ ਉਹ ਤੇ ਚੰਸੀ ਆ ਗਏ ਸੀ ਇਹਦੇ 1857 ਤੱਕ ਆਜ਼ਾਦ ਦੇ ਬਾਰੇ ਇਹ ਰਾਜ ਦੀ ਗੱਲ ਕਰਦਾ ਰਾਜਦੂਨ ਨੇ 1854 ਨੂੰ ਲਕਾੜਤੀ ਬਾਸ਼ਾ ਜਿਹੜੀ ਹੈ ਕਿ ਜਦੋਂ ਨੌਵੇਂ ਬਾਸ਼ਾ ਦੀ ਸ਼ੀਧੀ ਹੋਈ ਹੈ ਉਹਨਾਂ ਕਦੇ ਇਹਦਾ ਮੋਲਾ ਦਾ ਰਾਜ ਦਾ ਪੱਟੇ ਹੀ ਜਾਣਾ ਆਪਾਂ ਦਾ ਵਿਰੋਧੀ ਗੱਲਾਂ ਆਪਾਂ ਵਿਰੋਧੀ ਗੱਲਾਂ ਲਿਖੀਆਂ ਕਰਤੀ ਵਸ ਗੱਲ ਪੜੇ ਉਹ ਉੱਪਰ ਗੜੀਰ ਆਹੀ ਜਿਹੜੀ ਗਰੀਈ ਆਲੀ ਆ ਦੂਜੀ ਹੋਈ ਹੈ ਇਹ ਬਾਸ਼ੇ ਉਹ ਤਾਂ ਲਕਾਰਤੀ ਦਸਮ ਬਾਦਸ਼ਾਹ ਨੇ ਜਨਕਾਰਤੀ ਗੱਲ ਕਈ ਵਾਰੀ ਆ ਉਹ ਅਸਲ ਜੇ ਹੀ ਦੂਜੀ ਪਾਸ਼ਾਹੀ ਤਾਂ ਉਹਨਾਂ ਦਲੀਲਾਂ ਦਿੱਤੀਆਂ ਨੇ ਵਿੱਚ ਦੋਰੇ ਲਈ ਮੈਨੂੰ ਪਤਾ ਹੈ ਉਹ ਉੱਥੇ ਉਹ ਵੀ ਗੱਲ ਕਹਿ ਦਿੰਦਾ ਕਿ ਕਿਉਂ ਹੁੰਦੀ ਹੈ ਗੱਲ ਗੁਰਮੱਦੀ ਚੱਲਦੀ ਹੈ ਜਾਂ ਮਰੀ ਕਪਤਾਨ ਪੁੱਛਦਾ ਮਰੀ ਕਪਤਾਨ ਆ ਪਾਸ਼ਾਹੀ ਥੋੜੀ ਪੁੱਛਦਾ ਸੰਸਾਰੀ ਸੱਚਖੰਡ ਦੀ ਗੱਲ ਕਿਵੇਂ ਕਰਦਗੇ ਉਧਿਆਣਾ ਆਪਣੇ ਇਧਰ ਹੈ ਉਪਰਲੇ ਪਾਸੇ ਨੇ ਸਤਲੁਜ ਰਾਜ ਸਤਲੁਜ ਤੋਂ ਅੰਦਰ ਆਦਾ ਕੋਰਸ ਉੱਥੇ ਇਹਨੇ ਲਿਖਿਆ ਸਭ ਕੁਝ ਜਾਦਿਲੂ ਦੇ ਰਿਹਾ ਬਰੀ ਗੁਤਾਂ ਤਾਂ ਉਹ ਅਡੀਸ਼ਨ ਹੋਣ ਵਾਲੀ ਬੜੀ ਹੋਣੀ ਹੈ ਉਹ ਕੋ ਲਿਖਣਾ ਕਿਉਂ ਮੈਨੂੰ ਲਿਖਣਾ ਪਿਆ ਇਹ ਗਰਾਉਂਡ ਦੱਸਿਓ ਪਹਿਲਾਂ ਉਹਦੇ ਇਹ ਪੰਤ ਪ੍ਰਕਾਸ਼ ਵਿੱਚ ਕਿਉਂ ਲਿਖਿਆ ਉਹਦੇ ਗਰਾਉਂਡ ਹੈ ਉਹਨੇ ਪੁੱਛਿਆ ਇਹ ਉਹਨੇ ਦੱਸੋ ਕਿਸੇ ਨੂੰ ਪਤਾ ਲੱਗਿਆ ਵੀ ਇਹ ਸਿੱਖਾਂ ਨੂੰ ਰਾਜ ਕਿਵੇਂ ਮਿਲਿਆ ਖੂਬ ਕਾ ਖੂਬ ਕਾ ਉਹਨੇ ਜਦੋਂ ਦੱਸਿਆ ਸੀ ਉਹ ਲੋ ਹੈ ਨਹੀਂ ਉਹਦੇ ਅਡੀਸ਼ਨ ਵਿੱਚ ਸੀ ਉਦੋਂ ਉਹ ਸੰਸ਼ੋਧਨ ਕਰੀ ਜਾਂਦੇ ਕੱਟੀ ਜਾਂਦੇ ਹਾਂਜੀ ਚਲੋ ਇਨਮਾਇਆ ਤ੍ਰੈ ਗੁਣ ਬਸ ਕਿਨੇ ਆਪਨ ਮੋਹ ਕੱਟੇ ਕੱਟ ਇਸ ਬਾਇਆ ਦਾ ਉਹ ਸਾਰਿਆਂ ਦੇ ਹੱਦ ਦੇ ਵਿੱਚ ਦੇਪਾ ਤਨਾਗੋ ਨੇ ਬਾਇਆ ਨੇ ਆਪਣਾ ਬਾਇਆ ਹਿਤਨਾ ਗੋ ਸंसार ਦੇ ਵਿੱਚ ਬਾਇਆ ਸंसार ਜਿੱਤੇ ਨੂੰ ਲੋਕ ਨੇ ਤੈਨੂੰ ਗੋੜਨੇ ਤੇਨ ਗੋੜ ਵੀ ਇਤੀ ਨੇ ਤੇ ਲੋਕ ਵੀ ਇਤੀ ਰਬਾ ਬਿਜੂ ਸ਼ਬਜੀ ਵੀ ਤੇ ਨੇ ਠੀਕ ਨੇ ਮਾਇਆ ਦਾ ਫੋੜ ਤਾਂ ਸਾਰੇ ਜੀਵ ਕਿਸੇ ਵੀ ਜੁਲੀ ਵਿੱਚ ਹੈ ਚਾਹੇ ਵਰਨ ਨਿਜਲ ਆਪਣੀ ਇੱਛਾ ਨਹੀਂ ਬਨਦੇ ਚੋੜ ਕੋਈ ਇਹ ਹੁਕਮ ਨਾ ਕਰਦੇ ਆਪਣ ਮੋਕੜੇ ਕੱਟ ਦਿੰਨੇ ਆਪਣਾ ਬੋਆ ਆਇਆ ਨੇ ਸਾਰਿਆਂ ਦੇ ਹੱਥ ਦੱਸਦਾ ਇਹ ਸਾਜਨ ਕਸ ਕਹੋ ਉਪਾਇਆ ਇਹ ਸਾਜਨ ਇਹ ਸੱਜੜੂ ਕਸ ਉਹ ਤਾਂ ਅੱਤਿਆ ਕਿਵੇਂ ਹੋਵੇ ਹਾਂ ਜਾਤੇ ਤਰੋ ਵਿਖਮ ਇਹ ਮਾਇਆ ਜਾਤੇ ਤਰੋ ਵਿਖਮ ਜਿਸ ਤੋਂ ਇਹ ਵਿਖਮ ਮਾਇਆ ਨੂੰ ਤਰੋ ਉਹਨੇ ਸਵਾਲ ਇੱਟ ਤੱਕ ਸਵਾਲ ਹੈ ਇਹ ਮਾਇਆ ਵਿਰਸਾ ਅੰਦਰ ਤਰਵੇ ਉਹ ਜਿਹੜੇ ਡੂੰਘੇ ਸਮਝਦਿਨੁ ਯਾਨੀ ਇਹਦਾ ਵਿਸ਼ਾ ਟੁਣਾ ਸੀ ਇਹ ਸਵਾਲ ਹੈ ਇਹ ਟਾਰਗੇਟ ਹੈ ਸਾਡਾ ਇਹ ਮਾਇਆ ਜਿਹੜੇ ਨੇ ਉਹ ਆਪਣਾ ਦਿੱਤਾ ਹੋਇਆ ਸਾਰੇ ਹਿੰਦਿਆਂ ਚ ਇਹ ਤੋਂ ਛਡਕਾਰਾ ਕਿਵੇਂ ਮਿਲੇ ਜਾਤੇ ਤੋ ਕਰੀ ਕਿਰਪਾ ਸਤ ਸੰਗ ਮਿਲਾਏ ਜਵਾਬ ਆ ਗਿਆ ਜੇ ਸੱਚ ਨਾਲ ਮਿਲ ਜਵੇ ਜੇ ਮਨੁ ਤਾਂ ਮੰਤਰ ਕੁੜੀ ਜੈ ਸ਼ਰੀਰ ਹੈ ਫੇਟਾ ਤਾਂ ਦੱਸਦਾ ਨਹੀਂ ਫੇਟਾ ਗਾਲੀ ਪੱਥਰ ਹੈ ਜੇ ਫੇਰੀ ਪਰ ਮਨ ਦੇ ਅੰਦਰ ਕੁਝ ਹੋਰ ਵੀ ਹੈ ਮਨ ਤੇ ਬਾਹਰ ਝੂਠ ਹੈ ਮਨ ਦੇ ਅੰਦਰ ਸੱਚ ਹੈ ਮਨ ਵਿੱਚ ਆਪ ਹੈ ਲੋ ਆਪ kaun ਸੱਚ ਸੱਚ ਸਤਿਪੁਰਖ ਆਪ ਸਤਿਪੁਰਖ ਸੁਵੇਸ਼ਰਨ ਸਤਿਪੁਰਧ ਵਾਲਾ ਸੁਵੇਸ਼ਰਨ ਸੁਵੇਸ਼ਰਨ ਵਾਲਾ ਸਤਿਪੁਰਧ ਵਾਲਾ ਸੁਵੇਸ਼ਰਨ ਵਾਲਾ ਨਾ ਵੇਲੋ ਜਾਏ ਉਹ ਨਾਸ਼ੀਪੁਰਖਾ ਸਭ ਰਿਆਸ ਇਦੇ ਅੰਦਰ ਸਤਿਪੁਰਖ ਬੈਠਾ ਹੈ ਜੇ ਸਤਿਪੁਰਖ ਨਾਲ ਜੁੜ ਜਵੇ ਤਾਂ ਸਤ ਸੰਗਤ ਹੋ ਜਾਂਦੀ ਹੈ ਸਤਪੁਰਖ ਨਾਲ ਨਹੀਂ ਤਾਂ ਸਤ ਸੰਬੰਧ ਨਹੀਂ ਜਿਵਣੇ ਸਤਪੁਰਖ ਨਾਲ ਜੁੜ ਜਵੇ ਜੇ ਤਾਂ ਸੱਚ ਸਤ ਸੰਬੰਧਤ ਹੋ ਜਾਂਦੀ ਹੈ ਜੇ ਸਤ ਸੰਬੰਧਤ ਨਾਲ ਮਿਲ ਗਿਆ ਕੋਈ ਕਿਤੇ ਅੰਦਰ ਹੀ ਆਪਣੇ ਮਿਲ ਗਿਆ ਅੰਤਰ ਆਤਮਾ ਜੇ ਵੇਲੇ ਮਿਲਿਆ ਕਹੀਏ ਸੋ ਬਦੋ ਦਰਵਾਜੇ ਵੇਲੇ ਆਹੇ ਕਿ ਚੱਕ ਗਿਆ ਚੱਕਣਾ ਪੁੱਡੇ ਨੇ ਨਹੀਂ ਲੈਂਟਰ ਨੇ ਲੈਂਟਰ ਨੇ ਤੋਂ ਕੋ ਪੁੱंडा ਉੱਥੇ ਜੁੜਿਆ ਹੋਇਆ ਪੁੱਡਾ ਉੱਥੇ ਜੁੜਿਆ ਹੋਇਆ ਸੱਤ ਉੱਲਡਾ ਉਹਨੇ ਡੇ ਬੇਜੇ ਲੈਟਰ ਛੱਡ ਦਵੇ ਉਹਨੂੰ ਤਾਂ ਕਹ ਰਿਹਾ ਉਹ ਨਾਮਦੇਵ ਹੂੰ ਨਾਮਦੇਵ ਨਹੀਂ ਕਹ ਰਿਹਾ ਆ ਨਾਮਦੇਵ ਦੇਵ ਕਹ ਰਿਹਾ ਨਾਮੇ ਦਾ ਦੇਵ ਹੂੰ ਤੁਮ ਨਹੀਂ ਡਰੋ ਜੇ ਕੁੰਡਾ ਕਹਿੰਦਾ ਲੈਂਟੇ ਛੱਡ ਦਵੇ ਮੈਨੂੰ ਬੇਵਕਲ ਹੋਊਂਗੀ ਤੇ ਚੱਕੜੇ ਮੈਨੂੰ ਆਪਣਾ ਮੜੀ ਚੱਕ ਸਕਦਾ ਆਪਣਾ ਬੋਝ ਵੀ ਨਹੀਂ ਉਹ ਤੇ ਰੱਖ ਸਕਦਾ ਚੱਕ ਤੁਹ ਕਾਹ ਚ? ਜੇ ਤੂੰ ਮੇਰਾ ਬੋਝ ਨਾ ਸਹਮੇ। ਸਮਝਉਂ ਰਹੀ ਐ ਕੀ ਐ ਤੋਲੇ ਤੋੜਨ ਦਾ ਹੁਣ ਨਹੀਂ ਤੋੜੇ। ਮੈਂ ਤਾਂ ਤੇਰੇ ਨੂੰ ਨਹੀਂ ਤੋੜਨਾ ਚਾਹੁੰਦਾ ਉਤੋਂ ਮੈਨੂੰ ਤਾਂ ਪਤਾ ਥਰੇ ਡੇ ਤੂੰ ਮਰੇ ਛੱਡਦੀ। ਜੇ ਤੈਨੂੰ ਗੱਲ ਐ ਜਾ। ਚਲ ਮੈਂ ਅਗਲਾ ਕੱਲ ਜਾਊਂਗਾ। ਮੇਰੇ ਤੋੜਨ ਨਾ ਤੋੜਨ ਕੋਈ ਵੈਲਿਊ ਨਹੀਂ ਰਹਿ ਜਾਂਦੀ। ਜੇ ਤੂੰ ਤੋੜ ਦੇ ਆਪਣੇ ਨਾਲੋਂ ਮੈਨੂੰ ਜੇ ਤੂੰ ਹੱਥ ਛੱਡ ਦੇਵੇਂ ਮੈਂ ਲੱਜ ਫੜੀ ਹੋਈ ਐ ਠੀਕ ਐ ਲੱਜ ਮੈਂ ਕੁੱਟ ਕੇ ਫੜੀ ਐ ਮੈਂ ਨਹੀਂ ਛੱਡਦਾ ਆਪਣੇ ਨਾਲ ਬੰਨੀ ਹੁਈ ਪਾ ਜੇ ਤੂੰ ਲੱਜ ਛੱਡ ਦੇਵੇਂ ਤੂੰ ਨਹੀਂ ਤੋੜੋ ਜੇ ਤੂੰ ਆਪਣੇ ਨਾਲੋਂ ਮੈਨੂੰ ਤੋੜ ਦੇਵੇਂ ਆ ਮੈਂ ਜਾਏ ਥੋੜੀ ਜਾਏ ਨਾ ਥੋੜੀ ਉਹਦੀ ਵੈਲਿਊ ਉਹੀ ਰਹੇਗੀ ਪਤੰਗ ਨੇ ਤਾਂ ਡੋਰ ਛੱਡੀ ਨੀ ਪਰ ਵਿਚਾਲਿਓ ਘਟੀ ਗਈ ਕੋਈ ਨਹੀਂ ਜਿਹਨੇ ਪਤੰਗ ਨਾਲ ਲੈ ਹੀ ਜਾਵੇ ਉਹਨੇ ਤਾਂ ਛੱਡੀ ਨਹੀਂ ਆਪਣੇ ਬਸਲ ਦੂਏ ਪਾਸਾ ਵਾਲਿਆਂ ਨੇ ਛੜਤੀ ਨਾ ਜੇ ਤੂੰ ਛੱਡ ਦੇ ਡੋਰ ਨੂੰ ਫੇਰ ਮੇਰੀ ਫੜੀ ਦਾ ਕੀ ਵੈਲਿਊ ਰਹੇਗੀ ਵੇਰੀ ਫੜੀ ਦੀ ਵੈਲਿਊ ਉਹਨਾਂ ਚ ਰਿਹਾ ਜਦੋਂ ਤੇਰੀ ਫੜੀ ਹੋਈ ਐ। ਸੜੀ ਤਾਂ ਸੱਡੀ ਨਹੀਂ ਹੋਈ ਆਵੇ। ਹੈ? ਉਹ ਛੱਡੀ ਹੋਈ ਆ ਸਾਡੀ ਜਿਹੜਾ ਸਾਡੀ ਸਾਡੀ ਦਾ ਨਾ ਫੜੀ ਦੀ ਗੱਲ ਐ ਅੰਦਰਲਾ ਬੋਲਦਾ ਬਾਹਰਲਾ ਬੋਲਦਾ ਹੀ ਨਹੀਂ। ਮੈਂ ਅੰਦਰ ਲੈਣੇ ਕਹੀਏ। ਅੰਦਰ ਲੈਣੇ ਕਹੀਏ। ਇਹਦਾ ਬੋਲਦਾ ਉੱਥੇ। ਜ਼ਬਾਨੀ ਬੋਲੀ ਥੋੜੀ ਹੈ ਇਹ ਤਾਂ ਅੰਦਰਲੇ ਦੀ ਬੋਲੀ ਹੈ ਇਹ ਲੋਕਾਂ ਨਾਲ ਜੁੜਿਆ ਹੋਇਆ ਹਮੇਸ਼ਾ ਲਈ ਜੁੜਿਆ ਹੋਇਆ ਉਹ ਵੀ ਮੈਂ ਨਹੀਂ ਕਹਿ ਸਕਦਾ ਨਾ ਵੀ ਮੇਰੇ ਆਸਰੇ ਪੱਖਾ ਖੜਾ ਹੈ ਕਹਾਂ ਮੈਂ ਕੀ ਕਰੂੰਗਾ ਜੇ ਤੂੰ ਛੱਡਦਾ ਇਧਰੋਂ ਜਾਂ ਕੋਈ ਛੱਡਦਾ ਹੋਵੇ ਲੈਟਰੋਂ ਤੂੰ ਨਾ ਛੱਡੀ ਸਤਗੁਰੇ ਤੇ ਬੋਲੇ ਹਾਂ ਸਤਗੁਰੇ ਬੋਲਦਾ ਹੈ ਹਮ ਸੰਗ ਜੋੜ ਅਵਰ ਸੰਗ ਤੋੜੀ ਹਾਂ ਅਵਰ ਸੰਗ ਤੋੜੀ ਸਤਗੁਰ ਕਰੀ ਕਿਰਪਾ ਸਤ ਸੰਗੀ ਮਿਲਾਏ ਸਤ ਸੰਗ ਮਿਲਾਏ ਜੇ ਕਿਰਪਾ ਹੋ ਜਾਏ ਇਹਦੇ ਤੇ ਕਿਰਪਾ ਅੰਗਰ ਕਿਰਪਾ ਕਿਰਪਾ ਦੀ ਕਿਰਤੀ ਸਰਕਮਲ ਸਟਾਂਸਿਲ ਜਿਹੜੇ ਬਣਦੇ ਨੇ ਉਧਰੋਂ ਜਿੰਨਾਂ ਸਰਕਮਲ ਸਟਾਂਸਿਲ ਅਲਟਰਨਟਿਵ ਕੇਸਿਸ ਆਹਨ ਤਾਂ ਕੇਸਿਸ ਹਾਂ ਕੇ ਸਾਨੂੰ ਬਦਲ ਜਾਂਦੇ ਪੂਰਬ ਨੂੰ ਜਾਂਦਾ ਪੱਛਮ ਨੂੰ ਤੁਰਦੇ ਪੱਛਮ ਨੂੰ ਜਾਂਦਾ ਪੂਰਬ ਨੂੰ ਤੁਰਦੇ ਹੂੰ ਮਾਰਨੀ ਭੁਗਤੀ ਕਰਨ ਲੱਗਦੇ ਦੁਨੀਆ ਵੀ ਸੱਟ ਸੰਸਾਰੀ ਸੰਸਾਰੀ ਸੱਟ ਐਸੀ ਮਾਰਦਣ ਪੁੱਠੇ ਪਾਸੇ ਤੋਂ ਸੰਸਾਰੀ ਜਾਨਦੇ ਆ ਵੀ ਇਹ ਕਿਰਪਾ ਦੁਖ ਦਾ ਰੂ ਹੈ ਕੋਈ ਹਾਲਾਤ ਐਸੇ ਬਣਾਉਣ ਦੇ ਮੁਜਬੂਰੀ ਹੋ ਭਗਤੀ ਕਰਦੀ ਉਹ ਰਾਹ ਨਹੀਂ ਛੱਡਿਆ ਇਹ ਤਾਂ ਆਪਣੇ ਵੱਸ ਦੀ ਗੱਲ ਕਰਨੇ ਕੋ ਹਾਲਾਤ ਬਣਾ ਕਰਨੇ ਚਾਹਦੇ ਉਹ ਤਾਂ ਉਹਨਾਂ ਪਰਨ ਨਹੀਂ ਕਰਦਾ ਇਹ ਹਾਲਾਤ ਦੀ ਗੱਲ ਨਹੀਂ ਇਹ ਕਿਰਪਾ ਇਹ ਕਿਰਪਾ ਇਹ ਵੀ ਆទਿਕੇ ਸਾਡੇ ਹੱਥੇ ਹੈ ਨਹੀਂ ਅੱਛਾ ਹਮ ਤਾਂ ਅੱਜ ਨੂੰ ਵਿੱਚ ਉਸ ਰਾਹ ਲੈ ਜਾ ਜਿਹੜੇ ਰਾਹ ਜਾਣਾ ਉਹਨੇ ਜਿਹੜੇ ਰਾਹ ਅਚਾਨਕ ਉਸ ਰਾਹ ਕੋਈ ਬੰਦਾ ਮਿਲ ਜਾਣਾ ਕੋਈ ਹੋਰ ਹੋ ਜਾਣਾ ਹੂੰ ਠੀਕ ਠੀਕ ਉਹ ਚੀਜ਼ ਆਪ ਨੂੰ ਚਾਹੀਦੀ ਸੀ ਠੀਕ ਠੀਕ ਅਚਾਨਕ ਜਿੱਤੇ ਤੇ ਬਣੀ ਸੀ ਉਹ ਹਾਲਾਤ ਕੋਣ ਬਣਾਉਂਦਾ ਹਾਲਾਤ ਦਾ ਹੁਕਮ ਉਹ ਸਾਡੇ ਵੱਸ ਐਸੇ ਹਾਲਾਤ ਬਣਾ ਦੇਣੇ ਜਿਹੜੇ ਕੋ ਕੰਮ ਛੇਦੀ ਕਰਨਾ ਹੁੰਦਾ ਉਹਦੇ ਹੱਥੀਂ ਬਹੁਤ ਕੋਸਾ ਜੋ ਕੰਮ ਇਧਰ ਛੇਦੀ ਕਰਨਾ ਹੋਵੇ ਉਹਦੇ ਹੱਥੀਂ ਬਹੁਤ ਕੋਸਾ ਵੀ ਇਧਰ ਨੂੰ ਜਾਂਦੇ ਜਾਂਦਾ ਹਵਾ ਚਲਾ ਕੇ ਮੋੜ ਦੇ ਥੋੜੀ ਮੋੜ ਦੇ ਕੀ ਫਰਕ ਪੈਂਦਾ ਮਟਰੋ ਵੱਡਾ ਹੋ ਜਾਣਾ ਮੋੜ ਆਹੀ ਕਰਪਾ ਉਠੀ ਕਰ ਦਵੇ ਜਾਂ ਸਿੱਧੀ ਕਰ ਦਵੇ ਕਰ ਕਰਪਾ ਸਾਥ ਸੰਗ ਲ ਮਾਏ ਤਦ ਸਾਥ ਸੰਗ ਲ ਮਾਏ ਨਾਨਕ ਤਾਂ ਕੈ ਨਿਕਟ ਨਾ ਮਾਏ ਉਹਦੇ ਮਾਇਆ ਨੇੜੇ ਵੀ ਨਹੀਂ ਜੀਦਾ ਰਿਵਾਜ ਸਿਰ ਦੇ ਚੋਜਵੇ ਮਾਇਆ ਨੇੜੇ ਵੀ ਨਹੀਂ ਹੁੰਦੀ ਜੀਦਾ ਜਿਹੜਾ ਬਣ ਫਲ ਪੱਕਾ ਹੈ ਭੋਏ ਗਰੇ ਭੋਏ ਕੀ ਹੈ ਉਨਾਂ ਜਿਹੜੇ ਦਰਖਤ ਨਾਲ ਜੁੜਿਆ ਹੋਇਆ ਹੈ ਜਿੰਨਾ ਚਿਰ ਦਰਖਤ ਨਾਲ ਜੁੜਿਆ ਹੈ ਨਾ ਉਹਨਾਂ ਜਿਹੜੇ ਭੋਜ ਨਾਲ ਨਹੀਂ ਜੁੜਿਆ ਹੋਇਆ ਹੈ ਹਾਂ ਕਿਉਂ ਜੁੜਿਆ ਹੈ ਦਰਖਤ ਨਾਲ ਕਿਉਂਕਿ ਹੈ ਰਸ ਲੈਣਾ ਜੇ ਪੂਰਾ ਰਸ ਬਾਹਰ ਲੈ ਲਵੇ ਬਾਹਰ ਦੀ ਭੁੱਖ ਨਾ ਰਹੇ ਪੱਕ ਜਿਵੇਂ ਛੱਡ ਜਾਂਦਾ ਬਾਹਰ ਹੋਵੇ ਉਹ ਪੋਏ ਵਰਦਾਈ ਵਰਗੇ ਫੇ ਸ਼ਰੀਰ ਨਗਰ ਜੁੜੂ ਇਹ ਸ਼ਰੀਰ ਨਗਰ ਜੁੜੂ ਬਸ ਜਿੰਨਾ ਜਨਮ ਆ ਦੀ ਭੁੱਖ ਦੇ ਅੰਦਰ ਹੈ ਔਰ ਮਾਇਆ ਦੀ ਪੱਕਦਾ ਇਹਨੂੰ ਵੱਡਾ ਹੁੰਦਾ ਪੱਕ ਨਹੀਂ ਸਕਦਾ ਤਾਂ ਵੀ ਨਾ ਪੂਰਾ ਹੁੰਦਾ ਭਾਂਵੇਂ ਕਹੀ ਹੋਈ ਗੱਲ ਪਰ ਇਹ ਐਸਾ ਫਾਲ ਹੈ ਕਦੇ ਮਾਇਆ ਦੀ ਭੁੱਖੇ ਭੁਖਰੇ ਉਤਰੀ ਗਿਆ ਅੰਦਰ ਦੇ ਗਾਦੇ ਬੜ ਬੁੱਖਣ ਨੂੰ ਬੁਖਤਰ ਜੂ ਇਹ ਮਿਸਾਲ ਜਿਹੜੀ ਅਧੂਰੀ ਹੈ ਆ ਮਾਇਆ ਜਿਹਨੂੰ ਤੁਸੀਂ ਨਹੀਂ ਛੇ ਤਾਂ ਹੀ ਉਤਰਾ ਲਈ ਨਾ ਬਣਾ ਲੈ ਹਾ ਦਾ ਨਾਮ ਹੋਟ ਲੱਭਣਾ ਨਹੀਂ ਨਹੀਂ ਨਹੀਂ ਬਾਹਰ ਦੀ ਉਤਰਨ ਵਾਲੀ ਚੀਜ਼ ਹੈ ਨਹੀਂ ਮੈਂ ਭੁਖਿਆ ਮੁਖਰੇ ਉਤਰ ਹੈ ਦੇਖੋ ਫਾੜ ਮਾਇਆ ਦਾ ਸਰੀਰ ਮਾਇਆ ਦਾ ਆਪਣਾ ਇਹਦੀ ਭੁੱਖ ਉਤਰ ਜੂਗੀ ਦੋ ਗਲਾਸ ਪੀਲੇਗਾ ਪਾੜਦੇ ਚਾਰ ਪੀਲੇਗਾ ਸਾਰਾ ਦਰਿਆ ਦਾ ਪੀਣ ਨਹੀਂ ਲੱਗਿਆ ਸੂਦਰ ਦਾ ਪੀਣ ਨਹੀਂ ਲੱਗਿਆ ਰੋਟੀ ਕਿੰਨੀ ਖਾ ਲੂ ਇੱਕ ਵਾਰੀ ਵੱਧ ਖਾ ਦੋ ਵਾਰੀ ਖਾ ਲੂ ਚਾਰ ਵਾਰੀ ਖਾ ਲੂ ਅਗਰ ਭੁੱਖ ਤਰੀ ਨਾ ਪਰ ਮੰਦੀ ਭੁੱਖ ਨਹੀਂ ਉਤਰਦੀ ਕਿਉਂ ਨਾਮਨ ਮਾਇਆ ਦਾ ਬਣਿਆ ਹੋਇਆ ਨਾਮਨ ਦੀ ਖੁਰਾਕ ਬਣਿਆ ਖੁਰਾਕ ਨਹੀਂ ਲੋਦੀ ਮੰਦੀ ਮਾਇਆ ਤੋਂ ਬੁਖ ਨਹੀਂ ਉਤਰਦੀ શરીਰ ਦੀ ਉਤਰਦੀ ਉਹ ਜਿਹੜਾ ਫਾਲਾ ਬਖ ਰਿਹਾ ਮਾਇਆ ਲਈ ਬੜਿਆ ਉਹਦੀ ਤਾਂ ਬੁਖ ਉਤਰ ਜੂ ਪੱਕ ਜੂਗਾ ਹਾਂ ਪਕੜਾਂਗਾ ਦੇ ਵੀ ਗੱਲ ਅੰਦਰ ਲਈ ਕਹੀ ਹੈ ਐਗਜ਼ੈਂਪਲ ਗੱਲ ਅੰਦਰ ਲਈ ਹੈ ਜਿਉਂ ਇਹ ਕਿਵੇਂ ਪੱਕੂਗਾ ਇਹ ਕਹਿੰਦੇ ਤੂੰ ਖੇਲੇ ਬਾਕੇ ਸੇਤੀ ਕਾਚੇ ਸੇਤੀ ਖੇਲੇ ਨਾ ਉਹ ਆਪਣੇ ਕਾਚਾ ਕਾਚੇ ਸੇਤੀ ਖੇਲਦਾ ਤੂੰ ਬਾਕੇ ਤਾ ਕੈਸੇ ਤੀਕੇ ਲੰਦਰ ਪੱਕਾ ਉਹਦੇ ਨਾਲ ਕੇ ਜੁੜੇ ਉਹਦੇ ਨੂੰ ਉਹ ਮਾਇਆ ਦੀ ਬੁਖ ਤੇਰੀ ਉਹ ਅਦਾਰੂਗਾ ਉਹ ਹੈ ਨਹੀਂ ਕਿਵੇਂ ਉੱਤਰ ਉਹ ਦਸੂਗਾ ਉਹ ਮਾਇਆ ਦੀ ਬੁਖ ਹੈ ਨਹੀਂ ਤੇਰੀ ਰਹਿਣ ਦੇਣੇ ਲਈ ਕੱਕੇ ਸਿੱਖੇ ਦੇ ਤਾਂ ਕੱਚੀ ਸਰੋਂ ਪਹਿਲ ਕੇ ਨਾ ਖਲਪੇ ਰਹਤੇ ਨਾ ਖਲਪੇ ਰਹਤੇ ਕੱਚੀ ਸਰੋਂ ਜੇ ਪੀੜੇਂਦਾ ਕੱਚੀ ਸਰੋਂ ਕੀ ਹੁੰਦੀ ਹੈ ਕੱਚੀ ਸਰੋਂ ਦਾ ਹਾਸ ਨਾ ਇਹ ਚ ਘੜ ਲਾ ਤੇਲ ਕੋਈ ਨਿਕਲਦਾ ਅੜੀ ਸਾਕੀ ਰੇਰਾ ਕਾਚੀ ਸਰੋਂ ਹੋਵੇ ਇਹ ਬੋਲੂ ਜਿਆ ਮੋ ਜਾਂਦੀ ਹੈ ਇਹ ਨਾਲ ਹੜ ਬਣਦੀ ਇਹਨੂੰ ਜੇ ਕਿਸੇ ਨੇ ਆ ਦਿਖਾ ਦੋਗੇ ਤੇ ਬੋਲੀ ਹੋ ਬਈ ਹੜਾ ਤੇ ਅੰਦਰ ਪੀਪੇ ਬਣੇ ਜਿਹੜੇ ਹੀ ਨਹੀਂ ਕਾਚੀ ਸਰ੍ਹੋਂ ਪੇਲ शरीर ना जो बयाल जत बंद है संसार दा, दा इतिहास माया दा इतिहास है शरीर च भावे फसा भी होया दिमाग नाल है पर काचे से ती खेलदा है शरीर काचा है काची गागर सर पर फूट है ए शरीर ना जुड़ के जत खेलदा काचे से खेल काची गागर शरीर ਦਾ ਦਾਸ ਕਾਚਾ ਦਾਸ ਕਾਚੇ ਕੱਚੀ ਖੇਲੇ ਸਾਰੇ 타ਗੁਰੂ ਸਾਹਿਬ ਰੇ ਹਟਾਇਆ ਗੁਰ ਕਹਿਆ ਸਾਕਾਰ ਖਮਾ ਲਓ ਗੁਰ ਕੀ ਕਰਨੀ ਕਰਨੀ ਕਾਚੀ ਹੈ ਗੁਰ ਸੰਸਾਰੀ ਲਾਈਫ ਸਾਰੇ ਕਾਚੀ ਕਰਨੀ ਹੈ ਤਾਂ ਕਰਨੀ ਹੋਣਾ ਕੀ ਉਹਨਾਂ ਨੇ ਦੋ ਸਾਹਿਬ ਸ਼ਹੀਦ ਕਰਾ ਲੇ ਕੋਈ ਮੈਂ ਵੀ ਦੋੇ ਕਰਾਉਣੇ ਵਿਚਾਰ ਕਰਾਉਣੇ ਕਿ ਉਹ ਤਰ੍ਹਾਂ ਕਰਾਂਗੇ ਅਸੀਂ ਇਹੇ ਜਿਹੜਾ ਹਾਲਾਤ ਪੈ ਲਿਆ ਕਰਾਂਗੇ ਉਹ ਉਹ ਤਾਂ ਹੁਕਮਾਂ ਜੋ ਹੋ ਰਿਹਾ ਹੋ ਰਿਹਾ ਉਹਨਾਂ ਨੇ ਆਪ ਕੀ ਤੇ ਉਹ ਵੀ ਹੁਕਮ ਚੱਲੇ ਨੇ ਤੁਸੀਂ ਹੁਕਮ ਚੱਲੋ ਦੀ ਗੱਲ ਸੀ ਜੋ ਹੋਇਆ ਹੈ ਤੁਸੀਂ ਉਹ ਤੇ ਕੀ ਲੈਣ ਥੋੜੇ ਦੇ ਖਬਰਾਂ ਕਹੇ ਜਾਂ ਦੀ ਹਿਸਟਰੀ ਦੇਖਣ ਦੀ ਲੋੜ ਨਹੀਂ ਹਿਸਟਰੀ ਤਾਂ ਪਾਣ ਤੋੜੇ ਹਾਲਾਤ ਕਹੇ ਜਾਣਦੇ ਤੁਸੀਂ ਕਿਹੜੇ ਰਾਹ ਜਾਂਦੇ ਕੀ ਹੋੜ ਉੱਥੇ ਕੀ ਹੋਇਆ ਅਡੜ ਗੁਰੂਆਂ ਦਾ ਅਡੜ ਕੀ ਹੁੰਦਾ ਰਿਹਾ ਨੇ ਕਹੀ ਦੀ ਅਗਲ ਕੀਤੀ लोभी तक जंग दो भी जंग नहीं करदी लोभी राक ने फिर जंग नहीं करदी ते तन्न जरूर जंग नहीं करदी लोभे पाषाण जो शहीद कीता त दोबारा फिर तलवार लोड़ आई पाजे में पई सी भाई सी लोभे पाषाण ਤੁਲਿਆਕਾ ਹੋ ਗਿਆ ਸੀ ਨਾ ਵੀ ਅਸੀਂ ਥੋੜੇ ਦੇ ਨੀ ਕਰਦੇ ਕਰਿਓ ਛੇਵੇਂ ਨਹੀਂ ਕੀਤੀ ਕਿਸੇ ਨੇ ਨਹੀਂ ਕੀਤੀ ਇੱਕ ਦੋ ਲੋੜ ਵੀ ਪੈ ਗਈ ਸੀ ਉਹ ਵੀ ਬੰਦੇ ਛੱਡੇ ਹੋਏ ਸੀ ਸਾਡੇ ਕਾਢੇ ਹੋਏ ਸੀ ਉਹ ਪਿੱਛੇ ਰਹਦੇ ਹੁੰਦੇ ਸੀ ਕਿਲੋਮੀਟਰ ਉਹਨਾਂ ਨਾ ਪਤਾ ਸੀ ਉਹ ਸੀਗਾ ਬਾਹਰ ਗੁਰੂ ਘਰ ਨੂੰ ਲੱਗ ਰਿਹਾ ਸੀ ਪੁਰਾਣੇ ਹੌਲ ਕੱਢ ਲਈ ਦਿਨ ਰਾਤ ਲੜਦੀ ਸੀ ਤੇ ਜੁਬਾਰੀ ਗੁਰੂ ਘਰ ਚਲੀ ਆ ਗੁਰੂ ਦਾ ਕੇ ਆਇਆ ਸੀ ਲੋਕਾਂ ਨੇ ਭਾਈ ਕੀਤਾ ਉਹ ਕਿਮਟ ਟੁੱਟ ਗਈ ਨਾ ਟੁੱਟ ਗਈ ਟੁੱਟ ਗਈ ਤੇ ਚਲਵਾ ਚੱਕੀ ਹੈ ਕਰੀ ਕਿ ਉਹ ਲਿਖ ਰਿਹਾ ਜਿਹੜੀ ਇੱਥੋਂ ਜਦੋਂ ਹਾਂ ਗੱਲ ਕਰਨ ਲਈ ਮੌਕੇ ਤੇ ਜਿਹੜੀ ਇਹ ਜਿਵੇਂ ਜਾਈ ਹੈ ਵੀ ਪਹਿਲਾਂ ਜਾਨੀ ਕਿ ਵੀ ਹਿੰਦੂਆਂ ਦੀ ਗੱਲ ਸੀ ਇਹ ਵੀ ਜਿਹੜੇ ਹਿੰਦੂਆਂ ਨੂੰ ਪਾਉਣ ਦੀ ਨੇ ਕਹਿੰਦੇ ਹਾਂ ਫਿਰ ਗੁਰੂ ਘਰ ਪਾਦੀ ਬਾਹਮਣ ਨੇ ਗੱਲ ਪਾਦੀ ਗੁਰੂ ਘਰ ਦੇ ਚਿੱਤਰਵਤੇ ਨਹੀਂ ਚਿੱਤਰ ਨਹੀਂ ਸੀਗਾ ਕਿਨੇ ਕਿਸੇ ਚਿੱਤਰਵਤੇ ਜਿਵੇਂ ਲਿਖ ਰਹੇ ਪੰਜ ਪ੍ਰਕਾਸ਼ ਹਾਂ ਪੰਜ ਇਹ ਗੱਲ ਜੀ ਵਗ ਪਹਿਲੇ ਹਿੰਦੂਆਂ ਨਾਲੋਂ ਹੀ ਗੱਲ ਪੰਜ ਪ੍ਰਕਾਸ਼ ਦੇ ਵਿੱਚ ਪਹਿਲਾਂ ਕੋਸ਼ਿਸ਼ ਕੀਤੀ ਸੀ ਜੋਗੀ ਫੜਲੇ ਸੀ ਜੋਗੀ ਇਹਨੂੰ ਕਿਹਾ ਬਾਮਣ ਦਾ ਹੋਈ ਸਹਿਮਤ ਹੋਗੇ ਸੀ ਨਾਲ ਪਹਿਲਾਂ ਇਹ ਅੰਤਰ ਪੂਜਾ ਬੜੇ ਕਿਤੇ ਬੋ ਹੌਲੀ ਹੌਲੀ ਅਸੀਂ ਸਾਰਿਆਂ ਨੂੰ ਜੋਗੀ ਫੜਲੇ ਜੋਗੀ ਇਹ ਜੋ ਭੱਜ ਕੇ ਬਾਣਾ ਚਲੇਗਾ ਕੁਝ ਕੁਝ ਆਪ ਲੋ ਇਹਨਾਂ ਦੇ ਸਾਥ ਲੋ ਜੋਗੀ ਜਿਹੜੇ ਨਾਲ ਥਲੇ ਉਹ ਇਹਨਾਂ ਦੇ ਨਾਲ ਸਹਿਮਤ ਹੋ ਗਏ ਬਾਣਾ ਉਹਨਾਂ ਨੇ ਪੈਰ ਰੱਖਿਆ ਬੇ ਤਾਂ ਰੱਖਿਆ ਉਹੋ ਪਾ ਜਿਵੇਂ ਸੰਗਤ ਸਾਰੀ ਆਪਾ ਨਾਲ ਵਾਲਾ ਖਾਣ ਪੀਣੋ ਹੀ ਰੱਖਿਆ ਲਾਗਿਆ ਉਕਲਾ ਮੋੜ ਉਹ ਅੜ ਗਿਆ ਤੇ ਸਾਰੀ ਦੇਖੋ ਜਿਆਦਾ ਲੰਘਦੇ ਉਹਨਾਂ ਨੇ ਇਹ ਰੱਖਿਆ ਬਾੜ ਬਾਣਾ ਤੁਸੀਂ ਆਪਣਾ ਰੱਖੋ ਖਾਣ ਪੀਣ ਵੀ ਰੱਖੋ ਤੇ ਵੀ ਜਾਓ ਸਾਡਾ ਵਿਚਾਰਦਾਰਾ ਸਾਡੇ ਆ ਵੀ ਫਪੜਾ ਵਿਚਾਰਦਾਰਾ ਹੱਲੇ-ਫੂਲੇ ਇਹੇ ਕਰਦੇ ਨੇ ਹੱਥ ਔਲੇ ਪੀੜੇ ਕਰੋ ਦੁੱਧ ਜਿੱਦਾਂ ਇਹਦਾ ਮੁੱਲ ਦਿਖਾ ਰਹੇ ਨੇ ਉਹੀ ਗੱਲ ਫਿਰ ਇਹਨਾਂ ਨੇ ਵੀ ਜੋੜ ਕੇ ਤਾ ਕਿ ਜਿਹੜੇ ਸੀਗੇ ਉੱਤ ਅਵਾਲ ਹਰਨ ਸੰਤ ਤੱਕ ਤੱਕਲੀਅਰ ਹੋ ਗਈ ਲਈ ਉਸ ਬਰਦਾਰ ਦੀ ਉਹਦੇ ਨਾਲ ਕਸ਼ਮੀਰ ਲੱਗਦੀ ਸੀ ਉਹਦਾ ਕਹ ਕਸ਼ਮੀਰ ਵਾਲੇ ਹਿੰਦੂਦਵਰ ਵੱਲ ਪਰਲਤਾਂ ਇਹਨਾਂ ਨੂੰ ਕਹੋ ਵੀ ਤੁਸੀਂ ਭਾਈ ਸਹਿਰ ਨੂੰ ਬੜਾ ਬੜਾ ਬੜੋ ਤੁਸੀਂ ਆ ਬੜੋਰ ਬੜੋ ਉਹਦੇ ਰਿਜ਼ਲਟ ਚੱਗਿਆ ਰਹੇ ਸੀ ਤੇ ਜਿਹੜੇ ਆਪਣੇ ਸਿੱਧਾਣੇ ਸੀ ਬਾਈ ਧਾਰੀ ਸਿੱਧਾਣੇ ਬੜਾ ਜਿਹੜਾ ਆਇਆ ਸੀ ਉਹ ਜਿਹੜੇ ਬੰਦੇ ਸਿੱਧਾਣਾ ਕਰਦੇ ਤੇ ਪ੍ਰਚਾਰ ਨੂੰ ਦਿਸੁੰਦੋ ਰਹੀ ਕਰਦੇ ਖਿਲਾਫ ਆ ਗਏ ਕਿ ਕਹਿੰਦੇ ਜਾ ਕੇ ਲੋਕਾਂ ਹਾਂ ਇਹ ਦੁਨਾਨ ਰੰਜੀੂ ਗਏ ਸਰਵਨ ਸਰਵ ਕਰਦਾ ਆਪਣੇ ਨਾਲ ਉਹ ਸਾਡੇ ਦੇ ਪਾਸੇ ਸਾਂਭ ਲਈ ਗਏ ਜੇ ਲਾਇ ਗਿਆ ਆਪੇ ਲੜ ਲਾਗੇ ਕਿਸੇ ਨਾਲ ਨਾ ਲੱਟੇ ਨੂੰ ਇਸਲਾਮ ਵਿੱਚ ਸਰਵ ਤੋਜੂ ਤਾਂ ਬਤਾਰ ਮੜੀ ਜੀ ਪੂਰੀ ਸਰਵ ਤੋਜੂ ਇਸ ਵਾਸਤੇ ਇਹਨਾਂ ਨੇ ਯਾਰ ਪੰਤਾਂ ਨੂੰ ਗਿਆ ਪੰਤਾਂ ਨੇ ਇਹ ਸੋਚਿਆ ਤਾਂ ਆਪਿਆ ਵੀ ਆਪਾਂ ਗੁਰੂ ਘਰ ਨਾਲ ਜੀ ਇਹ ਜਿਹੜੇ ਪ੍ਰਸਾਦ ਹੈ। ਉਹ ਜਨਮ ਮੰਨ ਲਈ ਕੋਈ ਮਰਜ਼ੀ ਸਮਝ ਲੋ। ਖੇਵੇ ਬਾਦਸ਼ਾਹ ਇਹ ਗੱਲਾਂ ਨਹੀਂ ਕਰਾਉਂ ਹੋ ਚੁੱਕਿਆ। ਹੂੰ। ਇਹ ਕਿਹੜਾ ਬਹਾਦੂਰ। ਹੂੰ। ਗੁਰੂ ਘਰ ਕੋਈ ਸ਼ਕਤੀਸ਼ਾਲੀ ਇਹਨਾਂ ਨਾਲ ਟੱਕਰ ਲੈ ਸਕਦਾ ਗੁਰੂ ਘਰ ਤੋਂ ਪ੍ਰਭਾਵ ਹਸੀਗਾ ਜਾਂਗੇ ਤੱਕ ਕੇ ਬਾਈਓ ਤੋਂ ਭਈ ਅਪਾ ਸਿੱਖ ਬਣ ਸ਼ੁਰੂ ਕਰ ਲੈ ਜੀ ਕਹਿਦਾ ਵੀ ਅਸੀਂ ਤੁਹਾਡੇ ਨਾਲ ਤੁਹਾਨੂੰ ਉਚਾਰ ਉੱਥੇ ਬਚਾਅ ਹੋ ਸਕਦਾ ਆਪਣਾ ਕਪਾ ਸਰ ਗੋਖੜ ਦੇ ਦਾ ਬਚਾਅ ਹੋ ਫਿਰ ਉਹ ਵੀ ਬੈਦਕ ਧਰਵੇਂ ਨਾ ਤੁਹਾਨੂੰ ਮਤ ਹੈ ਜੀ ਮੌਰ ਦੇ ਕੇ ਜੈਮਤ ਕبول ਲੀਓ ਕਸੁੱਤ ਇਹ ਪਾਸੇ ਬਾਅਦ ਚ ਮੁੱਕਰ ਜੇ ਅਸੀਂ ਚਰਿੱਤਰ ਕਹਿੰਦੇ ਹਾਂ ਇਸ ਗੱਲ ਨੂੰ ਆ ਬਾਹਰ ਆ ਦੇ ਲੈ ਸਗਦਾ ਹੈਗਾ ਲੈ ਬਾਹਰ ਆ ਦੇ ਲੈ ਟਾਈਮ ਅੱਜ ਵੀ ਅਸੀਂ ਚਰਿੱਤਰ ਕਹਿੰਦੇ ਹਾਂ ਤਾਂ ਜੇ ਬਰ ਗੁਰੂ ਗੁਰੂ ਇਹ ਕਰਾ ਲਿਆ ਉਹਨੇ। ਨਹੀਂ ਨਹੀਂ ਇਹ ਗੱਲ ਗਲਤ ਹੈ। ਇਹ ਉਹਨਾਂ ਦੀ ਸ਼ਹੀਦੀ ਨਾਲ ਇਹ ਬਿਲਕੁਲ ਗਲਤ ਬੇਵਕੂਫੀ ਦੀ ਗੱਲ ਹੈ। ਹੀ ਅਸਰ ਪੈ ਗਿਆ। ਸੀ ਛੱਡ ਦੋ ਇਹ ਗੱਲ। ਗੱਲ ਫਰੰਦਾ ਦੀ ਇਹ ਨੋਵੇ ਬਾਸ਼ਾ ਤੱਕ ਕੀ ਡੋਗੇ ਕਾਹ ਚਮੇ ਚਿਰ ਤੱਕ ਠੀਕੇ ਉਰੂ ਲੋਗੇ ਕਿੱਥੇ ਖੜੀ ਜੋ ਹਾਂ ਬੇ ਗੱਦਾਰੀ ਕੀਤੀ ਗੱਦਾਰੀ ਕੀਤੀ ਯਾਰ ਸਦਗੀ ਉਹ ਕੰਨ ਗੱਦਾਰੀ ਕੀਤੀ ਗੱਦਾਰੀ ਕਰਦਾ ਗੱਦਾਰੀ ਵੀ ਕਦੇ ਕੀਤੀ ਉਹਨਾਂ ਨੇ ਕਿਹਾ ਵੀ ਜੇ ਅਸੀਂ ਤੋਂ ਪਾਸ਼ੰਦ ਸੀ ਕਰ ਬੈਠੇ ਹੂੰ ਵੀ ਜੇ ਅਸੀਂ ਫੇਰ ਉਹੀ ਗੱਲ ਸ਼ੁਰੂ ਕੀਤੀ ਜਿੰਦੂਨ ਕਹਿੰਦਾ ਤੁਸੀਂ ਮਸਲਮਾਨ ਬੜੋ ਜਿੰਨੇ ਰਾਜੇ ਹਿੰਦੂ ਨੇ ਸਾਰੇ ਬਾਕੀ ਹੋ ਗਏ ਰਾਜੇ ਵੀ ਸਨ ਉਸ ਵੇਚਾਈ ਸ਼ੁਰੂ ਹੋ ਗਈ ਸੀ ਰਾਜਾ ਜਿਹੜਾ Rajasthan ਜਨ ਸਾਰੇ ਤੇ ਤੋਂ ਬਾਅਦ ਵਿਚਾਰੀ ਹੋਣੀ ਸੀ ਰਾਜੇ ਤੇ ਚੇਲੇ ਸੀ ਸਾਰੇ ਸਾਰੇ ਹਿੰਦੁਸਤਾਨ 'ਚ ਬੇਚੈਨੀ ਹੋ ਗਈ ਸੀ ਉਹਨੂੰ ਟਕੋਣ ਵਾਸਤੇ ਕਾ ਵੀ ਜੀ ਮੁਸਲਮਾਨ ਕਿਸ ਨੂੰ ਬਣਾਉਦੇ ਨਹੀਂ ਖਿਆਲ ਕਰ ਜਦੋਂ ਬਣਾਉਦੇ ਨਹੀਂ ਕਹਦਾ ਵਿਡਰਾ ਕਰ ਦੇ ਫਿਰ ਉਹਨੂੰ ਕਿ ਲੋੜੀ ਸਿੱਖ ਬਣਾ ਦੇ بڑا ਸਟਾਬਲ ਲਿਖਿਆ ਗਿਆ ਸੀ ਉੱਥੇ ਮੁੱਕਰ ਕੇ ਮਦਦ ਮੁੱਕਰ ਕੇ ਲੈ ਬੈਗੇ ਉਹ ਉੱਥੇ ਹੀ ਖੜ ਗਈ ਗੱਲ ਇਸਲਾਮ ਵਾਲੀ ਇਸਲਾਮ ਵਾਲੀ ਹੋਣ ਵਾਲੀ ਗੱਲੇ ਰੁਕੀ ਉੱਥੇ ਦਸ ਪਾਸ਼ਾ ਨੂੰ ਦੋ ਤਿੰਨ ਸੌ ਸਾਲ ਦੀ ਗੱਲ ਹੈ ਇਸਲਾਮ ਵਾਲੀ ਗੱਲ ਉੱਥੇ ਰੁਕ ਗਈ ਉਹ ਤੇ ਲੋਕੀ ਕਹੋ ਘੱਟ ਹੀ ਐ ਸਕੋ ਹਿੰਦੁਸਤਾਨ ਜੋ ਨਾਉਂ ਦੀ ਗੱਲ ਘੱਟ ਹੀ ਆ ਅੱਛਾ ਜੰਜੂ ਤਲ ਕਾ ਖਬਰ ਤਾ ਕਾ ਦਾ ਵਿਰੋਧ ਨਹੀਂ ਕੀਤਾ ਗੁਰੂ ਘਰ 'ਚ ਵਿਰੋਧ ਸੀ ਗਾ ਜੰਜੂ ਤਲ ਦਸਮ ਪਾਤਸ਼ਾਹ ਦੇਵੇ ਹੈ ਵਿਰੋਧ ਕੀਤਾ ਸਿਰਫ ਜਿੰਦੂ ਤਿਲਕ ਦਾ ਹਮਰਤਸ ਰਾਏ ਤੋਂ ਬਾਅਦ ਪਹਿਲਾਂ じゃ ਸਾਡਾ ਕੋਈ ਭੇਸੇ ਨਹੀਂ ਹੈ ਗੁਰੂ ਘਰ ਦਾ ਸਾਡਾ ਭੇਸੇ ਨਹੀਂ ਕੋਈ ਅਸੀਂ ਜਿੰਦੂ ਤਿਲਕ ਦਾ ਵਿਰੋਧ ਕਰੀਏ ਤਾਂ ਕਿਉਂ ਕਰੀਏ ਜੋਗੀ ਨੂੰ ਵੀ ਉਪਦੇਸ਼ ਹੈ ਉਸਰਮਾਨ ਨੂੰ ਵੀ ਉਪਦੇਸ਼ ਹੈ ਉਪਦੇਸ਼ ਹੈ ਪਹਿਲਾਂ ਗੁਰਬਾਣੀ ਜਦੋਂ ਆਪਣਾ ਵੇਖ ਦਿੱਤਾ ਤਾਂ ਜਿੰਦੂ ਤਿਲਕ ਦਾ ਵਿਰੋਧ ਸਾਡੇ ਕੋਲ ਦੋ ਰੰਗ ਨੇ ਕੇਸਰੀ ਅੰਨੀਲਾਦ ਇੱਕ ਮੁਸਲਮਾਨ ਨੇ ਕਿ ਦੋ ਦਾ ਸਾਡਾ ਦੋਹਾਂ ਚ ਕੋਈ ਨਹੀਂ ਅੜਦਾ ਕੋਈ ਨਹੀਂ ਦੋ ਚ ਆਪਣਾ ਤਾਂ ਕੋਈ ਨਹੀਂ ਸਵੇਰ ਰਗ ਨੂੰ ਨਾਲੇੜੇ ਰੰਗ ਕੋਲ ਵਾਲਾ ਜਿਹੇ ਵਾਲੇ ਰੰਗ ਤਾਂ ਕਿਸੇ ਨੂੰ ਕੋਈ ਰੰਗ ਬੋਲਦਾ ਕਿਸੇ ਨੂੰ ਕੋਈ ਨਾ ਕੋਈ ਬੋਲਦਾ ਜਾਂਦੇ ਵੀ ਰੰਗਦੇ ਵੀ ਰੰਗਦੇ ਤੁਹਾਡੇ ਨਾਂਕ ਨੇ ਜਰੂਰ ਨਹੀਂ ਪਾਇਆ ਇਸ ਸਿਰਫ ਜਿਹੜੇ ਚਿੱਕੀ ਦਾ ਗਿਆਨ ਨਹੀਂ ਉਹਨਾਂ ਨੂੰ ਕੋਈ ਕਟੜਵਾਤਾ ਰਹੀ ਹੈ ਜਿਹਦੇ ਉਹਨਾਂ ਵਿਰੋਧ ਜਲ ਕੀਤਾ ਪੱਤਰ ਪੂਜਾ ਦਾ ਵਿਰੋਧ ਜਲ ਕੀਤਾ ਜਾ ਰੋਲਿੰਗ ਬੁੱਕ ਆਰਕਟਾ 22 ਤਾਰੀਖ ਦੇ ਕਿਹਾ ਸੀ ਵੀ ਦੋ ਵਾਰ ਲੰਦ ਤੋਂ ਸਾਡੂ ਸ਼ੂਟ ਦੇ ਦੋ ਮੂਰਤੀ ਪੂਜਾ ਫਰਾਂਗ ਦੇ ਪੂਰਤੀ ਪੂਜਾ ਨਾ ਖੰਨਣ ਜੂ ਰੁਕਿੱਤਾ ਹੋਰ ਨੇ ਇਹ ਨਹੀਂ ਕਿ ਵੀ ਮੂਰਤੀ ਪੂਜਾ ਆਣਾ ਸਿੱਖ ਬੜੇ ਨਹੀਂ ਸੋਚਦਾ ਸਿੱਖ ਤਾਂ ਕਮਚਾਰ ਦਾ ਨਾ ਔਰ ਸਿੱਖ ਨੂੰ ਬਣਾਇਆ ਜਾ ਸਕਦਾ ਕਿਸੇ ਨੂੰ ਨਾ ਬਣਾਉੜੀ ਲੋ ਸਿੱਖ ਕੇ ਹਰੂ ਬੜੋੜ ਦੀ ਲੋੜ ਨਹੀਂ ਸਿੱਖ ਸਾਰੇ ਜਨਮ ਤੋਂ ਹੀ ਸਿੱਖ ਦੇ ਜਿੱਦੜ ਦਾ ਆ ਰਾਮ ਗਰਮ ਚਾਇਆ ਜੀ ਬੋਦਲ ਦੇ ਸਾਰੇ ਹੀ ਸਿੱਖ ਇੱਕ ਪੌੜੀ ਤੋਂ ਛੁੱਟ ਆਦਮੀ ਦੇ ਜਨਮ ਤੋਂ 81 ਲੱਖ ਪੌੜੀ ਝੜ ਚੁੱਕਿਆ ਹੈ ਕਿਨੇ ਜਿਹੜਾ ਇਹ ਪੌੜੀ ਰਹੀ ਹੈ ਇਹ ਪੌੜੀ ਦੇ 84 ਲੱਖ ਜਿਹੜੇ ਸਟੈਪ ਨੇ ਉਹ ਕਿਵੇਂ ਜਿਹੜੇ ਪਾਣੇ ਚ ਰਹਿਣਾ ਪੈ ਵਿੱਚ ਚੱਲਣਾ ਚੱਲਣਾ ਚੜਦਾ ਕੇਵਲ ਆਦਮੀ ਹੈ ਜਿਹੜਾ ਪਾਣੇ ਤੋਂ ਬਾਹਰ ਜਾਂਦਾ ਹੈ ਦੀ ਕੋਸ਼ਿਸ਼ ਕਰਦਾ ਹੋਰ ਕੋਈ ਜਾਨਵਰ ਕਰਦਾ ਹੀ ਨਹੀਂ ਪੈ ਵਿੱਚ ਪਵੜ ਵਹੈ ਸਰਦਾ ਪੈ ਵਿੱਚ ਚੱਲਣਾ ਲੱਫ ਦਰਿਆ ਪੈ ਵਿੱਚ ਅਗਨ ਕੱਢੇ ਬੇਗੋ ਪੈ ਵਿੱਚ ਧਰਤੀ ਦਬੀ ਪਾ ਪੈ ਵਿੱਚ ਸੂਰਜ ਪੈ ਵਿੱਚ ਚੰਦ ਉਹ ਕਰੋਲੀ ਚਲਤਰ ਸਗਲਿਆ ਪਾਓ ਸਗਲਿਆਂ ਦੇ ਵਿੱਚ ਕੋਲ ਰਹਿ ਗਿਆ ਨੂੰ ਕਰਿਆ ਨਹੀਂ ਸਕਦਾ ਦੋ ਪਹੁੰਚਾਈ ਵੀ ਮੇਰੇ ਸਾਰੇ ਜੀ ਲਿਖਿਆ ਸੱਲੇ ਲਿਖਿਆ ਸੱਲੇ ਜਿਹੜਾ ਉਹ ਜੀਵ ਆਤਮਾ ਦੇ ਉੱਤੇ ਸਿਰ ਦੇ ਉੱਤੇ ਇਹ ਹੁਕਮ ਉਹਨਾਂ ਦੇ ਸਿਰ ਦੇ ਉੱਤੇ ਜੋ ਚਾਹੁੰਦਾ ਜੋ ਪ੍ਰਾਪਾਵੈ ਸੋ ਕਰੈ ਜੀ ਜੀ ਕਿ ਜੇ ਸਾਰੇ ਜੀਵ ਦੇ ਹੁਕਮ ਜਿਦੇ ਸਾਰੇ ਜਿੱਥੇ ਉਹ ਜੀਵ ਤਾਂ ਇਕੱਲੇ ਜਨ ਨੂੰ ਖਾਣੂਗਾ ਕਹਿੰਦਾ ਜੀ ਸਾਰੇ ਆ ਗਏ ਜਿਹੜਾ ਗੁਰੂ ਹੈ ਜਿਹੜਾ ਗੁਰੂ ਦਾ ਸ਼ਬਦ ਹੈ ਸ਼ਬਦ ਗੁਰੂ ਹੈ ਉਹ ਸਾਰੇ ਜੀਵਾਂ ਨੂੰ ਗਿਆਨ ਦੇ ਰਿਹਾ ਜਿਹੜੀ ਪਾਣੀ ਗੁਰੂ ਹੈ ਉਹ ਸਾਰੇ ਜੀਵਾਂ ਨੂੰ ਜੰਦਦੇ ਰਹੀ ਹੈ ਆ ਕੇਵਲਾ ਗੁਰ ਦੇ ਰੇ ਇਹ ਗੁਰਬਾਣੀ ਕੇਵਲਾ ਪੂਰਾ ਤੇ ਜਾਨਵਰਾਂ ਵਾਸਤੇ ਨਹੀਂ ਹੈ ਫੇੜੋ ਪੋਦੇ ਵਾਸਤੇ ਨਹੀਂ ਹੈ ਸਰਬ ਇੱਕ ਬੋੜੀ ਦਾ ਖੜਾ ਹੈ ਤਾਂ ਸਾਰਿਆਂ ਨੂੰ ਜੰਦਦੇ ਰਹੀ ਹੈ ਬਾਣੀ ਤਾਂ ਜੜ ਕਿਆ ਚੇਤਨ ਕਿਆ ਸਾਰਿਆਂ ਨੂੰ ਪੈਸੇ ਰੱਖ ਰਹੀ ਹੈ ਉਹਦਾ ਜੜ ਚੈਤਨ ਸਾਰਿਆਂ ਵਾਸਤੇ ਯਾਰ ਜੜ ਨੂੰ ਜੜ ਦੇ ਤਰੀਕੇ ਨਾਲ ਰੱਖ ਰਹੀ ਹੈ ਜੜ ਉਪਦੇਸ਼ ਨਾਲ ਪੈਚਦੀ ਰਹਿੰਦਾ ਜੜ ਦਾ ਜੜ ਨੂੰ ਜੜ ਦਾ ਤਰੀਕਾ ਹੋਰ ਰੱਖਣਾ ਪੈਦਲ ਇਕੀ ਜਣਾ ਚੱਲਦਾ ਆ ਹਵਾ ਸਮਾਨ ਫਰਤਣਾ ਵੀ ਚੱਲੀ ਜਾਂਦਾ ਕਿ ਢੱਡਪੋਲ ਟਰੈਕਟਰ ਉਹ ਉਹਦੇ ਢੱਡਪੋਲ ਤੇ ਹੋ ਹੈ ਨਾ ਟਰਪਾਈ ਤੇ ਐਕਸੀਡੈਂਟ ਹੋ ਜੂ ਮਾਇਆ ਦਾ ਤਰੀਕਾ ਹੋਰ ਹੈ ਬੈਠਣਾ ਕੰਟਰੋਲ 'ਚ ਰੱਖਣਾ ਚੇਤਨ ਦਾ ਤਰੀਕਾ ਬੁਲੇਸ ਰੱਖਣਾ ਚੇਤਨ ਉਪਦੇਸ਼ ਨਾਲ ਰਹਿੰਦਾ ਮਾਇਆ ਦੀ ਉਪਦੇਸ਼ ਨਾਲ ਮਾਇਆ ਦਾ ਹੋਰ ਤਰੀਕਾ ਆ ਮਾਰਦੇ ਨੇ ਠੱਕੋ ਛੱਪ ਜਾਂਦਾ ਟੈਪ ਤੇ ਪਰ ਜੇ ਉਹਦੀ ਕਿਤੇ ਪੈਨ ਨਿਕਲ ਜਾ ਫੇਰ ਦੀ ਇੱਥੇ ਮਾਰਦਾ ਸੌਹਰਦਾ ਨਹੀਂ ਬਾਕੀ ਜੁਨਿਆਂ 'ਚ ਬਕਾਰ ਜਿਹੜੇ ਜ਼ਿਆਦਾ ਹੈਵੀ ਨਾ ਹੋਣ ਕਰਕੇ ਤਰਕੀ ਹੁੰਦੀ ਹੈ ਦੇ ਹੀ ਉੱਥੇ ਬੁੱਧ ਥੋੜੀ ਐ ਥੋੜੀ ਅਕਲ ਵਾਲਾ ਉਹ ਤਰੱਕੀ ਤਾਂ ਹੁੰਦੀ ਉੱਥੇ ਥੋੜੀ ਅਕਲ ਵਾਲਾ ਵੀ ਦੂਏ ਦੀ ਗੱਲ ਬੰਨ ਲੈਂਦਾ ਬਹੁਤੀ ਅਕਲ ਵਾਲਾ ਆਪਣੀ ਅਕਲ ਇਹ ਕਵਲਦੀ ਐ ਅਕਲ ਇਹ ਤਾਂ ਕੋਈ ਇਹ ਕਹਿੰਦਾ ਮੈਰੇ ਜਿਹੀ ਕਿਸੇ ਕੋਲ ਨਹੀਂ ਹੈ ਨੁਕਸਾਨ ਹੁੰਦਾ ਹੁੰਦੀ ਐ ਜਿਆਦਾ ਪੈਸਾ ਵੀ ਨੁਕਸਾਨ ਦੇ ਹੁੰਦਾ ਜਿਆਦਾ ਤਾਕਤ ਸਰੀਰ ਦੀ ਵੀ ਨੁਕਸਾਨ ਦੇ ਦਿੰਦੀ ਉਹ ਹੰਕਾਰ ਹੋ ਜਾਂਦਾ ਇਸ ਕਰਕੇ ਇਹਦੇ ਕੋਈ ਜਿਆਦਾ ਹੰਕਾਰ ਵੀ ਨਹੀਂ ਵਧਿਆ ਜਾਂ ਹੰਕਾਰਵਾਦੀ ਹੰਕਾਰ ਨੇ ਵਿਰੋਧ ਕੀਤਾ ਕਰ ਲੈਦਾ ਹੁਕਮ ਨੇ ਕਰ ਲੈ ਉਹ ਕੀ ਦਾ ਕਰੇ ਹੋਰ ਕੀ ਦਾ ਕਰਦੇ ਵਿਰੋਧ ਕੀਤਾ ਕਰ ਲੋ ਕੋਈ ਬੈਠੇ ਵਿਰੋਧ ਯਾਨੀ ਸਿੱਖ ਬਣਾਉਣ ਦੀ ਲੋੜ ਈ ਸਿੱਖ ਉਹ ਬਣਾਉਣ ਦੀ ਤਾਂ ਲੋੜ ਹੈ ਜੇ ਕੋਈ ਸਿੱਖ ਹੋਵੇ ਨਾ ਜਿੰਨੇ ਜੀਉ ਪਾਇਨੇ ਸਾਰੇ ਉਹਦੇ ਚੇਲੇ ਨੇ ਸਿੱਖਦੇ ਉਹ ਗੁਰੂ ਆ ਸਾਰੇ ਤਰਪ ਗੁਰੂ ਮੰਨਦੇ ਨੇ ਕਿਉਂ ਤਰ ਰੋਸ਼ਨੀ ਮਿਲਦੀ ਆ ਸਭ ਨੂੰ ਸਾਰੇ ਬੰਦੇ ਨੂੰ ਸਾਰੇ ਬੰਦੇ ਨੇ ਫੇ ਸਾਰੇ ਸਿੱਖਦੇ ਸਿੱਖ ਸਾਡੇ ਦੀ ਬਣਨਾ ਅਨੰਤ ਦੇ ਬਣਨਾ ਸਿੱਖ ਪਰਮੇਸ਼ਰ ਦੇ ਬਣਨਾ ਗੁਰੂ ਪਰਮੇਸ਼ਰ ਜਦੋਂ ਜ਼ਿਕਰੀ ਦੇ ਵਿੱਚ ਤੇੜ ਆਉਂਦੀ ਹੈ ਜਦੋਂ ਨਾਮ ਜ਼ਰੂਰ ਬੋਲਣ ਦੇ ਫਿਰ ਹੋਰ ਤਰ੍ਹਾਂ ਦੇ ਸਿੱਖਾਂ ਦੀ ਗੱਲ ਹੋ ਜਾਂਦੀ ਫਿਰ ਸਾਡੀ ਮਰਜ਼ੀ ਦੇ ਸਿੱਖ ਹੋ ਜਾਂਦੇ ਨੇ ਐਜੇ ਸਿੱਖਾਂ ਦਾ ਤਾਂ ਜਗਰ ਨਹੀਂ ਹੈ ਸਾਡੀ ਮਰਜ਼ੀ ਦੇ ਸਿੱਖਾਂ ਦਾ ਜਗਰ ਤਾਂ ਹੈ ਨਹੀਂ ਗੁਰਬਾਣੀ ਜਿਹਹ ਜੇ ਅਸਲੀ ਸਿੱਖ ਚਾਹੁੰਦੇ ਆ ਬਣਾਉਂਦੇ ਆ ਉਹ ਜਿਹੇ ਸਿੱਖਾਂ ਦੇ ਜਗਰ ਨਹੀਂ ਹੈ ਗੁਰਬਾਣੀ ਇਹ ਦਿਖਾਉ ਕਿੱਥੇ ਲੱਖ ਕਿਤੇ ਰਸੀ ਜੋਤ ਸੁਭਾਈ ਸਾਰੀ ਚੋ ਰਸੀ ਰਖ ਜੋਰ ਬਾਂਹ ਸੁਤੋਪਰਾ ਦੇ ਗੁਰੇ ਪ੍ਰਭ ਨੇ ਦਿੱਤੇ ਉਹਡੇ ਹੀ ਬੋਲ ਤੇ ਰਸੀ ਰਖ ਜੋਰ ਤੇ ਰਸੀ ਲੱਖ ਨੂੰ ਜੋਰ ਨੂੰ ਸਮਝਾਇਆ ਭਾਈ ਤੁਸੀਂ ਛੋਟੇ ਇਹ ਬੜਾ ਇਹ ਸਿਆਣਾ ਬਣਾਤਾ ਚੋ ਰਸੀ ਲੱਖ ਜੋਰ ਚੋਂ ਹੀ ਆਇਆ ਵੀ ਸਿਆਣਾ ਬਣਾਇਆ ਉਹਨੇ ਬਣਾਇਆ ਸਿਆਣਾ ਹੋਰ ਕਿਹਨੇ ਬਣਾਇਆ ब्रा आ किदे सब पुड़ फेच रासी चला जाएगा तू ये हुड़ करासी जी जा सकता थेले नु जा सकता है फिर तो जाएगी सगड़ा नहीं आदमी थेले एक को स्कूल है जी सारे स्टूडेंट सारे जीवो स्टूडेंट एक को स्कूल है एको ही टीचर है गुरु बस सारे जो दाखिल ਉਦੋਂ ਤੋਂ ਵੀ ਦਾਖਲ ਹੈ ਜਦੋਂ ਤੇ ਕੇ ਖਾਏ ਨੇ ਕਹਿ ਜੇ ਸਿੱਖ ਬੜੋੜ ਚੋਣ ਜੀ ਅਸੀਂ ਨਾਲ ਤੋਂ ਬਾਅਦ ਮੋਲ ਦੇ ਸਿੱਖ ਸਿੱਖ ਦਾ ਲਾਭ ਪਹਿਲਾਂ ਤੇ ਚੱਲਦਾ ਹੈ দানਕ ਜਾਂ ਵੀ ਨਹੀਂ ਸੀ ਜਦਾਂ ਸਿੱਖ ਲਾਭ ਚੱਲਦਾ ਤੂ ਵੀ ਦੇ ਸਿੱਖ ਵਰ ਕੇ ਤੋਂ ਪਹਿਲਾਂ ਉਹਦਾ ਵਰਤਿਆ ਹੈ ਇਹ ਕੋਈ ਸਿੱਖ ਨਾਲਕ ਨਹੀਂ ਘੜਿਆ ਲਾਭ ਇਹ ਕੋਈ ਨਾਲਕ ਦੀ ਗੱਤ ਹੈ ਤੋਂ ਪਰਮੇਸ਼ਰ ਦੀ ਬੋਤ ਸਿੱਖ ਸਾਰੇ ਬਲੇ ਕੋਈ ਬੇਧਰੀ ਹੁੰਦਾ ਚੀਤੀ ਤੇ ਗੁਜਰ ਤਸਤੂਲਾ ਸਭਾ ਪਾ ਦੇਸ਼ ਕਰ ਬੁਲ ਸਭਾ ਪਾ ਸਾਰੇ ਜੀ ਆ ਦੇ ਨਾਲ ਆਥੇ ਦਾ ਉਗੀਰ ਸਾਪਰ ਕਰਿਪ ਤੇ ਦਾਇਸਾਪਰ ਕਰਿਪ ਇਹ ਜਿਹੜਾ ਜਾਂ ਨਕਸ਼ਾ ਸਿੱਖੀ ਦਾ ਅਸੀਂ ਬਣਾ ਲਿਆ ਇਹ ਸਾਡਾ ਮਨੁੱਖਾ ਨਕਸ਼ਾ ਹੈ ਸਾਡੇ ਆਪਣੀ ਵਰਜੀ ਦਾ ਹੈ ਗੁਰੂ ਕੀ ਵਰਜੀ ਦਾ ਨਕਸ਼ਾ ਗੁਰਬਾਣੀ ਦੀ ਵਰਜੀ ਦਾ ਨਕਸ਼ਾ ਹੀ ਨਹੀਂ ਹੈ ਜੋ ਨਕਸ਼ਾ ਪ੍ਰਚਾਰ ਚਿੱਤਰ ਅਸੀਂ ਅੱਜ ਖਿੱਚਿਆ ਆਇਆ ਆਪਣਾ ਸਮਝਿਆ ਹੋਇਆ ਸਿੱਖੀ ਦਾ ਉਹ ਗੁਰਬਾਣੀਦਾਰੀ ਹੈ ਦੱਸਿਆ ਸਾਨੂੰ ਗੁਰਬਾਣੀ ਦਾ ਗੱਲਿਆ ਨਹੀਂ ਕਰਦਾ ਇਹ ਸਾਡਾ ਆਪਣਾ ਬੰਦਿਆ ਹੋਇਆ ਹੈ ਹੰਬੇ ਦਾ ਨਖਾ ਹੈ ਸਾਡੀ ਦਾ ਇਹ ਸਾਡੇ ਹੋਬੇ ਚ ਪੈਦਾ ਹੋਇਆ ਆਪ ਆਪਣੀ ਖੁਦ ਹਜੇਤੀ ਜੇ ਜੀ ਸਾਡੀ ਅਕਲ ਵੀ ਹੋ ਜਾਂਦੀ ਸੀ ਆਪ ਬਣਾ ਲਿਆ ਐ ਇੱਕ ਨਾਨਕ ਨੂੰ ਗੁਰੂ ਮੰਨਦੇ ਸੀ ਸਿੱਖ ਅਸੀਂ ਰਕਸ਼ਾ ਜਿਹੜਾ ਬਣਾਇਆ ਉਹ ਅਸੀਂ ਪ੍ਰਚਾਰ ਕਰਦੇ ਆ ਨਾਨਕ ਗੁਰੂ ਹੈ ਜਾਂ ਦਸ ਗੁਰੂ ਨੇ ਉਹ ਗ੍ਰੰਥ ਗੁਰੂ ਹੈ ਬਾਣੀ ਗੁਰੂ ਹੈ ਸ਼ਬਦ ਗੁਰੂ ਹੈ ਜੋ ਵੀ ਅਸੀਂ ਕਹਿੰਦੇ ਜੇ ਗ੍ਰੰਥ ਗੁਰੂ ਆ ਤੇ ਸ਼ਬਦ ਗੁਰੂ ਨਹੀਂ ਹੈ ਇਹ ਸ਼ਬਦ ਗੁਰੂ ਹੈ ਤਾਂ ਕਰ ਗੁਰੂ ਹੈ ਤੋਇ ਆਪਾਂ ਬਰੰਤੀ ਦੋ ਗ੍ਰੰਥ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੈ ਸ਼ਬਦ ਅੱਖਾਂ ਨੂੰ ਦੇਖਣ ਵਾਲੀ ਚੀਜ਼ ਹੁੰਦੀ ਨਹੀਂ ਸੁਣਨ ਵਾਲੀ ਚੀਜ਼ ਹੁੰਦੀ ਹੈ ਉਰਦੋਸੋ ਅੱਖਰ ਗੁਰੂ ਹੈ ਗ੍ਰੰਥ ਗੁਰੂ ਹੈ ਆ ਸ਼ਬਦ ਗੁਰੂ ਹੈ ਸ਼ਬਦ ਹੋਰ ਚੀਜ਼ ਹੈ ਸ਼ਬਦ ਅੱਖਾਂ ਨੂੰ ਦੇਖਣ ਵਾਲੀ ਚੀਜ਼ ਇਹ ਸ਼ਬਦ ਗੁਰੂ ਹੈ ਤਾਂ ਗ੍ਰੰਥ ਗੁਰੂ ਨਹੀਂ ਹੋ ਸਕਦਾ ਜੇ ਗ੍ਰੰਥ ਗੁਰੂ ਹੈ ਤਾਂ ਸ਼ਬਦ ਗੁਰੂ ਨਹੀਂ ਹੋ ਸਕਦਾ ਐਨਵੀ ਸਰੂ ਦਾ ਪਤਾ ਨਹੀਂ ਵੀ ਅਸੀਂ ਕੀ ਕਿੱਥੇ ਕਿੱਥੇ ਕੀ ਗਲਤੀ ਕਰ ਰਹੇ ਜੋ ਅਸੀਂ ਕਹਿ ਰਹੇ ਆ ਵਿਚਾਰ ਕੇ ਨਹੀਂ ਕਹਿ ਰਹੇ ਜੀ ਸੋਚ ਕੇ ਕਹਿ ਰਹੇ ਮੰਨਦੇ ਕੀਤੇ ਫੈਸਲੇ ਸਾਡੇ ਬੜੀ ਮਨਮੁੱਖਾਂ ਦੀ ਸਿੱਖੀ ਹੈ ਇਹ ਸਾਰੀ ਮਨਮੁੱਖਾਂ ਦੇ ਫੈਸਲੇ ਕੀਤੇ ਨੇ ਕੋਈ ਸ਼ਬਦ ਤਾਂ ਕਰਨ ਦਾ ਵਿਸ਼ਾ ਉਹ ਤਾਂ ਦਾ ਵਿਸ਼ਾ ਹੀ ਨਹੀਂ ਹੈ ਸ਼ਬਦ ਸੁਣਨ ਵਾਲੀ ਗੱਲ ਹੈ ਦੇਖਣ ਵਾਲੀ ਜਦ ਦੱਲਿੰਦ ਗਰਨਤ ਦੇਖਣ ਵਾਲੀ ਚੀਜ਼ ਹੈ ਅੱਖਰ ਰੂਪ ਤਾਂ ਦਿੱਤਾ ਜਾ ਸਕਦਾ ਸ਼ਬਦ ਨੂੰ ਹੁਣ ਫਿਰ ਅੱਖਰ ਕਿਹਾ ਹੈ ਵਰਲਡ ਕੋਈ ਗੁਰੂ ਨੂੰ ਖੋਜੇ ਗੁਰੂ ਕਾ ਦੇਗਾ ਅਕਰੰਦ ਗੁਰੂ ਨਹੀਂ ਗੁਰੂ ਨਹੀਂ ਕਹਾ ਕੋਈ ਬਾਕੀ ਰਹਿ ਗਈ ਗ੍ਰੰਥ ਦੀ ਰਾਜਾ ਰਾਜਾ ਨੇ ਕੋ ਹੁਕਮ ਭੇਜਿਆ। ਪਰ ਰਾਜਾ ਉਹਨੇ ਹੁਕਮ ਨਾ ਭੇਜਿਆ ਸੰਸਾਰ ਵਾਸਤੇ ਸਾਡੇ ਵਾਸਤੇ ਕਿ ਭਾਈ ਐਂ ਕਰ ਲੋ ਨਹੀਂ ਕਰ ਜੇ ਤੁਸੀਂ ਚਾਹਦੇ ਹੋ ਦਰਗਾਹ ਜੇ ਦਰਗਾਹ ਦੀ ਜਿੱਦ ਹੋਵੇ ਮੇਰੇ ਲਈ ਤੁਹਾਡੇ ਵਾਸਤੇ ਕੁਝ ਰਿਸਪੈਕਟ ਹੋਵੇ ਤੁਹਾਡੀ ਤੁਹਾਨੂੰ ਤੁਹਾਨੂੰ ਮਾਫੀ ਮਿਲ ਜਾ ਇੱਥੇ ਮਾਫੀ ਇਹ ਦੇਣ ਜਾਂ ਕਿਸੇ ਦੇਣ ਮਾਫੀ ਮਿਲਣੀ ਹੈ ਤਾਂ ਇਹ ਸ਼ਰਤਾਂ ਤੇ ਮਿਲਣੀ ਹੈ ਉਹਨੇ ਕੋਈ ਆਪਣਾ ਸੁਨੇਹਾ ਉਪਦੇਸ਼ ਭੇਜਦਾ ਕਿਦਾਂ ਅਸੀਂ ਉਸ ਜੀ ਤੋਂ ਸਾਨੂੰ ਲਾਭ ਮਿਲਣਾ ਉਸ ਉਪਦੇਸ਼ ਨੂੰ ਕਿਸੇ ਬੰਦੇ ਦੇ ਰਾਹੀਂ ਭੇਜਦਾ ਕੀ ਬੰਦੇ ਨੂੰ ਹੱਤ ਬਦਈਆ ਬੰਦਾ ਉਹ ਡੰਡਾ ਕੋ ਉਪਦੇਸ਼ ਇੰਪੋਰਟਡ। ਉਹਦੇ ਜਦੋਂ ਉਹ ਕੋਲ ਆਉਂਦੇ ਬੰਦੇ ਦਾ ਵਿੱਚ ਕੀ ਹੈਗਾ? ਬੰਦਾ ਉਪਦੇਸ਼ ਨੂੰ ਵੜਾਈ ਦੇ ਰਿਹਾ। ਵੜਾਈ ਤਾਂ ਬੰਦਾ ਦੇ ਰਿਹਾ ਉਪਦੇਸ਼ ਨੂੰ। ਜਿਹਦਾ ਸੁਪਾਜਾ ਇਹ ਨਾ ਕਹਿੰਦੇ ਵੀ ਗੁਰੂ ਉਹ ਹੈ ਤੇਦੀ ਕੋ ਵੈਲਿਊ ਨਹੀਂ ਸੀ ਉਪਦੇਸ਼ ਦੀ। ਇਹਦਾ ਮਤਲਬ ਇਹ ਹੋਇਆ। ਕੀ ਕਹਿਣਾ ਚਾਹੁੰਦੇ ਸੀ? ਕੀ ਮੈਸੇਜ ਦੇਣਾ ਚਾਹੁੰਦੇ ਆ ਸੰਸਾਰ ਨੂੰ ਉਹ ਇਹ ਦਾਸੁਪਾ ਸਾ ਨਾ ਕਹਿੰਦੇ ਇਹ ਗੱਲ ਵੀ ਮੇਥੋਂ ਬਾਅਦ ਗ੍ਰੰਥ ਗੁਰੂ ਆ ਫਿਰ ਇਹਦੀ ਕੋ ਵੈਲਿਊ ਨਹੀਂ ਸਾਡੇ ਵਾਸਤੇ ਇਹੜਾ ਨਹੀਂ ਚਾਹੁੰਦੇ ਫਿਰ ਕੋਈ ਵੈਲਿਊ ਨਹੀਂ ਸੀ ਫਿਰ ਅਜੇ ਨੂੰ ਦੀ ਪੁੱਛਦੇ ਨਾਲ ਹੋਰ ਸੀ ਪੁੱਛਣ ਦੀ ਇਹੀ ਗੱਲ ਹੋਈ ਨਾ ਫਿਰ ਉਹਨਾਂ ਨੇ ਜੋ ਕਹਿਤਾ ਤਾਂ ਵੈਲਿਊ ਹੈ ਅਰ ਦਸਮ ਪਾਸਿਆ ਦੀ ਹੋਰ ਗੱਲਾਂ ਕਈ ਹੋਈਆਂ ਜਿੰਨੀਆਂ ਨੇ ਬਾਣੀਆਂ ਉਹਨਾਂ ਨੂੰ ਤਾਂ ਅਸੀਂ ਸਿੱਧਾ ਰੱਦੀ ਦੀ ਟੋਕਰੀ ਚ ਜਾਪ ਸਾਹਿਬ ਨੂੰ ਗਵਾਨੀ ਕਿਹਾ ਹੀ ਨਹੀਂ ਹੈ ਕਾਹਨੂੰ ਗੁਰਮਾਨ ਬਰਤ ਹਜੂਰ ਸਾਹਿਬ ਸਭ ਤੋਂ ਪ੍ਰਾਤਮਿਕ ਗ੍ਰੰਥ ਹਜੂਰ ਸਾਹਿਬ ਵਾਲਾ ਪਹਿਲਾਂ ਤਾਂ ਕਹਿੰਦੇ ਪਾਈ ਹੁੰਦੀ ਸੁੰਦੇ ਹੱਥਾਂ ਦਾ ਪਾਈ ਬਣੀ ਸੁੰਦੇ ਹੱਥਾਂ ਦਾ ਕੋਈ ਗ੍ਰੰਥ ਜਿਹੜਾ ਹੋਊਗਾ ਤੇ 10 ਰੁਪਏ ਵਾਲੀ ਮੋਹਰ ਹੋਊਗੀ ਥੋੜੀ ਚਾਹੀਦੀ ਹੈ ਫਿਰ ਬੋਲੋ ਤੇ ਹੈ ਨਹੀਂ ਕਿਸੇ ਮੇਰੇ ਵਰਗੇ ਨੇ ਕਹਿੰਦਾ ਉਹ ਦਿਖਾਓ ਮੋਹਰ ਕਿੱਥੇ ਉਹਨਾਂ ਨੇ ਕਾ ਵੀ ਹੁਣ ਬੱਜ ਲਈਏ ਝੂਠ ਨੂੰ ਸੁਣੋ ਅਸਲ ਤੇ ਆ ਗਏ ਵੀ ਦਮਦਮੇ ਬੀੜ ਹੈ ਠੀਕ ਹੈ ਦਮਦਮੇ ਬੀੜ ਗਈ ਸੀ ਉੱਥੇ ਜਦ ਗੁਰਦੁਆਰਾ ਚਾਰ ਬੀੜਾਂ ਸੀ ਦਮਦਮੇ ਜਿਹੜੀ ਤਿਆਰ ਹੋਈਆਂ ਉਹਨਾਂ ਚੋਂ ਇੱਕ ਬੀੜ ਦੀ ਕਾਪੀ ਗਈ ਇੱਕ ਬੀੜ ਉੱਥੇ ਗਈ ਹੋਈ ਹੈ ਉਹ ਤਾਰਾ ਕਰਕੇ ਲੱਗੇ ਸੀ ਉਹਦਾ ਬਾਬੇ ਦੀਪ ਜਿਵੇਂ ਲ ਗਿਆ ਉਸ ਬਾਰੇ ਜ ਗਿਆ ਉਹ ਵੀੜ ਉਹਦੇ ਕੋਲ ਠੀਕ ਹੈ ਵੀੜ ਉਸ ਵੇਲੇ ਉਹ ਵੀੜ ਦੀ ਸਟੱਡੀ ਉਸੇ ਵੀੜ ਕਰਕੇ ਅਸੀਂ ਜੇ ਬਾਬੇ ਦੀਪ ਸਮੇਲੇ ਹੀ ਉੱਥੇ ਵੀੜ ਗਈ ਸੀ ਉਹ ਵੀੜ ਕਿਹੜੀ ਸੀ ਜਿਹਨੂੰ ਗਰੇਜ ਦਿੱਤੀ ਕਿੱਥੇ ਗਈ ਆਹ ਹੋਰ ਤੇ 10 10 ਕਾਜ ਦੇ ਕਹੀਦੇ ਸੀ ਕਉਕ ਉਸ ਵੇਲੇ ਦੀ ਸਾਰੀਆਂ ਵੀਡੀਓ ਤੇ ਸਾਈਨ ਹੁੰਦੇ ਸੀ ਉੱਥੇ ਕੋਈ ਹਮਲਾ ਨਹੀਂ ਹੋਇਆ ਅਜ ਤੱਕ ਹਜੂਰ ਸਾਹਿਬ ਕਦੇ ਉੱਥੇ ਕੋਈ ਝਗੜਾ ਨਹੀਂ ਹੋਇਆ ਕਦੇ ਕੁਝ ਉੱਥੇ ਕੋਈ ਸੱਪਾ ਨਹੀਂ ਪੈ ਜਿਹੜੇ ਇੱਥੇ ਪੈਦੇ ਪਿਆਉ ਉਹ ਬੀੜ ਕਿੱਥੇ ਗਈ ਫਿਰ ਉਹ ਬੀੜ ਕਿੱਥੇ ਪਹਿਲੇ ਤਾਂ ਉਹ ਜਗਾਹ ਚਾਹੀਦੀ ਵੀ ਇੱਥੇ ਪਾਈ ਪ੍ਰਕਾਸ਼ ਦਿੱਤਾ ਸੀ ਇੱਥੇ ਜੋ ਖੁੱਤ ਕੋਈ ਨਹੀਂ ਜੇ ਉਹ ਸੀਗੀ ਤਾਂ ਆ ਮਾਤਾ ਨੇ ਅਜੀ ਸਰੂ ਗੁਰੂ ਗਿਆਰਵਕ ਕਿਉਂ ਥਾਪਿਆ ਦਿੱਲੀ ਫਿਰ ਖਾਲਸਾ ਤੇ ਜਾ ਕੇ ਹਟਾਇਆ ਉਹ ਕਹਿੰਦੇ ਉਧਰ ਬੰਦਾ ਬਾਹਰ ਗੁਰੂ ਕਹਿੰਦਾ ਇਹ ਨੂੰ ਨਾ ਕਿਹਾ ਕਹਿੰਦੇ ਇਦਾਂ ਨਹੀਂ ਆਪਾਂ ਨੇ ਕਹਿਣਾ ਆਪਾਂ ਹੋਰ ਪਲਾਨ ਬਣਾਉਂਦੇ ਉਹਨਾਂ ਨੇ ਫਿਰ ਪਲਾਨ ਬਣਾਇਆ ਵੀ ਗੁਰੂ ਗ੍ਰੰਥ ਨੂੰ ਕਰਾਈ ਦੇ ਗੁਰੂ ਗ੍ਰੰਥ ਦੀ ਹਾਜ਼ਰੀ ਕੋਈ ਜ਼ਰੂਰੀ ਨਹੀਂ ਹੈ ਅਸੀਂ ਗਲਤੀ ਕੀ ਕੀਤੀ ਅਸੀਂ ਉੱਤੇ ਹਾਜ਼ਰੀ ਪੰਜ ਪੈਸੇ ਨਾਲੀਆਂ ਨਾਲ ਹੀ ਕਰ ਲਈ ਕਰ ਲਈ ਇਹਦੀ ਲੋੜ ਨਹੀਂ ਹੈ ਜਾਂ ਬਾਬੇ ਬਕਾੜੇ ਕੇ ਹੈ ਨਾ ਉਹੇ ਪਾਸੋਂ ਤੇ ਨਹੀਂ ਸੀ ਹਾਜ਼ਰੀ ਹੋਣੀ ਕੋਈ ਜ਼ਰੂਰੀ ਨਹੀਂ ਹੈ ਉਹ ਗੱਲ ਅਸੀਂ ਛੱਡ ਕੇ ਦੂਈ ਬੇਵਕੂਫੀ ਕਰ ਲਈਏ ਬੁੱਤੀ ਦੇ ਕੰਮ ਨਹੀਂ ਕੀਤੇ ਹੋਏ ਜਿਹੜੇ ਆਦਮੀ ਬੁੱਧੀ ਕੰਮ ਕਰਦੇ ਨੇ ਉਹ ਚ ਕਮੀਆਂ ਰਹਿ ਜਾਂਦੀਆਂ ਨੇ ਕਹਿੰਦੇ ਨਕਲ ਕਰਨ ਨੂੰ ਵੀ ਅਗਲ ਜੈਹੀ ਦੀਏ ਨਾ ਹਾਂਜੀ ਨਕਲ ਤਾਂ ਕਿਤੇ ਅਗਲ ਹੈ ਨਹੀਂ ਸੀ ਉਸੇ ਗੱਲ ਹੋ ਗਈ ਦਾ ਇਤਿਹਾਸ ਤੇ ਕਿਰਪਾ ਸਤ ਸੰਗ ਮਿਲਾਏ ਨਾਨਕ ਤਾਂ ਗੈ ਨਿਕਟ ਮਾਏ ਜਿਹੜਾ ਸਤ ਆਪਣੇ ਅੰਦਰ ਮਿਲ ਜਾਂਦਾ ਸਤ ਪੁਰਖ ਇਹਦੇ ਅੰਦਰ ਹੈ ਸਰਤਪੁਰਖ ਕੀ ਹੈ ਪੁਰਖ ਕਿਹਨੂੰ ਕਹਿੰਦੇ ਪੁਰਖ ਇੱਕ ਸ਼ਬਦ ਦਾ ਨਾਮ ਹੈ ਆਵਾਜ਼ ਦਾ ਨਾਮ ਹੈ ਕੁਝ ਨਹੀਂ ਹੈ ਪੁਰਖ ਪੂਰੀ ਪੂਰੀ ਦ ਸੰਥਾ ਸਰਤਪੁਰਖ ਪੁਰਖ ਨੂੰ ਕਹਿੰਦੇ ਨੇ ਜਿਹੜਾ ਅਧੂਰੇ ਨੂੰ ਪੂਰਾ ਕਰੇ ਸਰਗੁਣ ਪੁਰਖ ਸਰਗੁਣ ਹੁੰਦਾ ਨਿਰਗੁਣ ਨੂੰ ਪੁਰਖ ਨਹੀਂ ਕਹਿੰਦੇ ਪੁਰਖ ਨਿਰਗੁਣ ਦੀ ਪੂਰਾ ਕਰਨ ਵਾਲਾ ਪੂਰਾ ਹੋ ਕਰੂਗਾ ਜਿਹੜਾ ਅਧੂਰਾ ਇਹ ਕਿਸੇ ਦੀ ਗੱਲ ਹੈ ਇਹਦਾ ਆਗ ਪੂਰਾ ਦੂਜੇ ਨੂੰ ਪੂਰਾ ਕਰੇ ਉਹਨੂੰ ਪੁਰਖ ਕਹਿੰਦੇ ਨੇ ਉਹ ਸ਼ਬਦੇ ਕਰ ਸਕਦਾ ਪਰ ਅੰਤਰਾ ਆਤਮਾ ਦੀ ਆਵਾਜ਼ ਹੈ ਉਹੀ ਪੁਰਖ ਹੈ ਹੋਰ ਕੋਈ ਜੋਤ ਦੀ ਗੱਲ ਨਹੀਂ ਹੈ ਇੱਥੇ ਜੋਤ ਕੋਈ ਨਹੀਂ ਦੋ ਆਵਾਜ਼ਾਂ ਨੇ ਇੱਕ ਕਹਿੰਦੇ ਤੁਰਕੁਡੀ ਚੋਂ ਮਾਇਆ ਦੇ ਕੇ ਪੈਦਾ ਹੁੰਦੀ ਹੈ ਝੂਠੀ ਆਵਾਜ਼ ਉਹ ਰੇ ਉਦਨ ਉਹਦੇ ਜਿਹੜੀ ਅੰਦਰੋਂ ਆਵਾਜ਼ ਪੈਦਾ ਹੁੰਦੀ ਹੈ ਉਹ ਇਹ ਆਪ ਨਹੀਂ ਪੈਦਾ ਕਰਦਾ ਆਵਾਜ਼ੇ ਗੁਰੂ ਆਸਜ ਆਵਾਜ਼ੇ ਗੁਰੂ ਆਹੋ ਕੋੰਤਰਾਤਮ ਦੀ ਆਵਾਜ਼ ਹੈ ਆ ਉਹੀ ਗੁਰੂ ਬਲਕਿ ਉਹ ਗੁਰੂ ਨਹੀਂ ਹੈ ਉਹ ਗੁਰਦੇਵ ਹੈ ਉਹ ਗੁਰਦੇਵ ਸਾਨੂੰ ਦਿੰਦੀ ਹੈ ਸਾਨੂੰ ਦਈਆ ਸਾਡੇ ਲਈ ਗੁਰੂ ਸਾਡੇ ਵਰਗਾ ਸਾਡੇ ਬਾਤ ਗੁਰਦੇਵ ਹੈ ਗੁਰਦੇਵ ਮਾਤਾ ਬਰਦੇਵ ਪਿਤਾ ਬਰਦੇਵ ਸਭੀ ਤੋਂ ਸਾਨੂੰ ਤੇ ਮੈਂ ਆਪਣਾ ਗੁਰ ਪੂਛ ਦੇਖਿਆ ਉਹ ਗੁਰੂ ਦਾ ਤਾਂ ਇਹ ਕਰਨਾ ਲੋੜ ਹੋਵੇ ਸਾਰੀਆਂ ਜੁਨੇ ਸਾਡੀ ਇੱਕ ਉੱਤੇ ਸ਼ਬਦ ਗੁਰੂ ਸੁਰਤ ਤਾਂ ਚੇਲਾ ਗਿਆ ਉੱਤੇ ਮਤਲਬ ਗੁਰੂ ਦਾ ਸ਼ਬਦ ਗੁਰੂ ਰੂਪ ਸ਼ਬਦ ਗੁਰੂ ਰੂਪ ਸ਼ਬਦ ਉਹ ਇੱਕੋ ਐਸਾ ਸ਼ਬਦ ਹੈ ਇੱਕ ਵਾਰੇ ਨਿਕਲਦਾ ਹੈ ਸਾਰੇ ਨਹੀਂ ਪ੍ਰਕਾਰ ਦੇ ਸ਼ਬਦ ਕਿੰਨੇ ਪ੍ਰਕਾਰ ਦੇ ਸ਼ਬਦ ਚਾਹੀਦੇ ਨੇ ਹਰੇਕ ਰੂਹੀ ਜਿਵੇਂ ਦੇਖੋ ਸੂਰਜ ਉਹ ਜੋ ਇੱਕ ਰੋਸ਼ਨੀ ਦਿੰਦਾ ਸਾਰੇ ਜੀਵ ਜੰਤਵਾਸਤੇ ਰੋਸ਼ਨੀ ਕਿੱਕ ਕੋਈ ਠੀਕ ਨਹੀਂ ਕੋਈ ਕੰਮ ਨਹੀਂ ਸਾਰੇ ਦਲਸੂਰ ਰਹੁੰਦੀ ਐ ਕਦੂਏ ਜੇ ਇੱਕ ਸੂਰਜ ਦੇ ਵਿੱਚੋਂ ਧੁੱਪ ਅੱਗ ਰਕੜਦੀ ਕੁ ਅੱਗ ਵੀ ਕੋਈ ਆਪਣਾ ਗਿਆਨ ਦਵਾ ਰਹੀ ਐ ਤੁਹਾਨੂੰ ਅੱਗ ਨਹੀਂ ਆਪਣਾ ਗਿਆਨ ਦੇ ਰਹੀ ਧੁੱਪ ਚੁਗਦੀ ਐ ਅੱਜ ਉਹਦੀ ਚੁਗਣੇ ਕੁਝ ਗੋਲ ਨਹੀਂ ਹੋ ਤੁਹਾਨੂੰ ਕੋ ਦੱਸ ਰਹੀ ਐ ਚੁਗ ਕੇ ਉਹ ਹੀੜ ਜਿਹੜੀ ਜੁਮ ਰਹੀ ਆ ਕੋਈ ਦੱਸ ਰਹੀ ਹੈ ਮੈਸੇਜ ਦੇ ਰਹੀ ਹੈ ਗਿਆਨ ਕਰਾ ਰਹੀ ਹੈ ਨਾ ਫੜੇ ਵਾਲੇ ਇਹ ਸ਼ਬਦੋ ਆਪਣੇ ਬਾਰੇ ਗਿਆਨ ਕਰਾ ਰਿਆ ਸਾਰਾ ਗਿਆਨ ਜੋ ਚਾਹੀਦਾ ਹੈ ਜੀਵ ਨੂੰ ਜੋ ਚਾਹੀਦਾ ਉਹ ਸ਼ਬਦ ਵਿੱਚ ਹਰ ਪ੍ਰਕਾਰ ਦਾ ਗਿਆਨ ਹੈ ਜਿਵੇਂ ਦੇਖੋ ਕਪਤੈ ਚਾਰ ਪੱਕਾ ਹਵਾ ਮਾਰੂ ਗਏ ਨਾ ਫ੍ਰੀਜ ਲੈ ਲਓਗੇ ਉੱਪਰ ਪੈਦਾ ਕਰੂਗਾ ਗਏ ਨਾ ਬਿਜਲੀ ਦਿਓਈ ਬਿਜਲੀ ਦੇ ਕੋ ਖੋਹਦੀ ਗਏ ਤਾਮਾਡਰ ਕਰਮ ਇੱਕ ਠੰਡਾ ਕਰਦਾ ਇੱਕ ਦੂਰੇ ਉੱਟੋ ਇਕਬਾਲ ਲਾਈਟ ਜਾਲਦਾ ਅਜੇ ਕੁਝ ਉਹ ਨਾ ਕਰੇ ਤਾਂ ਝਟਕਾ ਵੀ ਮਾਰਦੀ ਐ ਹੱਥ ਲਾ ਕੇ ਦੇ ਲੋ ਸਦਾ ਕੁਝ ਕੰਮ ਕਰਦੇ ਇਕੋ ਚੀਜ਼ ਦੇ ਐਵੇਂ ਸਾਰੇ ਹੀ ਕੰਮ ਕਰ ਇਹ ਵੀ ਸ਼ਕਤੀ ਉਹ ਵੀ ਸ਼ਕਤੀ ਸਾਰਿਆਂ ਨੂੰ ਗਿਆਨ ਦਿੰਦੇ ਜਿਵੇਂ ਇੱਕ ਫੋਰਵਰ ਥੱਲੇ ਸੱਡੀ ਵਾਲੇ ਨੂੰ ਵੀ ਦੇ ਉਹ ਨੂੰ ਪੁੱਛਣਾ ਸੰਧੀ ਵਾਲੇ ਨੂੰ ਦੱਸ ਦਿੰਦਾ ਵੈਸੇ ਇਹ ਕਰ ਫੈਡਰਲ ਨੂੰ ਵੀ ਦੱਸ ਦਿੰਦਾ ਸਾਰਿਆਂ ਕੋ ਕੋ ਦਾ ਗਿਆਨ ਵੱਡਾ ਸਾਰਿਆਂ ਨੂੰ ਜਾਂ ਨਹੀਂ ਜਾਂਦਾ ਕੀ ਜਿਹੜਾ ਪ੍ਰਿੰਸੀਪਲ ਹੈ ਪਹਿਲੀ ਦੇ ਵਿੱਚ ਨੂੰ ਨਹੀਂ ਪੜਾ ਸਕਦਾ ਪੜਾ ਸਕਦਾ ਗੁਰੂ ਹੈ ਜੇ ਆਦਮੀ ਨੂੰ ਪੜਾਉਗਾ ਥੱਲੇ ਦੀ ਕਲਾਸ ਰੂਮ ਦੇ ਸਕਦਾ ਗੁਰੂ ਉਹਨੂੰ ਕਹਿੰਦੇ ਨੇ ਜੀ ਸਾਰਿਆਂ ਨੂੰ ਪੜਾਉਣ ਦੀ ਕਪੈਸਿਟੀ ਹੈ ਇਹਦਾ ਉਪਦੇਸ਼ ਸਾਰਿਆਂ ਵਾਸਤੇ ਹੈ ਉਹ ਗੁਰੂ ਕਹਿੰਦੇ ਹੁਣ। ਜਿਹੜਾ ਉਪਦੇਸ਼ ਸਾਰਿਆਂ ਵਾਸਤੇ ਹੈ ਠੀਕ ਹੈ। ਸਾਡਾ ਜਿਹੜਾ ਅੰਦਰ ਉਹ ਗੁਰੂ ਤਾਂ ਨਹੀਂ ਹੈ। ਨਾਨਕ ਤਾਂ ਨਹੀਂ ਗੁਰੂ ਨਾਨਕ ਜਾਨਵਰਾਂ ਨੂੰ ਪੜਾ ਕੇ ਦਿਖਾਉਂਦਾ। ਜਾਨਵਰਾਂ ਦੇ ਬੋਲ ਨਹੀਂ ਜਾਣਦੇ। ਸਰਬ ਕੀ ਜਨਤਾ ਨਾਨਕ ਦੇ ਮਨ ਵਿੱਚ ਨਹੀਂ ਹੈ। ਸਰਬ ਕੀ ਚਿੰਤਾ ਉਹਦੇ ਮਨ ਵਿੱਚ ਆ ਜਿਹੜਾ ਸਰਬ ਕੀ ਭਾਸ਼ਾ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਜਾਣਦਾ ਹੈ ਘਟ ਘਟ ਕੇ ਅੰਦਰ ਕੀ ਦਾ ਕਹਿਣਾ ਹੈ ਕੇ ਜਾਣਦਾ ਨੰਗ ਥੋੜੀ ਜਾਣਦਾ ਆ ਘਟ ਘਟ ਕੇ ਅੰਦਰ ਗੁਰੂ ਜਾਣਦਾ ਘਟ ਘਟ ਕੇ ਅੰਦਰ ਕੀ ਜਾਣ ਭਲੇ ਬੁਰੇ ਦੀ ਪੀੜ ਪਛਾਣਦਾ ਚੀਤੀ ਦੇ ਦੁਨਿਆ ਦੇ ਸਭ ਪਰ ਕ੍ਰਿਪਾ ਦਸ਼ਤਗਰ ਬੋਲਾ ਅੰਤਰਾ ਦਾ ਮਾਦੀਏ ਵਾਜਦਾ ਸਾਰੀ ਕੁਆਲਿਟੀ ਹੈ ਇਹ ਪਾਹੀਓ ਸਾਡੇ ਵਾਸਤੇ ਹੀ ਹੈ ਬਾਕੀਆਂ ਵਾਸਤੇ ਛੇਰ ਦੀ ਹੈ ਛੇਰ ਵਾਸਤੇ ਛੇਰ ਦੀ ਅੰਤਰਾਤ ਨੂੰ ਦਿਵਾਇ ਹੋ ਰਿਹਾ ਕਬੂਤਰ ਦੀ ਹੋ ਰਿਹਾ ਕਾਉ ਦੀ ਹੋਰ ਰਿਹਾ ਮੋਰ ਦੀ ਹੋ ਰਿਹਾ ਵੇ ਝੋਟੇ ਦੀ ਹੋ ਰਿਹਾ 18 ਜਾਨਵਰ ਨੇ 18 ਅੰਤਰਾਤਮਾ ਦੀ ਆਵਾਜ਼ ਕੋਈ ਨਹੀਂ ਹੁੰਦੀ ਕੀ ਅੰਤਰਾਤਮਾ ਦੀ ਆਵਾਜ਼ ਆਪਣੇ ਆਦਮੀ ਦੀ ਕੋਹ ਹੈ ਇਥੇ ਆਦਮੀਆਂ ਦੀ ਗੱਲ ਹੈ ਇੱਕ ਕਿਸਮ ਦੇ ਜਾਨਵਰਾਂ ਦੀ ਕੋਹ ਹੁੰਦੀ ਟਾਉਣਾ ਦੀ ਆਵਾਜ਼ ਕੋਈ ਜਿਵੇਂ ਇਥੇ ਅੰਤਰਾਤਮਾ ਦੀ ਆਵਾਜ਼ ਆ ਜਿਹੜੀ ਹੈ ਇਹ ਜਾਨਵਰਾਂ ਨੂੰ ਇਹਦਾ ਮੁੱਖੀ ਵਚਨ ਵੀ ਇਹਦਾ ਹਾਲ ਹੈ ਕੋਈ ਦੌਰ ਨੂੰ ਭੱਜ ਜਾ ਉਹਨਾਂ ਦੇ ਆਰ ਇੱਕ ਮਿੰਟ ਉਹਨਾਂ ਵਾਤੇ ਕੀ ਹੈ ਐਨਾ ਇਹ ਜਬਰ ਬਲ ਹੋ ਗੋ ਬੋਲੋ ਆਦੋਂ ਨਾ ਵੀ ਲੱਗੂ ਐ ਸਾਰਾ ਰੀਕੋਡ ਹੁੰਦਾ ਤਾਂ ਵੀ ਧੁੰਦਾ ਹੀ ਆ ਉਦੋਂ ਸਾਚੇ ਇਹ ਤੋਂ ਸਖਿਆ ਕੀ ਲੈਂਦੇ ਇਹ ਤੋਂ ਸੇਧ ਨਹੀਂ ਲੈ ਸਕਦੇ ਕਿਉਂਕਿ ਉਹ ਹੋਰ ਪੌੜੀ ਤੇ ਨੇ ਜਿਹੜੀ ਪੌੜੀ ਤੇ ਉਹ ਨੇ ਉਦੋਂ ਅਗਲੀ ਪੌੜੀ ਦੀ ਉਹ ਸੇਧ ਚਾਹੀਦੀ ਐ ਹਾਂਜੀ ਸਮਝਦਾ ਤੁਹਾਨੂੰ ਬਲਕੇ ਦੂਜੀ ਜਮਾਤ ਦਾ ਕੋਰਸ ਐ ਉਹ ਚੌਥੀ ਜਮਾਤ ਵਾਲਾ ਕੋਰਸ ਨਹੀਂ ਐ ਉਹਨਾਂ ਦੀ ਅਵਸਥਾ ਉੱਚੀ ਹੈ ਨੀਵੀਂ ਅਵਸਥਾ ਉਦੋਂ ਉੱਚੀ ਅਵਸਥਾ ਉਦੋਂ ਉੱਚੀ ਅਵਸਥਾ ਉਦੋਂ ਉੱਚੀ ਅਵਸਥਾ ਦੀ ਗੱਲ ਆਈਏ ਫਿਰ ਇਹ ਤਾਂ ਪੌੜੀਆਂ ਦੀ ਪੜ੍ਹਾਈ ਦਾ ਬਰਾੜਾ ਔਰ ਜਾਣ ਦਾ ਇੱਕੋ ਆਦਮੀ ਜੀ ਜੋ ਸਾਰੀ ਕੁਆਲਿਟੀ ਹੈ ਸਭ ਨੂੰ ਬੜਾਉਂਦੀ ਉਹਨੂੰ ਗੁਰੂ ਕਹਿੰਦੇ ਅਸੀਂ ਉਹ ਨਾਕ ਨਹੀਂ ਗਾ ਨਾਕ ਨਹੀਂ ਗਾ ਉਹ ਗੱਲ ਹੈ ਸ਼ਾਬਦੂ ਗੁਰੂ ਨੂੰ ਮੜੇ ਹੋਰ ਫਿਰ ਤਾਂ ਮਤਲਬ ਉਹ ਪਾਏ ਉਹ ਸ਼ਬਦ ਵੀ ਬਿਨਾ ਕਰਨਾ ਤੇ ਸੁਣਨ ਵਾਲਾ ਹੈ ਦੂਜੀ ਗੱਲ ਹੋਰ ਹੈ ਅਗਲੀ ਪਹਿਲੀ ਗੱਲ ਇਹ ਕੱਟੀ ਵੇ ਕਿ ਗੁਰੂ ਇਹਨੂੰ ਤਾਂ ਨਹੀਂ ਕਹਿ ਸਕਦੇ ਜੇ ਸ਼ਬਦ ਵੀ ਬੰਨੀ ਆਪਾਂ ਉਪਦੇਸ਼ ਵੀ ਬੰਨੀਏ ਉਹ ਨਾ ਬੋਲਣ ਵਾਲਾ ਸ਼ਬਦ ਵੀ ਬੰਨੀਏ ਤਾਂ ਵੀ ਕਰਨਾ ਦਾ ਵਿਸ਼ਾ ਜੇ ਆਪਾਂ ਸ਼ਬਦ ਨੂੰ ਕੰਨਾ ਨਾ ਸੁਣ ਵਾਲਾ ਵੀ ਬੰਦੀਏ ਬਾਣੀ ਗੁਰਬਾਣੀ ਮੰਨ ਲਈਏ ਕਿਉਂਕਿ ਇਹ ਗੁਰਬਾਣੀ ਇਹਨੂੰ ਗੁਰਬਾਣੀ ਕੇ ਬਾਣੀ ਤਾਂ ਕਿਹਾ ਨਹੀਂ ਤੇ ਕੁੰਚਰ ਬਾਤਦੇ ਸਾਰੇ ਸ਼ਬਦ ਗੁਰੂ ਹੈ ਜਿਹੜੀ ਸ਼ਬਦ ਗੁਰੂ ਦੀ ਗੁਰਬਾਣੀ ਦੀ ਗੱਲ ਕਰ ਗੁਰਬਾਣੀ ਉਪਦੇਸ਼ ਗੁਰੂ ਹੈ ਅੰਤਰਾਤਮਾ ਦੀ ਆਵਾਜ਼ ਸ਼ਬਦ ਗੁਰੂ ਚ ਫਰਕ ਹੈ ਇਹ ਉਪਦੇਸ਼ ਗੁਰੂ ਹੈ ਇਹ ਸਮਝ ਲੈ ਜੀ ਅੰਤਰਾਤਮਾ ਤੇ ਸ਼ਬਦ ਗੁਰੂ ਚ ਕੀ ਫਰਕ ਹੈ ਕੀ ਚ ਅੰਤਰਾਤਮਾ ਔਰ ਸ਼ਬਦ ਗੁਰੂ ਫੇਰ ਗੁਰਦੇ ਪੂਰਾ ਗੁਰਬੰਡ ਰਤਬਾ ਸਤਗੁਰਬੰਡ ਉਡ ਵੈਲ ਫੋੜੀ ਅੰਤਰਾਧਮ ਦੀ ਹੋਇਆ ਤਾਂ ਡਵੈਲ ਫੋੜੀ ਪਰ ਕਬ ਕਬ ਅੰਤਰਾਧਮ ਦੀ ਆਵਾਜ਼ ਦੇ ਵਿੱਚ ਨੂੰ ਸੱਚ ਝੋਲੂ ਝੋੜ ਬੰਦਰ ਦੀ ਕਪੈਸਿਟੀ ਹੁੰਦੀ ਉਹਦਾ ਸੁਭਾਅ ਹੁੰਦਾ ਅੰਤਰਾਧਮ ਬੰਦਰ ਦਾ ਸੁਭਾਅ ਹੈ ਕੋਲ ਦੀ ਆਵਾਜ਼ ਨੂੰ ਅੰਤਰਾਧਮਾਂ ਦੀ ਆਵਾਜ਼ ਕਹਿੰਦੇ ਹਾਂ ਉਹਨਾਂ ਦੇ ਵਿਲਪੜ ਉਹ ਕੇ ਨਹੀਂ ਹੋਣਾ ਨੇ ਪੂਰਾ ਡਿਵੈਲਪ ਪੂਰੇ ਗੁਰਕਾ ਸੁਲੂਬ ਦੇ ਫਿਰ ਉਹਦਾ ਜਨਮ ਹੋਣ ਕੇ ਜਨਮ ਹੋਇਆ ਫਿਰ ਉਹ ਤਾਂ ਵਿਲਪੜ ਉਹਦੇ ਵਿੱਚ ਹੀ ਨੇ ਵਿਲਪੜ ਗਾ ਜਾ ਕੇ ਇਹ ਪਹਿਲੇ ਇਹ ਹੋ ਗਈ ਫਿਰ ਅਗਲੇ ਹੱਦ ਡਿਵੈਲਪ ਹੋ ਹੋ ਰਿਹਾ ਮੰਨੀ ਡਿਵੈਲਪ ਹੋ ਰਿਹਾ ਮੰਨਦਾ ਜਿਹੜਾ ਡਿਵੈਲਪ ਹੋ ਗਿਆ ਉਹ ਤਾਂ ਖਿੱਚਿਆ ਦੱਸਾ ਤੂੰ ਤੂੰ ਰਹਿਣ ਦੇ ਕਿਰਪਾ ਕਰ ਜਿੰਨਾ ਬੋਲਣ ਸੈ ਗਿਆ ਨਾ ਮਾਨੂ ਇਹਨੂੰ ਤਾਂ ਉਹਨੇ ਚੁੱਪ ਕਰਾਇਆ ਹੈ ਇਹ ਤਾਂ ਜਿੰਨਾ ਜ਼ਿਆਦਾ ਬਲਡ ਬਲਡ ਕਰਨ ਸਿੱਖ ਗਿਆ ਇਹਨੂੰ ਤਾਂ ਕਿਹਾ ਤੈਨੂੰ ਚੁੱਪ ਕਰ ਜਾ ਤੂੰ ਦਾ ਕੰਮ ਖਰਾਬ ਕਰਦੇ ਬੋਲ ਕੇ ਇਹਨੂੰ ਤਾਂ ਸਮਾਂ ਚੁੱਪ ਕਰਾਇਆ ਮਾਨੂ ਤੇ ਤੂੰ ਚੁੱਪ ਕਰ ਤੂੰ ਰੋ ਬੋ ਚੁੱਪ ਕਰ ਤੂੰ ਰੋ ਬੋ ਇਹਨੇ ਤਾਂ ਚੁੱਪ ਕਰਾਇਆ ਸਭ ਉਹ ਬਦਿੰਦਰ ਬੋਲਦਾ ਹੀ ਨਹੀਂ ਉਹ ਗੁੱਗਾ ਗੋੜ ਖਾਣਾ ਦਾ ਤਾਂ ਮਿੱਠਾ ਦਾ ਨਹੀਂ ਕੋਈ ਉਹ ਗੁੱਗੇ ਕੀ ਮਿਠਾਈ ਉਹਦੀ ਉਹ ਮਿਠਾਈ ਜਨਾਬ ਬਣਦਾ ਜਦ ਗੁੱਗੇ ਨੂੰ ਮਿਠਾਈ ਮਿਲਦੀ ਹੈ ਇਹਨੂੰ ਮਿਲਦੀ ਹੈ ਉਹ ਜਾਈ ਮਾਦੀ ਹੈਗਾ ਗੁੱਗਾ ਮਰ ਕੌਣ ਕਰਦਾ ਗੁੱਗਾ ਇਹਦੇ ਦਾ ਦਵਾਦੀ ਜਵਾਦ ਹੈ ਕਿੱਥੇ ਅਸ਼ੁਭ ਉਹ ਨੇ ਕਿਰਤਕ ਮਗਨ ਸ਼ੁਭ ਉਸੋ ਕਿੰਨੇ ਸ਼ੁਭ ਅਸ਼ੁਭ ਕਿਰਤਕ ਮਗਨ ਸ਼ੁਭ ਉਸੋ ਕਿੰਨੇ ਹਰ ਪ੍ਰਭ ਆਪ ਤਿੰਨ ਪ੍ਰਭ ਕਿੰਨੇ ਤੇਲੀ ਪ੍ਰਭ ਆਪ ਤਿੰਨੇ ਪ੍ਰਭ ਇਹ ਸ਼ੁਭ ਕਰਤ ਕਰ ਲਵੇ ਚਾਹੇ ਅਸ਼ੁਭ ਕਰ ਲਵੇ ਕਿਰਤਕ ਮਗਨ ਸ਼ੁਭ ਉਸੋ ਇਹ ਸ਼ੁਭ ਅਸ਼ੁਭ ਜਿਹੜੇ ਕਰਤ ਕਰਦੇ ਕਿਰਤ ਕੀ ਕਰਦੇ ਨੇ ਤੇਰੀ ਦੀ ਸੋਚ ਹੈ ਸ਼ੁਭ ਸੋਚ ਲਵੇ ਚਾਹੇ ਸੋਚ ਲਵੇ ਕਿਆ ਹੈ ਆਪਣੇ ਪੈਰ ਘਾੜ ਇਦੀ ਸੋਚ ਹੈ ਪੈਰ ਘਾੜ ਹੈ ਇਦੀ ਭੈੜੀ ਸੋਚ ਹੈ ਤੇ ਪੈਰ ਘਾੜ ਹੈ ਉਹ ਕਰਦਾ ਕੋਈ ਸਕਦਾ ਨਹੀਂ ਚੰਗੀ ਜਿਹੜੀ ਸੋਚ ਹੈ ਉਹਦੇ ਤੇ ਮਨ ਪੱਟੀ ਹੈ ਜਿਹੜਾ ਪਹਿਲਾਂ ਘਾੜਾ ਲੱਗਿਆ ਤੇ ਮਨ ਪੱਟੀ ਹੋਰ ਕਿਤੇ ਤੀਨ ਪ੍ਰਭ ਆ ਤੈਨੂੰ ਪ੍ਰਭ ਇਹ ਪ੍ਰਭ ਨਹੀਂ ਅੰਦਰੋਂ ਜੀ ਪਰਦਾ ਕੀਤੇ ਜੀਵ ਤਾਂ ਪਰਦਾ ਕਰਦੇ ਕਰਕੇ ਛੱਡਦੇ ਉਹਨੇ ਸ਼ੌਕ ਕਰਦੇ ਨੇ ਕਿਤਾਬ ਅਸ਼ੌਕ ਕਰਦੇ ਨੇ ਇਹ ਉਹਦੇ ਵਿੱਚ ਅੰਦਰਲੇ ਜਿਹਨੇ ਪੈਦਾ ਕੀਤਾ ਉਹਦੇ ਵਿੱਚ ਨਹੀਂ ਹੁੰਦਾ ਪਸ਼ੂ ਕੋਈ ਜਿਹਾ ਪੜ ਇਹ ਕਿਰਤ ਵਿੱਚ ਸੋਚਣਾ ਇਹਦਾ ਕੰਟਰੋਲ ਕਿਸੇ ਦੇ ਵਿੱਚ ਨਹੀਂ ਸੋਚ ਕਿਸੇ ਦੇ ਕੰਟਰੋਲ ਹਾਂ ਮਾਇਆ ਜਿਹੜੀ ਕੁਝ ਕਰ ਸਕਦਾ ਪ੍ਰੈਕਟੀਕਲੀ ਸਰੀਰ ਨਾਲ ਕੁਝ ਜਿਹੜਾ ਕਰੂਗਾ ਜਿਹੜਾ ਇਹਨੂੰ ਸਰੀਰ ਦੇ ਇਹਦੇ ਨਾਲ ਵੀ ਕਰ ਸਕਦਾ ਇਹ ਤਾਂ ਬਹੁਤ ਕੁਝ ਕਰ ਦਵੇ ਜੇ ਸਰੀਰ ਨੂੰ ਸ਼ੂਟ ਹੋਵੇ ਹਾਂ ਹਾਂ ਸਾਰਾ ਸਰੀਰ ਨਾਲੇ ਵਿਗਾੜ ਸਕਦਾ ਹੈ ਕੁਝ ਕਸਬਾ ਸਕਦਾ ਉਹ ਇਹਦੇ ਬਸ ਕੱਟ ਨਹੀਂ ਸਕਦਾ ਫਿਰ ਕੈਂਚੀ ਨਹੀਂ ਲਾ ਸਕਦਾ ਫਿਰ ਹੁਕਮ ਕੈਂਚੀ ਹੁਕਮ ਨਾਲੇ ਅਗੜੀ ਹੈ ਇਹ ਤਾਂ ਵੈਲੋਟੇ ਲਾਈ ਜਾਂਦਾ ਇਹ ਕਿ ਬੜਾਈਏ ਸਾਡ ਚੋਫੇ ਇਕੱਠਾ ਕਰ ਦਿੰਦਾ ਠੀਕ ਹੈ ਦਾ ਬਚਨ ਗਿਆ ਫਿਰ ਖੋਲ ਲੈਂਦਾ ਕਹਿੰਦੀ ਜਾਂ ਲੱਗਦੀ ਉੱਥੇ ਲੱਗੇ ਜਾ ਉਹ ਖੋਲਦੇ ਥਾਂ ਇੱਧਰ ਜਦ 100 ਬਰ ਫੁੱਲ ਵਿੱਚ 100 ਇਕੱਠਾ ਕਰ ਲੋ ਪੈਣਾ ਕਰਦੇ ਸੋ ਚੜ ਕੇ ਡਿਪੈਂਡੈਂਟ ਹੈ ਕੁਦਰ ਤਬਿੱਤ ਦੁੱਗਲ ਤੇ ਨਵੇਂ ਚ ਡਿਪੈਂਡੈਂਟ हां ओते ओरे गलतीया भी करौणिया रे जबलवान आपारो दी चीजया ने जबलवादा रावण नुकसान जबलवाड़ो आपारो दी चीजया ने हूं <स्य>। काटावादा दफा नुकसान जसा सब जसे छह चीजया पावरो दी चलणियो रे संसार ओ एते चलौ जी भाई ये तो भी ऐसा काम करा तो ज्यादा भी होया वे ऐसा काम करा तो ਉਹ ਬਸ ਆਦਾ ਵਿੱਚ ਬਰਗਾਈ ਜਿਹੜਾ ਜਾਣਦਾ ਵੀ ਇਹ ਕਰ ਨਹੀਂ ਸਕਦਾ ਕੁਝ ਆਦਮੀ ਨਹੀਂ ਕਰ ਸਕਦਾ ਕਿ ਰੌਂਡ ਵਾਲਾ ਪਿੱਛੇ ਹੋਰ ਹੈ ਉਧਰ ਰવાયਰ ਹੋ ਜਾਂਦਾ ਜਿਹੜਾ ਜਨਤਾ ਕੇ ਬਸ ਕਛ ਨਹੀਂ ਸਭ ਕਰੇ ਕਰਾਏ ਸਭ ਚੱਲੇ ਚਲਾਏ ਉਹਦੇ ਰવાયਰ ਤਾਂ ਹੁੰਦੇ ਉਹ ਆਪਣੇ ਨੁਮਾਇਦਾ ਲੈਂਦਾ ਜੀ ਜਿਹੜਾ ਉਥੇ ਤੇ ਰੱਖਦਾ ਕਰਿਆ ਤਾਏ ਇਹਨੇ ਕਰਿਆ ਉਹ ਤਾਂ ਦੂਜ ਨੂੰ ਹੀ ਬੋਲਦਾ ਆ ਤੈਨੂੰ ਹੀ ਉਹ ਰਵੈਰ ਬਜਾਉਂਦਾ ਵਸਾ ਅਗਰ ਜੋ ਕੁਝ ਹੋ ਰਿਹਾ ਹੈ ਉਹ ਕੁਪੜਾ ਹੋ ਰਿਹਾ ਜਿਹੜਾ ਇਹਦਾ ਧਿਆਨ ਰੱਖਦਾ ਹੈ ਉਹ ਕੁਪੜਾ ਗੁਜਲ ਜੋ ਹੋ ਹੈ ਨਾ ਧਿਆਨ ਰੱਖਣਾ ਉਹਦਾ ਧਿਆਨ ਦੀ ਰੱਖਣਾ ਜਿਹੜਾ ਕਰ ਰਿਹਾ ਕਿ ਜਿਹੜਾ ਕਰ ਰਿਹਾ ਉਹ ਤਾਂ ਨਾਲ ਉਹ ਜਿਹੜਾ ਕਰਾ ਰਿਹਾ ਉਹ ਤਾਂ ਨਹੀਂ ਕਰਦਾ ਕਿ ਕਰਾਤਾ ਕੋਈ ਹੋਰ ਰਿਹਾ ਇਹ ਤਾਂ ਬੈਦੋਸਾ ਹੀ ਹੈ ਇਹ ਦਾ ਜਿਸਾਂ ਦੇ ਬਸ ਕੁਛ ਪਸ਼ੂ ਆਪਨ ਹੌ ਹੌ ਕਰੇ ਪਸ਼ੂ ਆਪਨ ਪਸੂ ਪਸੂ ਦੋਸਤ ਇਹ ਪਹਿਲਾਂ ਆਪਨ ਹਾਂ ਹੌ ਕਰੇ ਇਹ ਪਸ਼ੂ ਆਵੇ ਹੌ ਹੌ ਕਰੀ ਜਾਂਦਾ ਪਸ਼ੂ ਨਾਨਕ ਬਿਨ ਹਾਰ ਕਹਾਂ ਕਮਾਉਂਗਾ ਕਹਿੰਦੇ ਉਹਦੇ ਕਰ ਲੇਗਾ ਕਰ ਲੇਗਾ ਕੀ ਕਮਾਈ ਕਰ ਲੇਗਾ ਪਸ਼ੂ ਆਪਨ ਵੱਡੀ ਜਾਂਦੀ ਹੈ ਨਾ ਪਹਿਲੀ ਗਾਉੜੀ ਦੀ ਅਜਬਾਰ ਹੈ ਦਾਂ ਕਰਕੇ ਥੱਲੇਉਂ ਸਾਫ ਕਰਨ ਲੱਗੀ ਐ ਜੋ ਚੜਾਈ ਉੱਤੇ ਚੜ੍ਹਦੀ ਪਹਿਲੀ ਪੌੜੀ ਦੀ ਉਹ ਪਹਿਲ ਜਿਹੜਾ ਪਹਿਲਾ ਰਾਜ਼ ਸਮਝ ਲੋ ਔੜੀ ਰਾਜ਼ ਕੋਈ ਜਿਹੜਾ ਉਦੋਂ ਸਭ ਤੋਂ ਪਹਿਲਾ ਰਾਜ਼ ਹੈ ਉਹਦੇ ਸੇ ਝਾੜੂਏ ਮਾਰੇ ਸਭ ਕੱਲ ਪਹਿਲਾਂ ਇੱਕ ਦੇਵੀ ਆਉਗੀ ਉਹ ਝਾੜੂਆ ਲੂਗੀ ਫਿਰ ਆਉਣਗੇ ਛੜਕਾ ਕਰਨਗੇ ਫਿਰ ਆਉਣਗੇ ਦਰਿਓਂ ਵਿਛਾਉਣਗੇ ਉਹ ਲੈ ਨਾ ਕਾੜੀ ਹਾਂ ਜੀ ਹਾਂ ਬਸ ਉਹ ਗੱਲ ਪਹਿਲਾਂ ਤਾਂ ਝਾੜੂਏ ਮਾਰਿਆ ਹੈ ਬੜਾ ਐਤੋਂ ਅਪਦੇਸ਼ ਸ਼ੁਰੂ ਹੋਇਆ ਥੋੜਾ ਜਿਹਾ ਥੱਲੇ ਹੋ ਸ਼ੁਰੂ ਆ ਵੀ ਜਿਹੜੇ ਹੋ ਹੋ ਅਸੀਂ ਕਰਦੇ ਸੰਸਾਰ ਚ ਕੀ ਹੋ ਰਿਹਾ ਕੀ ਸੋਚ ਨਾਨਕ ਬਿਨ ਹੱਲ ਗੱਲ ਕੀਤੀ ਹੈ ਕਿਥੋਂ ਸ਼ੁਰੂ ਹੈ ਔਰ ਲਾਈਨ ਬਦਲੀ ਹੋ ਦੀ ਦੀ ਇਹਨੂੰ ਇਹ ਪੂਰੀ ਦੀ ਪੂਰੀ ਲੈਂ ਇੱਕ ਦਬ ਬਦਲੀ ਹੋਈ ਹੈ ਗੁਰਬਤ ਨੇ ਜੀਦਾ ਕੇ ਬਿਲਕੁਲ ਪ੍ਰਚਾਰ ਅਸੀਂ ਕਰ ਰਹੇ ਅਸੀਂ ਸਾਰਾ ਹਿੱਤ ਉਹ ਦਾ ਪ੍ਰਚਾਰ ਕਰ ਰਹੇ ਪਸੂ ਆਪਨ ਹੋਂ ਕਰਦਾ ਉਸ ਨੂੰ ਆਪਨ ਜੇ ਹੁਕਮ ਦੀ ਬੁਝਿਆ ਲੋ ਆਪਣ ਆਏ ਸ੍ਰਿਸ਼ਟ ਵਿੱਚ ਫਿਰ ਬੁਝੇ ਉਸ ਤੋਂ ਹੋਰ ਉਸ ਤੋਂ ਕਰ ਕੌਣ ਹੈ ਕੌਣ ਕਰਾ ਰਿਹਾ ਹੈ ਇਹ ਗੱਲ 부ਜੀ ਨਹੀਂ ਪਸੂ ਹੈ ਕੱਲ ਵੀ ਪਸੂ ਆਇਆ ਸੀ ਅੱਜ ਆਇਆ ਪਸੂ ਇਹਨਾਂ ਹਰ ਕਰ ਕਮਾ ਹਾਂ ਬੇਨਹਾਰ ਕਰ ਹਰਤੇ ਬਣਾ ਕੀ ਕਬਈ ਕਰ ਸਕਦਾ ਸਾਰੀ ਤਾਕਤ ਹਉਦੀ ਦਿੱਤੀ ਹੋਈ ਹੈ ਟਾਇਰ ਕਾਇਰ ਨਹੀਂ ਹਥੀ ਇਤਨਾ ਫਸਲਾ ਤਾ ਕਰਤੋ ਬੋਜਨ ਅਸੀਂ ਸਾਰਾ ਚੱਕਿਆ ਹੋਇਆ ਐਂਕੋ ਕਹਿੰਦਾ ਘਾਇ ਹੀ ਹਵਾ ਕਹਿੰਦੀ ਆ ਜੇ ਮੈਂ ਨਾ ਆਵਾਂ ਤੁਸੀਂ ਕੀ ਕਰੋ ਦਿਖਾਓ ਕਰਕੇ ਦਿਖਾਓ ਅਖੀਰ ਜਾ ਕੇ ਪਟ્રોલ ਦੇ ਮੈਂ ਨਾ ਆਵਾਂ ਫੇਰ ਥੜੂ ਲੋੜ ਹੈ ਕਿ ਉਹ ਕਹਿੰਦੇ ਚੱਲ ਤੂੰ ਹੋਵੇਂ ਤੇ ਅਸੀਂ ਨੋ ਹੋਈਏ ਫੇਰ ਅਸਲ ਭਾਈ ਬਰ ਉਹ ਅਸੀਂ ਚੱਕ ਕੇ ਲਿਆਉਂਦੇ ਔਰ ਹਾਂ ਹੋ ਗਾ ਬੇ ਗੱਡੀ ਵਿੱਚ ਭਰ ਕੇ ਕੋਈ ਵੀ ਨਹੀਂ ਕੁਝ ਕਰ ਜਾਊਗਾ ਸਾਰੇ ਖੜਾ ਇਲਟੀ ਜੱਟ ਫਸੀ ਹੋਈ ਐ ਫਸੀ ਜੇ ਸਾਰੀ ਇਹ ਕਰਦੀ ਐ ਹਾਂ ਫਿਰ ਕਿਰੋ ਜੀ ਸਾਰੀ ਇਹ ਕਰਦੀ ਐ ਆਪਣੇ ਆਪਣੇ ਕੱਲੀ ਕੱਲੀ ਕੱਲੀ ਕਾਲੂ ਕੋ ਉਹ ਤੇ ਖੜਾ ਲੋ ਪਰ ਚੱਕ ਪਰ ਇਹ ਤੇ ਮੈਂ ਨਾ ਹੁੰਦਾ ਤੇਰੀ ਕੋਦਰ ਕੌਣ ਕਰਦਾ ਤੇਰੀ ਗੱਲ ਹਾਈ ਕਬਹਾ ਕਬਹਾ ਪਸੂ ਆ ਪਰ ਹੋਂ ਕੋ ਆ ਈ ਕਮਾਈ ਗੱਲ ਨੂੰ ਹਰ ਟੈਮ ਓਏ ਹਰਨੇ ਦਾ ਤੈਨੂੰ ਪਹਿਚਾਈ ਕੀਤਾ ਤੂੰਗਾ ਲੱਕੜ ਜੋ ਰਿਕੜਿਆ ਠੀਕ ਐ ਲੋਕਾਂ ਦੀਆਂ ਖਾਲਦੀਆਂ ਵੀ ਕਰ ਸਕਦਾ ਜੇ ਤੂੰ ਆ ਰਹਿ ਗਿਆ ਜੇ ਅੱਗੇ ਮੱਛਰ ਵੀ ਪੜਾ ਸਕਦਾ ਜੇ ਉਹ ਉਹ ਗਾਇਸਾ ਅਗਲਾ ਦੀ ਚੜ ਲੋਵੇ ਤਾਂ ਕੰਬੀ ਦੇ ਸੰਤ ਉਤੇ ਅੰਗ ਤੇ ਕੰਬੀ ਦੇ ਸਦਾ ਰੋਸ਼ਨੀ